ਆਰਪੀ 1550 ਏਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿਲ 11:09 ਹੋਏ ਨੇ 15 ਫਰਵਰੀ ਦਾ ਦਿਨ ਹੈ ਬਰਾ 2017 ਦਾ ਬੁੱਧਵਾਰ ਹੈ 4 ਅੱਗਣ 463548 ਹਾਰਦਿਕ ਸਵਾਗਤ ਹੈ ਜੀ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਬਾਤ ਅੰਗੀਤ ਸੰਗੀਤ ਸੁਰਖ ਦੇ ਮਸਲਿਆਂ ਤੇ ਗੱਲਬਾਤ ਹੋਣੀ ਹੈ ਜੀ ਖਬਰਾਂ ਤੁਹਾਨੂੰ ਸੁਣਾਉਣਾ ਖਬਰਾਂ ਦੇ ਨਾਲ ਨਾਲ ਖੁੱਲ੍ਹੇ ਵਿਚਾਰ ਚਰਚਾ 에어 ਇੰਡੀਆ ਦੇ ਜਹਾਜ਼ ਕਨਿਸ਼ਕਾ ਬਾਰੇ ਹੋਏਗੀ ਜਿਸ ਦੇ ਵਿੱਚ 330 ਤੋਂ ਉੱਪਰ ਜਣੇ ਮਾਰੇ ਗਏ ਉਸ ਦੇ ਸਜਾ ਇੰਦਰਜੀਤ ਸਿੰਘ ਰਿਆਤ ਨੂੰ ਹੋਈ ਜਿਹਨਾਂ ਨੇ 30 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਕੱਟਿਆ ਤੇ ਹੁਣ ਉਹਨਾਂ ਨੂੰ ਪੂਰਨ ਰਿਹਾਈ ਮਿਲੀ ਹੈ ਹਾਫਵੇ ਹਾਊਸ ਤੋਂ ਸੌ ਚੁੱਕ ਕੇ ਝੂਠ ਬੋਲਣ ਦੇ ਦੋਸ਼ਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਆਖਰੀ ਹੋਈ ਸੀ ਪਹਿਲੀ ਉਹਨਾਂ ਨੂੰ ਸਜ਼ਾ ਜਿਹੜੀ ਨਰੀਟਾ ਜਿਹੜਾ 에ਰਪੋਰਟ ਹੈ ਜਪਾਨ ਦੇ ਵਿੱਚ ਉੱਥੇ ਬੈਗੇਜ ਹੈਂਡਲਰ ਜਿਹੜੇ ਕੁਲੀ ਸੀ ਉਹ ਮਾਰੇ ਗਏ ਤੇ ਫਿਰ 에어 ਇੰਡੀਆ ਦੇ ਵਿੱਚ ਵੀ ਉਹਨਾਂ ਨੇ ਮੈਂਨਸਲਰਰ ਦੇ ਲਈ ਗਿਲਤੀਪੀ ਕੀਤਾ ਸੀ ਪਰ ਬਾਅਦਾਂ ਮਾਫਗਵਾਹ ਬਣ ਕੇ ਉਹ ਝੂਠ ਬੋਲ ਗਏ ਇਸ ਦੇ ਮਲਕ ਤੇ ਜਰਜਪ ਸਿੰਘ ਬਾਗੜੀ ਦੋਨੇ ਬਾ ਇੱਜ਼ਤ ਬਰੀ ਹੋਏ ਸੀ ਇਸ ਬਾਰੇ ਗੱਲਬਾਤ ਹੋਏਗੀ ਬਹੁਤ ਫਿਰ ਲੋਕਾਂ ਦੇ ਜ਼ਖਮ ਇਸ ਵਿੱਚ ਉੱਚੜ ਗਏ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਨੇ ਉਹ ਦੁਖੀ ਨੇ ਕਿ ਇਹਦੇ ਵਿੱਚ ਕਦੇ ਵੀ ਕੋਈ ਬੰਦਾ ਲੱਭਿਆ ਨਹੀਂ ਜਾ ਸਕਿਆ ਇਸ ਦੀ ਕਹਾਣੀ ਤੁਹਾਡੇ ਸੰਮਖ ਤੁਹਾਡੇ ਬੋਲ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਹੋ ਬਾਹਰ ਤੋਂ 1 ਵਜੇ ਤੱਕ ਗੱਲਬਾਤ ਕਰਾਂਗੇ 1 ਤੋਂ 2 ਕਹਾਣੀ ਦਾ ਸਮਾਂ ਕਹਾਣੀ ਅੱਜ ਕਿਰਪਾਲ ਸਿੰਘ ਕਜ਼ਾਕ ਜਿਹੜੇ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਦੀਆਂ ਮਿਹਨਤ ਕਸ਼ ਲੋਕਾਂ ਦੇ ਨਾਲ ਗਰੀਬੀ ਨੇੜੇ ਲੱਗੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਤੇ ਜਿਵੇਂ ਰਾਮਸੂਪ ਅਣਖੀ ਜਿਹਦੀਆਂ ਪਿੰਡਾਂ ਦੇ ਸੱਭਿਆਚਾਰ ਪਿੰਡਾਂ ਦੀ ਗਰੀਬੀ ਚੋਂ ਨਿਕਲੇ ਬੇਜੋੜ ਰੀਤਿਆਂ ਦੀਆਂ ਗੱਲ ਹੁੰਦੀਆਂ ਉਹ ਤੁਹਾਨੂੰ ਕਿਰਪਾਲ ਸਿੰਘ ਕਜ਼ਾਕ ਦੀ ਕਹਾਣੀ ਸੁਣਾਵਾਂਗਾ ਨੰਬਰ ਰਹਿਣਾ ਆਉਨੇਰ ਲਈ 18432471550 ਇੱਕ ਬੇਨਤੀ ਹੈ ਫੇਰ ਹੱਥ ਜੋੜ ਕੇ ਜਿਹੜੇ ਵੀ ਕਾਲਰ ਨੇ ਜਦ ਤੁਸੀਂ ਆਉਨੇ ਹੋ ਪਲੀਜ਼ ਜਲਦੀ ਗੱਲ ਨਵੇੜਿਆ ਕਰੋ ਜਦ ਤੁਸੀਂ 4 ਚਾਰ 5 5 ਮਿੰਟ ਲਾਉਨੇ ਨਾ ਦੂਜੇ ਬਹੁਤ ਦੰਦੀਆਂ ਵੜਦੇ ਆ ਫਿਰ ਮੈਸੇਜ ਫੇਸਬੁੱਕ ਤੇ ਫੋਨ ਤੇ ਛੇਤੀ ਨਵੇੜਿਆ ਕਰੋ ਤੁਸੀਂ ਆਮ ਰੋਜ਼ਮਰੋਜ਼ ਦੀ ਜ਼ਿੰਦਗੀ 'ਚ ਵੇਖੋ ਜੇ 1 ਮਿੰਟ ਤੋਂ ਵੱਧ ਜਦ ਤੁਸੀਂ ਗੱਲ ਕਰਦੇ ਗੱਲ ਘੁੰਮ ਕੇ ਦੁਬਾਰਾ ਫੇਰ ਹੋਣੀ ਸ਼ੁਰੂ ਹੋ ਜਾਂਦੀ ਰੀਪੀਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਬਲਿਕ ਪਾਸ਼ਣ ਚ ਜੇ ਤਾਂ ਸਮਸਾਰਨੀ ਦੇ ਨਾਲ ਸੈੱਟ ਕੀਤਾ ਹੋਇਆ ਸਾਰਾ ਕੁਝ ਪੁਆਇੰਟ ਲਿਖੇ ਨੇ ਚਾਹੇ ਘੰਟਿਆਂ ਵੱਧੀ ਬੋਲ ਲੋ ਆਮ ਬਿਨਾ ਲਿਖੇ ਬਿਨਾ ਸੈੱਟ ਕੀਤੇ ਜਿਹੜੀ ਸਪੀਚ ਆਪਾਂ 7 ਮਿੰਟ ਬਾਅਦ ਉਹਦੇ ਬਾਅਦ ਰਿਪੀਟ ਕਰਨ ਲੱਗ ਜਾਂਦਾ ਬੰਦਾ ਤੇ ਗੱਲ ਮੁੱਕ ਜਾਂਦੀ ਹੈ ਸੰਤ ਮੁੱਕ ਜਾਂਦਾ ਤੁਹਾਡੇ ਨਾਲ ਇਹ ਲੋਕ ਸੱਤ ਹੈ ਪਰ ਕਿਰਪਾ ਕਰਕੇ ਛੇਤੀ ਨਵੇੜਿਆ ਕਰੋ ਗੱਲ ਮੈਂ ਨਹੀਂ ਚਾਹਦਾ ਤੁਹਾਨੂੰ ਕਹਾਂ ਜੀ ਬਸ ਜੀ ਬਸ ਜੀ ਬਸ ਤੁਸੀਂ ਆਪੇ 1.5 ਮਿੰਟ ਚ ਗੱਲ ਕੀਤੀ ਤੇ ਹੋਰ ਸਮਝਾ ਦਿੱਤਾ ਇੰਉਂ ਨਹੀਂ ਹੁੰਦਾ ਵੀ ਇੱਕੇ ਵਿਸ਼ੇ ਤੇ ਤੁਸੀਂ ਉਹ ਸਾਰੀ ਨਵੇੜਨੀ ਹੈ ਜਾਂ ਮੈਂ ਹੀ ਨਵੇੜਨੀ ਹੈ ਆਪਣੀ ਗੱਲ ਕਹੋ ਤੇ ਦੂਸਰੇ ਨੂੰ ਸਮਝਾ ਦਿਓ ਜੇ ਫੇਰ ਕੋਈ ਗੱਲ 'ਚੋਂ ਗੱਲ ਨਿਕਲੇ ਫੇਰ ਫੋਨ ਕਰ ਲਓ ਜਿਹੜਾ ਖਰਚਾ ਪੈਂਦਾ ਹੈ ਏਕ 8442471550 18442471550 ਆਨਲਾਈਨ ਨੰਬਰ ਰਹੇਗਾ .com ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਤੇ ਐਪ ਡਾਊਨਲੋਡ ਕਰ ਸਕਦੇ ਹੋ ਤੇ ਖਬਰਾਂਵਾਂ ਤੇ ਪ੍ਰੋਗਰਾਮ ਸਾਰਾ ਲੋਕ ਸੱਤ ਪਾਇਆ ਹੁੰਦਾ ਉੱਥੇ ਤੁਸੀਂ ਬਾਅਦ ਵਿੱਚ ਵੀ ਸੁਣ ਸਕਦੇ ਹੋ ਜੇ ਨਾ ਗੱਲ ਬਣੇ ਨਿਮੀ ਡੋਲਾ ਜੀ ਦਾ ਨੰਬਰ KRPY radio 604 440 6462 ਉਹਨਾਂ ਦੀ ਈਮੇਲ krpyradio.com ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡਾ ਮੇਰੇ ਨਾਲ ਗੱਲਬਾਤ ਰਹਿੰਦੀ ਹੈ ਤੇ ਤੁਸੀਂ ਉਹ ਕੋਈ ਕਿਸੇ ਕਿਸਮ ਦਾ ਸੁਝਾਅ ਜਿਹੜਾ ਭੇਜ ਦਿਓ ਕੋਈ ਖਬਰ ਆ ਜਿਹਦੇ ਬਾਰੇ ਤੁਸੀਂ ਚਾਹੁੰਦੇ ਆ ਗੱਲਬਾਤ ਹੋਵੇ ਤੁਸੀਂ ਬਹੁਤ ਵਧੀਆ مشਵਰੇ ਭੇਜੋ ਧੰਵਾਦ ਹੈ email@gkrpradio.com ਇਹ email ਹੈ ਜਿੱਥੇ ਤੁਸੀਂ ਕੋਈ email ਕਰ ਸਕਦੇ ਹੋ ਪੈਰ ਕਬੂਤਰ ਚੀਨੇ ਬਣ ਕੇ ਪੈਰ ਕਬੂਤਰ ਚੀਨੇ ਬਣ ਕੇ ਪਲਕਾਂ ਤੋਂ ਪਸ਼ਮੀਨੇ ਬਣ ਕੇ ਨੈਣੀ ਉਡਣ ਘਗੀਆਂ ਕੋਲਾ ਇਹ ਗੱਲ ਮੈਂ ਕਿਸ ਦੇ ਇਹ ਗੱਲ ਮੈਂ ਕਿਸ ਨਾਲ ਖੋਲਾਂ ਪੌਣਾ ਵਿੱਚੋਂ ਸੁਣਾ ਇਸ਼ਕ ਦੀਆਂ ਤਾਨਾਂ ਨੂੰ ਹੁਣ ਪਟਿਆਲੇ ਤੋਂ ਸੂਟ ਸੰਭਾਲੇ ਗਲਮੇ ਉੱਤੇ ਫੁੱਲ ਪਵਾਲੇ ਸੱਤ ਰੰਗਾਂ ਦੇ ਲੀੜੇ ਕਰਲੇ ਸੱਤ ਰੰਗਾਂ ਦੇ ਲੀੜੇ ਦੇ ਕਰਲੇ ਮੂਹਰੀਆਂ ਕੋਲੋਂ ਢੀੜੇ ਕਰਲੇ ਰੰਗ ਮਾਰਦੀ ਸੈਨ ਜਿਹੜੇ ਤੂਫਾਨਾਂ ਨੂੰ ਹੁੰਤਾ ਚੁੰਨੀ ਟੱਕ ਲੈਂਦੀ ਅਸਮਾਨਾਂ ਨੂੰ ਹੁਣ ਤਾਂ ਚੁੰਨੀ ਟੱਕ ਲੈਂਦੀ ਅਸਮਾਨਾਂ ਨੂੰ ਹਰਮਨਜੀਤ ਰਾਣੀ ਤੱਕ ਸਾਰਿਆਂ ਦਾ ਸਵਾਗਤ ਹੈ ਧੰਨਵਾਦ ਹੈ ਕੱਲ ਦੀ ਗੱਲ ਜਿਹੜੀ ਮੈਂ ਵਿਨੀ ਪੈਗ ਦੇ ਬੱਸ ਡਰਾਈਵਰ ਦੀ ਸੁਣਾਈ ਸੀ ਉਸ ਦੀ ਅੱਜ ਹੋਰ ਕਹਾਣੀ ਛਪੀ ਹੈ ਵੇਖੋ ਵਕਤ ਨੇ ਕੀ ਕਰ ਦੇਣਾ ਹੈ ਰੱਬ ਜਾਣਦਾ ਹੈ ਪਰ ਬਚਤ ਰੱਖਣ ਦੀ ਲੋੜ ਹੈ ਇਹ ਗ੍ਰੈਟਪਰ ਜਿਹੜਾ ਇਸਨੇ 2 ਵਜੇ 58 ਸਾਲ ਦੀ ਉਮਰ ਹੈ ਇਰਵਿਨ ਫਰੇਜ਼ਰ ਇਸ ਦਾ ਹੈ ਇਹ ਉਸਨੇ ਬਸ ਜਦ ਆਖਰੀ ਟ੍ਰਿਪ ਲਾਇਆ ਤਾਂ 2 ਵਜੇ ਹੋਏ ਸੀ ਰਾਤ ਦੇ ਤੇ ਯੂਨੀਵਰਸਿਟੀ ਦੇ ਪਿੱਛੇ ਬਸ ਦੇ ਪਿਛਲੇ ਬੰਨੇ ਬ੍ਰਾਇਨ ਕਾਇਲ ਥਾਮਸ 22 ਸਾਲ ਦਾ ਮੁੰਡਾ ਇੱਕ ਬੈਠਾ ਉਹਨੂੰ ਕਹਿੰਦਾ ਹੁਣ ਬਸ ਇਹ ਆਖਰੀ ਸਟਾਪ ਹੈ ਤੇ ਸੁੱਤਾ ਪਿਆ ਸੀ ਇਹ ਉਸ ਨੂੰ ਉਸਨੇ ਕਿਹਾ ਵੀ ਇਹ ਹੁਣ ਮੈਂ ਇਹ ਆਖਰੀ ਸਟਾਪ ਤੇ ਤੈਨੂੰ ਉਤਰ ਤੈਨੂੰ ਉਤਰਨਾ ਪੈਣਾ ਤੇ ਮੈਨੂੰ ਮੈਂ ਮੁੜਨਾ ਬਾਅਦ ਪਰ ਉਹ ਗੱਲ ਨਾ ਬਣੀ ਦੋਨਾਂ ਦਾ ਝਗੜਾ ਹੋ ਗਿਆ ਉਹ ਕਹਿੰਦਾ ਮੈਂ ਗੱਡੀ ਚੋਂ ਨਹੀਂ ਉਤਰ ਗੱਲਾਂ ਕਰਦੇ ਕਰਦੇ ਬਾਹਰ ਅੱਗੇ ਜਿਹੜੇ ਕੈਮਰਿਆਂ ਦੇ ਵਿੱਚ ਤੇ ਗੱਲਾਂ ਕਰਦੇ ਤੂੰ ਤੂੰ ਮੈਂ ਮਹੱਥੋਂ ਪਾਈ ਤੇ ਉਹਨੇ ਕੱਢ ਕੇ ਚਾਕੂ ਫਰੇਜ਼ਰ ਦੇ ਮਾਰਿਆ ਜਿਸ ਦੀ ਮੌਤ ਹੋ ਬਹੁਤ ਵਾਰ ਉਸਨੇ ਰਿਕਵੈਸਟ ਕੀਤੀ ਸਿਕਿਉਰਿਟੀ ਕੈਮਰੇ ਦੇਖ ਰੰਨਾ ਮੋੜ ਕੇ ਕਦੇ ਪਿੱਛੇ ਨੂੰ ਜਾਂਦਾ ਡਰਾਈਵਰ ਕਦੇ ਅੱਗੇ ਨੂੰ ਆਉਂਦਾ ਕਦੇ ਪਿੱਛੇ ਨੂੰ ਜਾਂਦਾ ਕਦੇ ਤੇ ਨਹੀਂ ਉਤਰਿਆ ਮੁੰਡਾ ਜਦੋਂ ਨਹੀਂ ਉਤਰਿਆ ਤਾਂ ਹੌਲੀ ਦੇ ਕੇ ਜਦੋਂ ਵਾਪਸ ਆਉਣ ਲੱਗਾ ਡਰਾਈਵਰ ਉਹ ਵੀ ਪਿੱਛੇ ਆ ਗਿਆ ਥੱਲੇ ਉਤਰ ਗਿਆ ਤੇ ਪਤਾ ਨਹੀਂ ਕੀ ਕੀ ਗੱਲਾਂ ਹੋਈਆਂ ਪਰ ਗੱਲ ਇਹ ਸੀ ਕਿ ਡਰਾਈਵਰ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਡਰਾਈਵਰ ਨੇ ਤਾਂ ਹੁਣ ਕਹਿਣਾ ਹੀ ਸੀ ਬਈ ਆਖਰੀ ਟੌਪ ਆ ਗਿਆ ਭਾਈ ਉੱਤਰ ਤੇ ਆਖਰੀ ਬੱਸ ਹੈ ਮੈਂ ਤਾਂ ਹੁਣ ਇਹਦੇ ਬਾਅਦ ਨਾਟ ਇਨ ਸਰਵਿਸ ਵਾਪਸ ਜਾਣਾ ਆਖਰੀ ਟ੍ਰਿਪ ਹੈ ਜੇ ਟਿਕਟ ਲੈ ਲੈਂਦਾ ਹੁਣ ਬਜ਼ੁਰਗ ਸਾਡੇ ਪਾਸਾਂ ਵਾਲੇ ਕਈ ਵਾਰ ਸੀ ਬੱਸ ਚੜਦੇ ਆ ਵਾਲੇ ਪਾਸੇ ਉਹ ਕਹਿੰਦੇ ਇੱਧਰੋਂ ਹੀ ਮੁੜ ਚੱਲੇ ਬੱਸ ਵਿੱਚੋਂ ਨਿਕਲਦੇ ਨਹੀਂ ਉਹ ਕਹਿੰਦੇ ਝੂਟੀਓ ਲੈਣੀ ਸੀ ਢੂਣੀ ਲੈ ਲਈ ਤੇ ਵਾਪਸ ਇਉਂ ਹੀ ਬੀ ਸੀ ਫੈਦੀ ਦਾ ਵੀ ਕਿਹੜਾ ਲਿਆਉਂਦੇ ਵਿਹਲੇ ਨੇ ਚਲੋ ਉਹਨਾਂ ਵਜ਼ਨ ਦੇ ਨਾਲ ਕਿਹੜਾ ਥੱਲੇ ਨੱਪੀ ਜਾਂਦੀ ਆ ਉਹ ਤੇ ਜਿਹੜਾ ਮਾਰੇ ਆਉਂਦੇ ਨੇ ਇਸ ਤਰ੍ਹਾਂ ਤੇ ਇਸ ਰਾਈ ਜਦ ਹੁਣ ਇਹ ਬੱਸ ਦਾ ਆਖਰੀ ਟ੍ਰਿਪ ਸੀ ਤਾਂ ਉਹ ਨਹੀਂ ਉਤਰਿਆ ਵਿੱਚੋਂ ਤੇ ਡਰਾਈਵਰ ਨੇ ਕਿਹਾ ਹੋਵੇ ਥੱਲੇ ਉਤਰ ਹੋ ਸਕਦਾ ਵੈਸੇ ਤਾਂ ਟ੍ਰੇਨ ਨੇ ਹੱਥੋਂ ਪਾਈ ਨਹੀਂ ਕਰ ਸਕਦੇ ਟ੍ਰਾਂਜ਼ਿਟ ਆਪਰੇਟਰ ਨੇ ਜਿਹੜੇ ਪਰ 22 ਸਾਲ ਦੇ ਮੁੰਡੇ ਨੇ ਇੱਕ ਤਾਂ ਜਾਨ ਲੇ ਲਈ ਬੰਦੀ ਤੇ ਹੁਣ ਆਪ ਜਿੰਦਗੀ ਦੇ 15 18 ਸਾਲ ਅੰਦਰ ਕੱਟੂ ਇਹ ਜਿਹੜਾ ਜਿਹੜੀ ਚੀਜ਼ ਕਿਹੜੀ ਘਟਨਾ ਕਦ ਹੋ ਜਾਣੀ ਆ ਤਾਂ ਹੀ ਅਕਸਰ ਕਹੀਦਾ ਕਿ ਰੋੜ ਰੇਜ ਜਿਹੜੀ ਹੈ ਸੜਕਾਂ ਤੇ ਗੱਡੀਆਂ ਚਲਾਉਣ ਵੇਲੇ ਲੜਾਈ ਅੱਗੇ ਪਿੱਛੇ ਹੌਂਕ ਕਰਨਾ ਸਾਈਡ ਦੱਬਣੀ ਲਾਈਟਾਂ ਤੇ ਖੜੇ ਇੱਕ ਦੂਜੇ ਦੀਆਂ ਗੱਡੀਆਂ 'ਚ ਝਾਕਣਾ ਤੇ ਅੱਖਾਂ ਕੱਢਣੀਆਂ ਤਲਾਸ਼ੀ ਲੈਣੀ ਇਹ ਬਹੁਤ ਕਈ ਵਾਰ ਹਿੰਸਕ ਘਾਤਕ ਹੋ ਸਕਦੀ ਬੰਦੇ 'ਚ ਕੀ ਹੈ ਬੰਦੇ ਦੇ ਵਿੱਚ ਕੀ ਹੈ ਬੰਦੇ ਦਾ ਨੇੜਿਓਂ ਫੜ ਕੇ ਇੱਕ ਘਸੁੰਨ ਸਿਰ ਦੇ ਉੱਪਰ ਤੁਸੀਂ ਮਾਰ ਦਿੰਦੇ ਹੋ ਖਤਮ ਕੋਈ ਨਰਵ ਪਿੰਚ ਹੋ ਗਈ ਤੇ ਚੱਕ ਲੋ ਚੱਕ ਲੋ ਹੋ ਜਾਣੇ ਕੱਖ ਵੀ ਹੈ ਨਹੀਂ ਥੱਲੇ ਧਰਤੀ ਤੇ ਸਿਰ ਲੱਗਿਆ ਤਾਂ ਖਤਮ ਹਾਇਰਟ ਵਾਲੀ ਜਗ੍ਹਾ ਤੇ ਸਿੱਧਾ ਕਿਸ ਨੇ ਕੋਈ ਪੰਚ ਕਰਤਾ ਤਾਂ ਕੋਈ ਕਹਾਣੀਆਂ ਹੈ ਸੋ ਬਚਾਓ ਵਿੱਚ ਬਚਾਓ ਹੈ ਤੇ ਕੋ ਦੱਸ ਸਕਦੇ ਕਹਨੂੰ ਡੱਕਿਆ ਵਾ ਮਲਕ ਮੁਲਕ ਫਿਰਦਾ ਤੇ ਖਿਆਲ ਰੱਖਿਆ ਕਰੋ ਖਾਸ ਤੌਰ ਤੇ ਗੱਡੀ ਚ ਚਲਾਉਂਦੇ ਜਦ ਤੁਸ ਤੁਹਾਨੂੰ ਪਤਾ ਹੈ ਤੁਸੀਂ ਹੌਲੀ ਜਾਣਾ ਬਾਹਰਲੀ ਲੇਨ ਚ ਹੋ ਜਾਓ ਜਾਣ ਤੋਂ ਜਿਹਨੇ ਅੱਗ ਪਹਚਾਉਣੀਆਂ ਕਹੇ ਬਜਾ ਲਾ ਜਾ ਕੇ ਤੇ ਸੈਟ ਅਪ ਲਾਈਟਸ ਤੇ ਸਟੀਅਰਿੰਗ ਕਰਨਾ ਇੱਕ ਦੂਜੇ ਦੀ ਗੱਡੀ ਚ ਝਾਕਣਾ ਇਹ ਸਭ ਨਹੀਂ ਨਾ ਚਾਕਿਆ ਕਰੋ ਬਿਲਕੁਲ ਕਈ ਵਾਰ ਕੋਈ ਔਖਾ ਬੰਦਾ ਬੈਠਾ ਘਰ ਵਾਲੀ ਨਾਲ ਲੜ ਆਇਆ ਤੇ بیسਬਾਲ ਬੈਟ ਗੱਡੀਆਂ ਚ ਲੋਕ ਆਮ ਲਈ ਫਿਰਦੇ ਆ ਤੇ ਗੋਲਫ ਸਟਿਕਸ ਲਈ ਫਿਰਦੇ ਆ ਗੱਡੀ ਚ ਨਿਕਲ ਕੇ ਕਿਸੇ ਨੇ ਥਾਂ ਥਾਂ ਮਾਰਤੀ ਖਤਮ ਕਰ ਆਪਾਂ ਆਪਣਾ ਆਪ ਬਚਾਓ ਰੱਖੋ ਰੋਡ ਰੇਜ ਸੜਕ ਤੇ ਗੱਡੀ ਚਲਾਉਣ ਵੇਲੇ ਲੜਾਈ ਅਕਸਰ ਹੋ ਜਾਂਦੀ ਹੈ ਡਰਾਈਵਰ ਜਿਹੜੇ ਟੈਕਸੀ ਡਰਾਈਵਰ ਨੇ ਉਹ ਸ਼ੀਲਡਾਂ ਤੁਹਾਡੇ ਗੱਡੀਆਂ ਦੇ ਵਿੱਚ ਲੱਗਣੀਆਂ ਚਾਹੀਦੀਆਂ ਜੇ ਨਹੀਂ ਵੀ ਲੱਗੀਆਂ ਖਿਆਲ ਰੱਖੋ ਨਾ ਕਿਸੇ ਦੇ ਪਿੱਛੇ ਭੱਜੋ 20 50 ਡਾਲਰ ਪਿੱਛੇ ਜੋ ਕੋਈ ਚੱਲੇਗਾ ਚੱਲੇਗਾ ਹੋਰ ਟ੍ਰਿਪ ਚੱਕ ਲੋ ਇਹਨਾਂ ਨਾਲ ਕੱਖ ਨਹੀਂ ਹੁੰਦਾ ਕੱਖ ਤਾਂ ਜਦ ਹੁੰਦਾ ਜਦ ਕੋਈ ਮਾੜੀ ਆਦਤ ਪੈਂਦੀ ਹੈ ਪੈਸਿਆਂ ਥੇਲਿਆਂ ਨਾਲ ਕੱਖ 10 20 ਡਾਲਰ ਹੋ ਜਾਂਨ ਨੂੰ ਨਿਕਲਦੀ ਸਾਰ ਰੱਬ ਹੋਰ ਦੇ ਦਿੰਦਾ ਬਹੁਤ ਵਾਰ ਭੱਜਦੇ ਆ ਜਦ ਕੋਈ ਅਜਿਹੀ ਜਗ੍ਹਾ ਤੇ ਲੈ ਜਾਣ ਜਿੱਥੇ ਐਡਰੈਸ ਨਾ ਹੋਵੇ ਤਾਂ ਇਹਦਾ ਮਤਲਬ ਉਥੋਂ ਭੱਜਣਾ ਭੱਜ ਲੈਣ ਦੇ ਪਿੱਛੇ ਨਾ ਭੱਜੋ ਕੋਈ ਵਾਰ ਤੇਜ਼ੀ ਨਾਲ ਪਿੱਛੇ ਭੱਜ ਲੈਂਦੇ ਕਦੇ ਵੀ ਨਹੀਂ ਸਾਡੇ ਹੱਕ ਹਕੂਕ ਤੋਂ ਬਾਹਰ ਨਾ ਜਾਓ ਸੀਟ ਨਾ ਛੱਡੋ ਭੱਜ ਲੈਣ ਦੇ ਕਿਹੜਾ ਮੱਸਿਆ ਲੱਗਣੋਂ ਹਰ ਜਾਣੀ ਐ ਦੂਜੇ ਬਲੌਗ ਚ ਫੇਰ ਲੱਭ ਜੂ ਕੋਈ ਦਸਾਂ ਬੀਹਾਂ ਵਾਲਾ ਜੇ ਨਾ ਵੀ ਜੱਭੂ ਰੋਟੀ ਪਾਣੀ ਪੀਆ ਜੁਆਕ ਘਰੇ ਸੁੱਤੇ ਪੈਣੇ ਸਿਰ ਤੇ ਛੱਤ ਵਾ ਆਖਰੂ ਕਹਿ ਕੇ ਰਜਾਈ ਚੱਕ ਕੇ ਵਿੱਚ ਪੈ ਜੋ ਵਪਾਰਕ ਸੰਦੇਸ਼ ਬੰਦਾ ਕਿਉਂ ਜਾ ਲੱਗਦਾ ਹੈ ਇਸ ਤੇ ਬਹੁਤ ਗੱਲਾਂ ਹੁੰਦੀਆਂ ਸ਼ਕਲ ਸੂਰਤ ਦੁਨੀਆ ਦੇ ਵਿੱਚ ਕਿਉਂ ਜਾ ਤੁਸੀਂ ਲੱਗਣਾ ਹੈ ਉਹਦੇ ਨਾਲ ਇਨਸਾਨ ਦੀ ਤਰੱਕੀ ਦਾ ਰਾਹ ਆਪਾ ਟੁੱਟ ਲੈਨੇ ਅਕਸਰ ਇੱਥੇ ਗੱਲਾਂ ਹੋਈਆਂ 25 30 40 ਸਾਲ ਪਹਿਲਾਂ 60 ਮਆਚ ਦਾੜੀ ਵਾਲੇ ਨੂੰ ਨੌਕਰੀਆਂ ਨਹੀਂ ਮਿਲਦੀਆਂ ਪੱਗ ਵਾਲੇ ਨੂੰ ਨੌਕਰੀਆਂ ਨਹੀਂ ਮਿਲਦੀਆਂ ਸਫਾ ਚੱਟ ਹੋ ਗਏ ਉਹ ਕੁਝ ਕਿਤਾਬ ਆਪਣਾ ਹੀ ਸ਼ੌਕ ਸੀ ਕਿਉਂਕਿ ਪਹਿਲੇ ਆ ਜਦ ਦੱਸਦੇ ਉਹ ਕਿੱਥੇ ਇੱਥੇ ਤੁਰਿਆ ਫਿਰੇਗਾ ਅਲੱਗ ਦੇ ਦੇਖੇਗਾ ਵਿੱਚ ਜੇ ਨੂੰ ਰਲ ਜਾ ਤਾਂ ਇਹ ਗੱਲਾਂ ਹੁੰਦੀਆਂ ਸੀ ਤੇ ਹੁਣ ਦੇ ਜਵਾਨੇ ਚ ਵੀ 15 18 ਸਾਲ ਪਹਿਲਾਂ ਵੀ ਅਕਸਰ ਇਹ ਗੱਲਾਂ ਹੁੰਦੀਆਂ ਕੰਮ ਵਾਲੀ ਜਗ੍ਹਾ ਤੇ ਖਾਸ ਤੌਰ ਤੇ ਟੈਕਸੀ ਇੰਡਸਟਰੀ ਦੇ ਵਿੱਚ ਕੁਝ ਸਮਾ ਸੀ 93 97 ਦੇ ਵਿੱਚ ਦਾੜੀ ਕੇਸ ਵਾਲੇ ਨੂੰ ਕੁਝ ਕੰਪਨੀਆਂ ਹਾਇਰ ਨਾ ਕਰਦੇ ਫਿਰ ਜੇ ਜ਼ਰੂਰਤ ਵੱਧਦੀ ਗਈ ਸਪਲਾਈ ਤੇ ਡਿਮਾਂਡ ਦਾ ਹੀ ਰੋਲ ਹੈ ਜਬ ਪਤਾ ਵੀ ਘੰਟੇ 12 ਹਰੇਕ ਲਾ ਨਹੀਂ ਸਕਦਾ ਫਿਰ ਉਹ ਕਹਿੰਦੇ ਆਜੋ ਇਹ ਅਕਸਰ ਗੱਲਾਂ ਹੁੰਦੀਆਂ ਕਿਉਂ ਜੇ ਬੰਦਾ ਲੱਗਦਾ ਹੈ ਤੇ ਉਹਦਾ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਬੰਦੇ ਦੇ ਗੁਣਾ ਦੀ ਗੱਲ ਹੈ ਦੁਨੀਆ ਦੇ ਵਿੱਚ ਜੇ ਹੁਣ ਸਿੱਖ ਸਰਦਾਰਾਂ ਦੀ ਗੱਲ ਕਰਿਓ ਸਰਦਾਰ ਸੱਜਣ ਡਿਫੈਂਸ ਮਨਿਸਟਰ ਨੇ ਦਸਤਾਰ ਬੰਨੀ ਆ ਤੇ ਦਾੜਾ ਬੰਨ ਕੇ ਰੱਖਦੇ ਆ ਕੀ ਫਰਕ ਪਿਆ ਸੀਈਓ ਕੰਪਨੀਆਂ ਦੇ ਡੀਨ ਯੂਨੀਵਰਸਿਟੀਆਂ ਦੇ ਦਾੜੀ ਕੇਸ ਰੱਖ ਕੇ ਸਿੱਖ ਸਰਦਾਰ ਤੇ ਉਹਦੇ ਬਾਅਦ ਡਾਕਟਰ ਨੇ ਇੰਜੀਨੀਅਰਸ ਨੇ ਸਾਇੰਟਿਸਟ ਨੇ ਪਾਇਲਟ ਨੇ ਗੱਲ ਕਿਹੜੀ ਐ ਜਿੱਥੇ ਕਹਿੰਦੇ ਸੀ ਬਣ ਨਹੀਂ ਸਕਦਾ ਉੱਥੇ ਦਾਤੇ ਦੀਆਂ ਮਿਹਰਾਂ ਹੋਈਆਂ ਗੱਡ ਮੋਰਚਾ ਮਿਹਨਤਾਂ ਦੇ ਅੱਗੇ ਐ ਸਾਦਾ ਕੁਝ ਸਭ ਕੁਝ ਤੁਹਾਡਾ ਲੁਕ ਜਾਂਦਾ ਇਹ ਗੱਲਾਂ ਸਿਰਫ ਵਿਸ਼ਵਾਸ ਗਵਾਉਣ ਦੀਆਂ ਨੇ ਬਿਨਾਂ ਇਹਦੇ ਕਰਕੇ ਇੱਥੇ ਕਈ ਗਾਇਕ ਫੇ ਹੋ ਗਏ ਇੰਡਸਟਰੀ 'ਚ ਉਹਨਾਂ ਦੀ ਚੰਗਾ ਕੀਰਤਨ ਸਿਖਾਉਂਦੇ ਸਿਖਾਉਂਦੇ ਵੀ ਹੁਣ ਮੈਂ ਕਿਤੇ ਸਤਾਰਾ ਬਣ ਜਾਊ ਸਤਾਰਾ ਨਹੀਂ ਬਣਿਆ ਜਾ ਸਕਦਾ ਇਹ ਰੱਖਣ ਨਾਲ ਜਾਂ ਕੱਟਣ ਨਾਲ ਕੋਈ ਫਰਕ ਨਹੀਂ ਪੈਂਦਾ ਬੜੀ ਦੁਨੀਆ ਤੋਰੀ ਫਿਰਦੀ ਹੈ ਗੱਲ ਕੀ ਦੱਸ ਰਿਹਾ ਸੀ ਮੈਂ ਤੁਹਾਡੇ ਨੂੰ ਇੱਕ ਖਾਸ ਇੱਕ ਵੱਡੀ ਇਹ ਨਿਊਜ਼ ਹੈ ਗ੍ਰਮੀ ਅਵਾਰਡਸ ਨੇ ਜਿਹੜੇ ਗਾਉਣ ਵਾਲਿਆਂ ਦੇ ਅਵਾਰਡ ਨੇ ਬਹੁਤ ਵੱਡੇ ਇਨਾਮ ਨੇ ਉਹਦੇ ਵਿੱਚ ਲਾਸਟ ਦੇ ਵਿੱਚ ਹੀ ਉਹਦੀ ਗਿਣਤੀ 'ਚ ਆਉਣਾ ਐਲਬਮਸ ਨੇ ਗਾਉਣ ਵਾਲੇ ਗੀਤਾਂ ਦੀਆਂ ਸੀੜੀਆਂ ਜਿਹੜੀਆਂ ਗੀਤਾਂ ਦੀਆਂ ਸੌਰੀ ਸੀੜੀਆਂ ਮਿਊਜ਼ਿਕ ਦੀਆਂ ਸੀੜੀਆਂ ਇੱਕੇ ਹੋ ਜਾ ਫਿਨਲਿਸਟ 'ਚ ਆ ਜਾਣਾ ਬਹੁਤ ਵੱਡੀ ਗੱਲ ਹੈ ਇੱਕ ਸਿੱਖ ਬੈਂਡ ਜਿਸ ਦਾ ਵਾਈਟ ਸਨ ਉਸੇ ਗ੍ਰੈਮੀ ਅਵਾਰਡ ਜਿੱਤਿਆ ਵੈਸਟ ਨਿਊ 에ਜ ਐਲਬਮ ਦੇ ਵਿੱਚ ਵਾਈਟ ਸਨ 2 ਜਿਹਦੇ ਵਿੱਚ ਜਿਸ ਦੀ ਮੇਨ ਗਾਉਣ ਵਾਲਾ ਗੁਰਜਸ ਖਾਲਸਾ ਜਿਸ ਗੁਰਜਸ ਕਰਕੇ ਗੁਰੂ ਜਸ ਕਰਕੇ ਵੀ ਗਾਇਆ ਜਾਂਦਾ ਕੰਡਿਆਲੀ ਜਿਹੜੀ ਖੁੰਡਲੀਨੀ ਯੋਗਾ ਨਾ ਬੁੱਠਾ ਜ ਮੇਰੇ ਸੂਤ ਨਹੀਂ ਆਇਆ ਯੋਗਾ ਦੀ ਇਨਸਟ੍ਰਕਟਰ ਆ ਇਹ ਏ ਅਮਰੀਕਨ ਸਿੱਖ ਨੇ ਗੋਰੇ ਸਿੱਖ ਨੇ ਕਹਿਣਾ ਤਾਂ ਚਾਹੀਦਾ ਨਹੀਂ ਗੋਰੇ ਕਾਲੇ ਸਿੱਖ ਨਹੀਂ ਸਿੱਖ ਤਾਂ ਸਿੱਖ ਆ ਇਹ ਉਹ ਸਿੱਖ ਨੇ ਜਿਹਨਾਂ ਨੂੰ ਕਿਸੇ ਸਮੇਂ ਯੋਗੀ ਨੇ ਆ ਕੇ ਜਾਗ ਲਾਇਆ ਹਰਪਜਨ ਸਿੰਘ ਯੋਗੀ ਉਹਨਾਂ ਨੇ ਮੈਕਸੀਕੋ ਤੋਂ ਬਾਅਦ ਇਹ ਹੁਣ ਜਦ ਗ੍ਰੈਮੀ ਅਵਾਰਡ ਮਿਲਿਆ ਤਾਂ ਉਹਦੇ ਵਿੱਚ ਪੰਜ ਜਿਹੜੀਆਂ ਐਲਬम्स ਫਾਈਨਲ ਹੋਈਆਂ ਤਾਂ ਉਹਦੇ ਵਿੱਚ ਗੁਰਜਸਕ ਔਰ ਖਾਲਸਾ ਦਾ ਜਿਹੜਾ ਵਾਈਟ ਸਨ ਜਿਹੜੀ ਉਹਦਾ ਇਹ ਬੈਂਡ ਹੈ ਤੇ ਵਾਈਟ ਸਨ 2 ਉਸਨੇ ਜਿੱਤਿਆ ਹੈਰਾਨੀ ਦੀ ਗੱਲ ਹੈ ਵਾਈਟ ਸਨ 2 ਨੂੰ ਜੇ ਤੁਸੀਂ ਸੁਣਦੇ ਹੋ ਉਹਦੇ ਵਿੱਚ ਸ਼ਬਦ ਹੀ ਨੇ ਜਿਹਨੂੰ ਅੰਗਰੇਜ਼ੀ ਧੁਨ ਦੇ ਵਿੱਚ ਗਾਇਆ ਹੋਇਆ ਕੁਦਰਤ ਦੇ ਨਾਲ ਮੇਲ ਕੇ ਇਹ ਜਿਹੜੇ ਸ਼ਬਦ ਨੇ ਉਹ ਉਸਨੇ ਗਾਏ ਉਸਦੇ ਨਾਲ ਹੋਰ ਵੀ ਨੇ ਜਿਹੜੇ ਗਿਟਾਰ ਵਜਾਉਣ ਵਾਲੇ ਤਪਲਾ ਪਲੇਅਰਸ ਨੇ ਅਭਿਮਾਨ ਕੌਸ਼ਲ ਹੈ ਇੱਕ ਬਹੁਤ ਜਿਹੜੇ ਹైదరాబాద్ ਤੋਂ ਨੇ ਬਹੁਤ ਜ਼ਿਆਦਾ ਵਧੀਆ ਉਹ ਅ ਤਬਲਾ ਬਜਾਉਂਦੇ ਨੇ ਤੇ ਹੋਰ ਵੀ ਇਸ ਗਰੁੱਪ ਦੇ ਵਿੱਚ ਨੇ ਹੈਰਾਨੀ ਹੋ ਗਈ ਜਦ ਗੁਰੂ ਜਸਕਰ ਖਾਲਸਾ ਦਾ ਨਾਮ ਲਿਆ ਤੇ ਉਹਨਾਂ ਨੇ ਜਦੋਂ ਆਏ ਨਾਲ ਉਹਨਾਂ ਦੇ ਸਰਦਾਰ ਜੀ ਨੇ ਇੱਕ ਚਿੱਟਾ ਉਹਨਾਂ ਦਾ ਡਾੜਾ ਹੁਣ ਮੈਨੂੰ ਪਤਾ ਨਹੀਂ ਲੱਗ ਸਕਿਆ ਉਹ ਕੌਣ ਨੇ ਉਮਰ ਦੇ ਹਿਸਾਬ ਨਾਲ ਮੀਆਂ ਬੀਬੀ ਲੱਗਦੇ ਸ਼ਾਇਦ ਮੈਨੂੰ ਦੋਨੇ ਹੀ ਦਸਤਾਰ ਗੁਰਜਸਕੁਰ ਖਾਲਸਾ ਨੇ ਬੰਨੀ ਤੇ ਉਸ ਤਰ੍ਹਾਂ ਹੀ ਜਿਵੇਂ ਅੱਗੇ ਜਿਹੜਾ ਖੰਡਾ ਲਾਉਂਦੇ ਆ ਉਹ ਸਿਰ ਧੱਕ ਕੇ ਇਹ ਦੁਨੀਆ ਜਿਹੜੇ ਇਕੱਠਾਂ ਦੇ ਵਿੱਚ ਲੋਕ ਖੜ ਗਏ ਹੈਰਾਨੀ ਹੋ ਗਈ ਲੋਕਾਂ ਨੂੰ ਵੀ ਆਹ ਵੀ ਹੈ ਇੱਕ ਰੂਪ ਜਿਹੜਾ ਜਿਹੜਾ ਹਿੰਮਤ ਵਾਲੇ ਬੰਦਿਆਂ ਦਾ ਇੱਕ ਇਹ ਕਹਿਣਾ ਕਿ ਮੂੰਹ ਚਿਹਰੇ ਕਰਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਝੂਠ ਕਰਕੇ ਦਿਖਾ ਦਿੱਤਾ ਪਹਿਲਾਂ ਵੀ ਪੜਾ ਜਿਹੜੀਆਂ ਪਾਈਆਂ ਹੋਈਆਂ ਸਿਰੇ ਲੱਗੀ। ਉਹ ਇਹ ਹੈ ਇਹ ਗੱਲ ਮਨ ਚੋਂ ਕੱਢ ਦਿਓ। ਜਦ ਕਦੇ ਵੀ ਤੁਸੀਂ ਜ਼ਿੰਦਗੀ ਸ਼ੁਰੂਆਤ ਕਰਦੇ ਹੋ ਤਰੱਕੀਆਂ ਕਰਨੀਆਂ ਨੇ ਤਰੱਕੀਆਂ ਦੇ ਵਿੱਚ ਤੁਹਾਡੇ ਚਿਹਰੇ ਦੀ ਦਿੱਖ ਮੋٹے ਪਤਲੇ ਦਾੜੀ ਰੱਖੀ ਜਾਂ ਦਾੜੀ ਕੱਟੀ, ਦਸਤਾਰ ਸਜਾਈ ਜਾਂ ਨਹੀਂ ਸਜਾਈ, ਇਹ ਤੁਹਾਡੀਆਂ ਮਰਜ਼ੀਆਂ ਐ ਪਰ ਇਹ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ। ਕੁਝ ਨਹੀਂ ਤੁਹਾਡੇ ਗੁਣਾਂ ਦੇ ਥੱਲੇ ਸਾਰੀਆਂ ਹੀ ਚੀਜ਼ਾਂ ਲੁਕ ਜਾਂਦੀ। ਜਿਵੇਂ ਜਿਵੇਂ ਮਰਜ਼ੀ ਤੁਹਾਡਾ ਚਿਹਰਾ ਮੋੜਾ ਹੋਵੇ, ਜਿਵੇਂ ਜਿਵੇਂ ਮਰਜ਼ੀ ਤੁਹਾਡਾ ਸਟਾਈਲ ਹੋਵੇ। ਕੋਈ ਫਰਕ ਨਹੀਂ ਪੈਂਦਾ। ਹੋਏ ਖਬਰ ਬਹੁਤ ਵਧੀਆ ਤੇ ਇਸ ਤੁਸੀਂ YouTube ਤੇ ਸੁਣ ਵੀ ਸਕਦੇ ਹੋ ਉਹਦੇ ਜਿਹੜੇ ਇਸ ਐਲਬਮ ਦੇ ਵਿੱਚ ਗੀਤ ਨੇ, ਜਿਹੜੇ ਸ਼ਬਦ ਨੇ ਉਹਨਾਂ ਦੇ ਹੈਰਾਨੀ ਹੋਗੀ। ਇਹ ਬੜਾ ਕੁਝ ਹੈ ਇਹ ਇਹਨਾਂ ਦੇ ਵਿੱਚ ਤੇ ਜੋ ਇਸ ਗੱਲ ਨੇ ਸਿੱਧ ਕਰ ਦਿੱਤਾ ਨਿਊ ਮੈਕਸੀਕੋ ਦੇ ਵਿੱਚ ਸਿੱਖ ਰਹਿੰਦੇ ਆ ਬਹੁਤ ਜਿਹੜੇ ਯੋਗੀ ਹੋਣਾਂ ਤੋਂ ਬਾਅਦ ਗੋਰੇ ਜਿਹੜੇ ਸੀ ਉਹ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਕੁਝ ਤਾਂ ਰੰਗਵਾਨ ਨੇ ਉਹਨਾਂ ਦਾ ਇਹ ਹੈ ਕੁਝਿੱਤੇ ਉਹ ਕੱਪੜੇ ਪਾਉਂਦੇ ਆ ਕੁਝ ਸਰੀਰ ਉਹਨਾਂ ਦੇ ਚੁਸਤ ਫਿੱਟ ਨੇ ਯੋਗਾ ਬਹੁਤ ਕਰਦੇ ਆ ਬਹੁਤ ਵੱਡਾ ਇਹ ਇੱਕ ਵਿਸ਼ਾ ਰਿਹਾ ਕਿ ਸਿੱਖ ਧਰਮ ਤੇ ਯੋਗਾ ਦਾ ਕੀ ਫਰਕ ਹੈ ਇੱਕ ਵਾਰ ਮੈਂ ਸੁਣ ਰਿਹਾ ਸਾਂ ਸਰ ਸਰਪਜਨ ਸਿੰਘ ਯੋਗੀ ਇੱਥੇ ਆਇਓ ਸੀ ਕਿਸੇ ਰੇਡੀਓ ਤੇ ਮੈਂ ਭੁੱਲ ਰਿਹਾ ਕਿਹਦੇ ਪ੍ਰੋਗਰਾਮ ਚ ਗੱਲਾਂ ਚੱਲ ਪਈਆਂ ਗੋਰੇ ਸਿੱਖ ਤੇ ਸਿੱਖਣੀਆਂ ਦੀਆਂ ਗੱਲ ਚੱਲ ਪਈ ਹੁਣ ਦੇ ਮੇਕਅਪ ਦੀ ਮੈਨੂੰ ਯਾਦ ਹੈ ਸਰ ਯੋਗੀ ਕਹਿੰਦਾ ਵੀ ਸਾਡੀਆਂ ਜਿਹੜੀਆਂ ਉੱਥੇ ਗੋਰੀਆਂ ਵਟਨਾ ਮਲ ਜਾਂ ਸੋਨੇ ਦੇ ਵਿੱਚ ਬਹਿ ਕੇ ਨਿਕਲਦੀਆਂ ਚਮਕਦੀਆਂ ਹੁੰਦੀਆਂ ਤਾਂਬੇ ਤੇ ਚਿੱਟੇ ਰੰਗ ਦੀ ਭਾ ਮਾਰਦੀ ਉਹਨੇ ਚਿਹਰੇ ਤੋਂ ਗੱਲ ਵੀ ਠੀਕ ਜਿੱਥੇ ਇਹ ਲੋਕ ਇਹਨਾਂ ਇਹ ਰੰਗ ਰੂਪੇ ਨਾਲ ਉਹਨੂੰ ਦਿੱਤਾ ਹੈ ਉਸ ਤੋਂ ਬਾਅਦ ਇਹ ਖਾਲਸਾਈ ਰੂਪ ਦੇ ਵਿੱਚ ਆ ਕੇ ਦਸਤਾਰਾਂ ਸਜਾ ਕੇ ਤੇ ਉੱਪਰ ਸਿਰ ਟਾ ਕੇ ਤੇ ਆਪਣਾ ਖੰਡਾ ਲਾ ਕੇ ਸਰੀਰ ਬਹੁਤ ਨੇ ਯੋਗਾ ਕਰਦਨੇ ਖਾਣਾ ਵਧੀਆ ਤੇ ਰੀਅਲ ਪ੍ਰੈਕਟਿਸ ਸੱਚ ਦੀ ਪ੍ਰੈਕਟਿਸ ਕਰਦਨੇ ਧਰਮ ਦੀ ਦਬਿਡਾ ਨਹੀਂ ਡਬਲ ਨਹੀਂ ਜੋੜਦੇ ਆਪਣੇ ਅੰਕੂ ਜਿਹੜੇ ਜੋੜਦੇ ਉਹਨਾਂ ਜਿਹੜੇ ਸੱਚੇ ਨੇ ਉਹ ਰਹਿਣ ਗੁਰੂ ਤੇ ਤੀਖ ਜਿਹੜੀ ਰੱਖਣੀ ਹੈ ਉਹ ਪੱਕੀ ਗੱਲ ਹੈ ਜਿਹੜਾ ਵਿਖੜ ਗਿਆ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਕਦੇ ਇੱਧਰ ਔਰ ਕਦੇ ਵੀ ਤੁਹਾਡੀ ਜ਼ਿੰਦਗੀ ਦੀਆਂ ਕੀਤੀਆਂ ਚੀਜ਼ਾਂ ਨੂੰ ਤੁਹਾਨੂੰ ਕਿਤੇ ਵੀ ਇਹ ਕਹਿਣ ਦੀ ਲੋੜ ਨਹੀਂ ਮੈਂ ਕੀਤੀਆਂ ਜਾਂ ਨਹੀਂ ਕੀਤੀਆਂ ਤੁਹਾਡਾ ਹਰ ਇੱਕ ਚੀਜ਼ ਕਿਤੇ ਸਾਂਝੀ ਕਰਨ ਦੀ ਵੀ ਲੋੜ ਨਹੀਂ ਹੈ ਵਕਤ ਦੇ ਜ਼ਿੰਦਗੀ ਦੇ ਪੈਂਡਿਆਂ ਦੇ ਵਿੱਚ ਬਹੁਤ ਵਿਖੜੇ ਪੈਂਡੇ ਸਿੱਖਾਂ ਨੂੰ ਜਿਹੜੇ ਨੇ ਉਹ ਕੱਢਣੇ ਪਏ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਦੇ ਸਮੇਂ 'ਚ ਕਈ ਵਾਰ ਬਹੁਤ ਰੌਲਾ ਪਾ ਲੈਨੇ ਆਪਾ ਆ ਕਰਤਾ ਮੈਂ ਉਹ ਕਰਤਾ ਕਿਤੇ ਨਾ ਰੋ ਉਸ ਭਾਂਡੇ ਦੇ ਵਿੱਚ ਤੁਪਕਾ ਨਾ ਪਾਓ ਜਿਹਨੇ ਭਾਂਡੇ ਨੇ ਸਮਾਨ ਨਹੀਂ ਤੁਹਾਡਾ ਸਾਹਮਣੇ ਕਈ ਵਾਰ ਤੁਸੀਂ ਮਜ਼ਾਕ ਦਾ ਪਾਤਰ ਬਣ ਜਾਂਦੇ ਕਰਨਾ ਗੁਰੂ ਦੇ ਸਤਕਾਰ ਲਈ ਉਹ ਕਰਨਾ ਤੇ ਗੁਰੂ ਦੇ ਨਾਂ ਲਈ ਕਰਨਾ ਤੇ ਕੌਮ ਦੀ ਚੜ੍ਹਦੀ ਕਲਾ ਲਈ ਕਰਨਾ ਔਰ ਕਰਕੇ ਕਹਿਣ ਦੀ ਲੋੜ ਨਹੀਂ ਹੈ ਪਿੰਡ ਦਾ ਪਤਾ ਘੇਰਿਆਂ ਤੋਂ ਲੱਗਦਾ ਸੋ ਜ ਇਹ ਬਹੁਤ ਵਧੀਆ ਗੱਲ ਆ ਮੈਂ ਕੋਸ਼ਿਸ਼ ਕਰਾਂਗਾ ਕਿਸੇ ਦਿਨ ਜੇ ਮੇਰਾ ਕਨੈਕਸ਼ਨ ਮਿਲ ਗਿਆ ਇੱਥੇ ਵੇਖਾਂਗਾ ਮੈਂ ਹੈਗੇ ਲੋਕ ਲੋਕਲ ਪੱਤੜ ਉਹ ਨਹੀਂ ਨੇ ਜਿਹੜੇ ਉਸ ਜਗ੍ਹਾ ਦੇ ਨਾਲ ਜੁੜੇ ਉਹਨਾਂ ਨੂੰ ਦੇਖਾਂਗੇ ਜੇ ਗੁਰੂ ਜਸਕਰ ਉਹਨਾਂ ਨਾਲ ਕਿਸੇ ਦਿਨ ਗੱਲ ਹੋਈ ਤਾਂ ਪੁੱਛਣਾ ਚਾਹੁੰਦਾ ਮੈਂ ਉਹਨਾਂ ਨਾਲ ਕੋਸ਼ਿਸ਼ ਕਰਾਂਗਾ ਜੇ ਕਿਸੇ ਦਿਨ ਗੱਲ ਹੋ ਸਕੇ ਇੱਕ ਗੀਤ ਸੁਣੋ ਕੁਲਵਿੰਦਰ ਬਿੱਲੇ ਦਾ ਜਿਸ ਤਰ੍ਹਾਂ ਪਹਿਲਾਂ ਮੈਂ ਗੱਲਬਾਤ ਕਰ ਰਿਹਾ ਸੀ ਵਾਈਟਸਨ ਬੈਂਡ ਦੀ ਇਸ ਤਰ੍ਹਾਂ ਹੀ ਫਤਿਹ ਐ ਇੱਕ ਮੁੰਡਾ ਰੈਪਰ ਟੋਰਾਂਟੋ ਬੇਸਡ ਉਹ ਵੀ ਦਸਤਾਰ ਸਜਾਉਂਦਾ ਪਟਕਾ ਤੇ ਦਾੜੀ ਰੱਖੀ ਹੋਈਆ ਜਸਰੇ ਇਹ ਨਾ ਮੁੰਡਾ YouTube ਤੇ ਹਸਾਸ ਆ ਕੇ ਢਿੱਡੀ ਪੀੜਾ ਪਾਉਂਦਾ ਜਿਹੜਾ ਸਾਡੇ ਵਾਲੇ ਪਾਸੇ মিডিਆ ਵੀ ਉਹਨੇ ਖਿੱਚਿਆ ਸੀ ਇੱਕ ਵਾਰ ਟੀਵੀ ਜਿਹੜਾ ਦਿਖਾਉਂਦੇ ਆ ਸੈਟਰਡੇ ਨੂੰ ਸਵੇਰ ਤੋਂ ਲੈ ਕੇ ਸਤਣ ਤੱਕ ਇੱਕੋ ਹੀ ਚੀਜ਼ ਇੱਕੋ ਹੀ ਗੀਤ ਘੁੰਮ ਘੁਮਾ ਕੇ ਕਦੇ ਬਾਹਰ ਖੜ੍ਹ ਕੇ ਪਾਰਕ ਵਿੱਚ ਕਦੇ ਅੰਦਰ ਵੜ ਕੇ ਉਹ ਵੀ ਬਹੁਤ ਰੇਲ ਬਣਾਉਂਦਾ ਸੋ ਫਤਿਹ ਦਾ ਵੀ ਬੜੇ ਇਹ ਜੇ ਬਹੁਤ ਨੇ ਜਿਹੜੇ ਆਪਣੇ ਸਾਡੇ ਸਾਹਮਣੇ ਮਾਰਗਦਰਸ਼ਨ ਹੈ ਸੋ ਤੁਸੀਂ ਕਿਹੋ ਜਿਹਾ ਲੱਗਦੇ ਆ ਇਹ ਕੋਈ ਸ਼ਿਕਵਾ ਨਹੀਂ ਹੋ ਸਕਦਾ ਕਦੇ ਇਹ ਗਾਉਣ ਵਾਲਾ ਗਾਉਣ ਵਾਲਾ ਹੀ ਹੈ ਦਾੜੀ ਰੱਖ ਕੇ ਗਾਲ ਵੇ ਕਟਾ ਕੇ ਗਾਲ ਵੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਚੇਂਜ ਕਰਦੇ ਹੋ ਆਪਣੀ ਤਰੱਕੀ ਦੇ ਲਈ ਉੱਥੇ ਕੱਖ ਨਹੀਂ ਹੈ ਇਸ ਦਾ ਖਿਆਲ ਰੱਖਣਾ ਚਾਹੀਦਾ ਮਿਹਨਤ ਦੇ ਨਾਲ ਹੀ ਚੀਜ਼ਾਂ ਨੇ ਸਦਾ ਸੱਜਣ ਤੁਹਾਡੇ ਸਾਹਮਣੇ ਆ ਦੁਨੀਆ ਦੇ ਵਿੱਚ ਗੱਲਬਾਤ ਹੁੰਦੀ ਹੈ ਜਿੱਥੇ ਉਹ ਜਾਂਦੇ ਆ ਜਗਮੀਤ ਸਿੰਘ ਵਰਗੇ ਮੁੰਡੇ ਆ ਪ੍ਰੋਟੋ ਦੇ ਵਿੱਚ ਜਿਹੜਾ ਕੰਮ ਕਰ ਰਹੇ ਨੇ ਤੇ ਜਿਹਦੇ ਤੇ ਲੋਕ ਮਾਣ ਕਰ ਰਹੇ ਕਮਿਟੀ ਆ ਕੇ ਕਹਿੰਦੀ ਆ ਕਿ ਸਾਡੇ ਨਾਲ ਖੜਦਾ ਉਹਨਾਂ ਨੂੰ ਕਹਿੰਦੀ ਆ ਜਿਹੜੇ ਖੜਦੇ ਨਰੇਸ਼ ਸ਼ੁਕਲਾ ਜੀ ਮੇਰੇ ਨਾਲ ਨੇ ਹੁਣ ਮਦਰ ਇੰਡੀਆ ਦੇ ਪ੍ਰੋਡਕਟਸ ਬਾਰੇ ਗੱਲਬਾਤ ਹੋਏਗੀ ਪਲੀਜ਼ ਇਹਨੂੰ ਸਮਝੋ ਪੇਟ ਸੈਗਮੈਂਟ ਹੁੰਦੀਆਂ ਜਿੰਨੀਆਂ ਵੀ ਸਾਡੇ ਵਪਾਰੀ ਵੀਰ ਨੇ ਕੋਈ ਤੁਹਾਡੀ ਕਿਸੇ ਚੀਜ਼ ਦਾ مشਵਰਾ ਕੋਈ ਕੰਪਲੇਂਟ ਹੈ ਉਹਨਾਂ ਦੇ ਨਾਲ ਤੁਸੀਂ ਸਿੱਧੀ ਗੱਲ ਕਰ ਸਕਦੇ ਯਸ ਸਾਡੀਆਂ ਕਈ ਵੀ ਗੱਲ ਉਹ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਪਰ ਫਿਰ ਵੀ ਕਈਆਂ ਨੂੰ ਕੋਈ ਮੁਸ਼ਕਲ ਹੁੰਦੀ ਆ ਤਨਰੇਸ਼ ਸ਼ੁਕਲਾ ਜੀ ਕਹਿੰਦੇ ਮੇਰੇ ਨਾਲ ਸਿੱਧੀ ਗੱਲ ਕਰ ਲਿਆ ਕਰੋ ਕੋਈ ਵੀ ਕਿਸੇ ਕਿਸਮ ਦੀ ਉਹਨਾਂ ਦੇ ਪ੍ਰੋਡਕਟ ਬਾਰੇ ਗੱਲਬਾਤ ਹੈ ਨਰੇਸ਼ ਸ਼ੁਕਲਾ ਜੀ ਤੁਹਾਡਾ ਸਵਾਗਤ ਸ੍ਰੀ ਅਕਾਲ ਹਾਂ ਤੁਹਾਨੂੰ ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਕਲੀ ਆਪਣੀ ਸੈਗਮੈਂਟ ਹੁੰਦੀ ਆ ਬੁੱਧਵਾਰ ਨੂੰ ਜੀ ਕੁਝ ਨਵੀਂ ਖਬਰ ਮਦਰ ਇੰਡੀਆ ਤੇ ਨਵਾਂ ਪ੍ਰੋਡਕਟ ਕੋਈ ਆਇਆ ਉਸ ਬਾਰੇ ਦੱਸੋ ਜੀ ਹਾਂਜੀ ਨਵੇਂ ਪ੍ਰੋਡਕਟਸ ਦੱਸਣ ਤੋਂ ਪਹਿਲਾਂ ਮੈਂ ਕਿ ਸਭੇ ਜਰੂਰ ਦੱਸ ਦਿਆਂ ਕਿ ਅਸੀਂ ਚਾਰਜ ਨੇ ਪਹਿਲਾਂ ਇੱਕ ਸੇਲ ਲਾਈ ਸਪੈਸ਼ਲ ਐਕਸੀਟ ਅਸੀਂ ਸਾਡੇ ਪਣ ਪਰਮਾ ਦਾ ਧੰਨਵਾਦ ਧੰਨਵਾਦੀ ਲਾਇਸਿਕਾ ਵੀ 142 ਚਾਰੋ ਦਾ ਤੁਸੀਂ ਕੋਈ ਵੀ ਮਦਰ ਇੰਡੀਆ ਦੇ ਸਮਾਨ ਆ ਕੇ ਖਰੀਦੋ ਆਪਣੀ ਮਰਜ਼ੀ ਦਾ ਤੁਸੀਂ ਔਨ ਦਾ ਸਪਾਰਟ ਤੁਸੀਂ ਸੇਮ ਟਾਈਮ ਤੇ 42 ਡਾਲਰ ਦੀ ਆਪਣੀ ਮਰਜ਼ੀ ਦਾ ਤੁਸੀਂ ਕੋਈ ਵੀ ਸਮਾਨ ਫ੍ਰੀ ਲੈ ਸਕਦੇ ਆ ਪਹਿਲੀ ਗੱਲ ਤੇ ਹੈ ਕਿ 28 ਫਰਵਰੀ ਤੱਕ ਤੁਸੀਂ ਆ ਸਕਦੇ ਹੈਗੇ ਆ ਸਾਡੇ ਸਟੋਰ ਦੇ ਉੱਤੇ ਕੋਈ ਵੀ ਉਸੇ ਵੇਲੇ ਤੁਸੀਂ 42 ਡਾਲਰ ਦਾ ਆਪਣੀ ਮਰਜ਼ੀ ਦਾ ਸਹੀ ਸਮਾਨ ਲੈ ਸਕਦੇ ਆ ਇਹ ਸਾਡੀ ਹੈਗੀ ਐ ਸਪੈਸ਼ਲ ਇਸ ਵੀਕ ਅੰਕਲ ਤੱਕ ਉਸ ਤੋਂ ਬਾਅਦ ਫਿਰ انا ਅੱਜ ਮਦਰ ਇੰਡੀਆ ਦੇ ਅਗਰਵਤੀ ਬਾਰੇ ਗੱਲ ਕਰੂੰਗਾ ਸਾਡੀ ਮਦਦ ਜੀ ਗਰਵਤੀ ਜਿਹੜੀ ਕਿ 60 ਡਿਫਰੈਂਟ ਫ੍ਰੈਗਰੈਂਸ ਦੇ ਵਿੱਚ ਹੈਗੀ ਆ ਜਿਹਦੇ ਵਿੱਚ ਕੋਈ ਕੈਮੀਕਲ ਜਾਂ ਕਾਲਾ ਧੂਆ ਨਹੀਂ ਹੈਗਾ ਬਹੁਤ ਹੀ ਅੱਛੀ ਸੁਗੰਧ ਹੈਗੀ ਆ ਇਹ ਤੁਸੀਂ ਮਦਰ ਇੰਡੀਆ ਦੇ ਸਟੋਰ ਤੋਂ ਵੀ ਲੈ ਸਕਦੇ ਆ 66 49 ਮੇਨ ਸਟਰੀਟ ਮੇਨਟੇ ਦਾ 50 ਤੇ ਹੈਗਾ ਜਾਂ ਤੁਸੀਂ ਕਿਸੇ ਵੀ ਭਾਰਤੀ ਗ੍ਰੋਸਰੀ ਸਟੋਰ ਤੋਂ ਸਾਡਾ ਮਦਰ ਇੰਡੀਆ ਦਾ ਪ੍ਰੋਡਕਟਸ ਖਰੀਦ ਸਕਦੇ ਹੈਗੇ ਆ ਜਿੱਦਾਂ ਕਿ ਅਸੀਂ ਹਮੇਸ਼ਾ ਦੱਸਦੇ ਆ ਕਿ ਸਾਡੀਆਂ ਲੋਕੇਸ਼ਨਸ ਕ੍ਰਾਸ ਕੈਨੇਡਾ 250 ਲੋਕੇਸ਼ਨਸ ਹੈਗੀਆਂ ਜਿੱਥੇ ਸਾਡੇ ਮਦਰ ਇੰਡੀਆ ਦੇ ਪ੍ਰੋਡਕਟਸ ਤੁਸੀਂ ਖਰੀਦ ਸਕਦੇ ਆ ਜਿਨ੍ਹਾਂ ਦੇ ਵਿੱਚ ਸਪੈਸ਼ਲੀ ਟੋਰਾਂਟੋ ਦਾ ਏਰੀਆ ਹੈਗਾ ਜਿਹਦੇ ਵਿੱਚ ਤੁਸੀਂ ਏਸ਼ੀਅਨ ਫੂਡ ਵਾਲੇ ਹੈਗੇ ਆ ਉਹ ਸਾਡੇ ਸਾਰੇ ਪ੍ਰੋਡਕਟਸ ਰੱਖਦੇ ਹੈਗੇ ਆ ਉਹਨਾਂ ਤੋਂ ਲੈ ਸਕਦੇ ਆ ਕੈਲਗਰੀ ਦੇ ਵਿੱਚ ਫਰੂਟੀ ਕੈਨਾ ਤੇ ਓਕੇ ਜਨਰਲ ਫੂਡ ਐਡਮਿੰਟਨਸ ਦੇ ਵਿੱਚ ਵੀ ਸਾਡੇ ਡਿਸਟ੍ਰਿਬਿਊਟ ਹੈਗੇ ਆ ਇਨ ਸਟਾਈਲ ਉਹਨਾਂ ਦੀ ਸ਼ਾਪ ਹੈਗੀ ਆ ਉੱਥੋਂ ਵੀ ਲੈ ਸਕਦੇ ਆ ਐਬਸਪੋਰ ਦੇ ਵਿੱਚ ਦਸ਼ਮੇਸ਼ ਫੂਡ ਗਿਆਨ ਸਵੀਟ ਸਰੀ ਦੇ ਵਿੱਚ ਤੁਸੀਂ ਸਾਡਾ ਪ੍ਰੋਡਕਟਸ ਹੁਣ ਤੁਸੀਂ ਫਰੂਟੀ ਕੈਨਾਲ 137 ਤੇ 72 ਤੇ on the ground ਤੇ ਹੈ ਕਿ ਤੁਸੀਂ ਉੱਥੋਂ ਸਾਡਾ ਇਹ ਸਮਾਨ ਮਦਰ ਇੰਡੀਆ ਦਾ ਪ੍ਰੋਡਕਟ ਲੈ ਸਕਦੇ ਆ ਬਾਕੀ ਬੈਲਿੰਗ ਹੈਮ ਪੋਰਟਲੈਂਡ ਸੈਕਰਮੈਂਟੋ ਇਹ ਸਾਰੀ ਏਰੀਆ ਵਿੱਚ ਸਾਡਾ ਸਮਾਨ ਅਵੇਲੇਬਲ ਹੈਗਾ ਔਰ ਇਸ ਨਾਲ ਤੁਸੀਂ ਅਗਰ ਸਾਡੇ ਏਜੰਟ ਬਣਨਾ ਚਾਹੁੰਦੇ ਆ ਮਦਰ ਇੰਡੀਆ ਦੇ ਪ੍ਰੋਡਕਟਸ ਵਿੱਚ ਕੈਨਾਲ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਆ 604 430 6077 ਕਿ ਤੁਹਾਨੂੰ ਮੈਂ ਸ਼ਾਇਦ ਦੱਸ ਦਿਆਂ ਕਿ ਸਟ੍ਰੀਡਿਆ ਦੇ ਭੰਡ ਪ੍ਰਾਵਾ ਵਾਸਤੇ ਸਾਡਾ ਆਪਣਾ ਹੀ ਉੱਥੇ ਸ਼ੋਅਰੂਮ ਹੈਗਾ ਉਹਦਾ ਐਡਰੈਸ ਮੈਂ ਜਰੂਰ ਦਊਂਗਾ ਜੀਰਨ ਨੰਬਰ 18549 ਇਸ ਤੇ ਉੱਤਰ ਸੀ ਹਾਂਜੀ ਸਰ ਸ਼ੁਕਲਾ ਜੀ ਜਿਹੜਾ ਜੇ ਯੂਰਪ ਦੇ ਵਿੱਚੋਂ ਜਿਸ ਤਰ੍ਹਾਂ ਦੋਸਤ ਨੇ ਮੇਰੇ ਕੋਲ ਆ ਰਹੀ ਇੰਗਲੈਂਡ ਦੇ ਵਿੱਚ ਉਹ ਪਤਾ ਕਰਦੇ ਸੀ ਪਰ ਹੁਣ ਉੱਥੇ ਨੂੰ ਜੇ ਭੇਜਾਂਗੇ ਉਹਦਾ ਕੋਰੀਅਰ ਵਗੈਰਾ ਬੜਾ ਮਹਿੰਗਾ ਹੋ ਜਾਊ ਜੀ ਫਿਰ ਉਹਨੂੰ ਕਿਸ ਤਰ੍ਹਾਂ ਸੈੱਟ ਕਰੋਗੇ ਬਿਲਕੁਲ ਕੈਨੇਡਾ ਦੇ ਮਰੇ ਸ਼ੁਕਲਾ ਜੀ ਨਾਲ ਗੱਲਬਾਤ ਹੋ ਰਹੀ ਸੀ ਸ਼ਾਇਦ ਕੋਈ ਲਾਈਨ ਦੀ ਮੁਸ਼ਕਲ ਆ ਗਈ ਉਹ ਗੱਲਬਾਤ ਦੱਸ ਰਹੇ ਸੀ ਕਿਉਂਕਿ ਯੂਰਪ ਦੇ ਵਿੱਚ ਤੁਹਾਨੂੰ ਇਸ ਡਾਈ ਦੇ ਬਾਰੇ ਤੁਸੀਂ ਚਾਹੁੰਦੇ ਹੋ ਮੰਗਵਣੀ ਉਹ ਪਤਾ ਕਰ ਲਿਓ ਇੱਕ ਜਾ ਤਾਂ ਮੰਗਾ ਲਿਓ ਸਸਤੀਆਂ ਪਹਿਣਗੀਆਂ ਤੇ ਨਹੀਂ ਫਿਰ ਮਹਿੰਗੀ ਤੁਹਾਨੂੰ ਜਦ ਪੈਂਦੀ ਹੈ ਤਾਂ ਫਿਰ ਉਹਦੇ ਲਈ ਇਕੱਲੀ ਕਾਰੀ ਭੇਜਣਾ ਇਹ ਔਖਾ ਇਕੱਲੀ ਇੱਕ ਸ਼ਿਪਮੈਂਟ ਦੇ ਵਿੱਚ ਕਈ ਤੁਸੀਂ ਯਾਰ ਦੋਸਤ ਰਲ ਕੇ ਫਿਰ ਮੰਗਾ ਲਓ ਤਾਂ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਦਫ਼ਤਰ ਖੋਲ ਦਿੱਤਾ ਅਮਰੀਕਾ ਕੈਨੇਡਾ ਦੇ ਵਿੱਚ ਮੁਸ਼ਕਲ ਕੋਈ ਨਹੀਂ ਅਮਰੀਕਾ ਦਾ ਵੀ ਬਹੁਤ ਸਾਰਾ ਹਿੱਸਾ ਹੈ ਜਿੱਥੇ ਹਲੇ ਕੋਈ ਰਿਟੇਲ ਜਗ੍ਹਾ ਤੇ ਸ਼ਾਇਦ ਨਾ ਮਿਲਦੀ ਉਹ ਤਾਂ ਤੁਸੀਂ ਇਹਨਾਂ ਨਾਲ ਗੱਲ ਸਿੱਧੀ ਕਰ ਨਰੇਸ਼ ਸ਼ੁਕਲਾ ਜੀ ਮੇਰੇ ਨਾਲ ਨੇ ਲਾਈਨ ਡਿਸਕਨੈਕਟ ਹੋ ਗਈ ਸੀ ਦੁਬਾਰਾ ਫੇਰ ਗੱਲਬਾਤ ਉਠੀ ਤੋਰਦੇ ਆ ਸ਼ੁਕਲਾ ਜੀ ਗੱਲ ਸੁਣ ਰਹੀ ਆ ਉਹ ਤੁਹਾਨੂੰ ਹਾਂਜੀ ਬਿਲਕੁਲ ਸੌਰੀ ਲਾਈਨ ਕੱਟ ਹੋ ਗਈ ਸੀ ਐਸ ਗੱਲ ਕਰ ਰਸ ਕੇ ਕਸਟਮਰ ਜਿਹੜੀ ਇੰਡੀਆ ਚ ਇੰਡੀਆ ਨੂੰ ਕਾਫੀ ਪੈਂਟਰਾ ਲੈ ਕੇ ਜਾਂਦੇ ਆ ਉਹਨੇ ਸੇ ਪੁੱਛਦੇ ਰਹਿੰਦੇ ਹੈਗੇ ਸਾਨੂੰ ਇੰਡੀਆ ਚ ਪ੍ਰੋਡਕਟ ਮਿਲੂਗਾ ਇੰਡੀਆ ਚ ਹਸਲੇ ਪ੍ਰੋਡਕਟਸ ਆਰ ਅਵੇਲੇਬਲ ਨਹੀਂ ਹੈ ਲੇਕਿਨ ਦੱਸਣਾ ਚਾਹਣਾ ਆਪਣੇ ਸਾਰੇ ਪਨਾਵਨ ਨੂੰ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਜੀਟੀ ਨਿਊਜ਼ੀਲੈਂਡ ਆਸਟ੍ਰੇਲੀਆਸ ਕਵਰ ਕੀਤਾ ਹੈ ਲੇਕਿਨ ਐਂਡ ਆਫ ਅਕਤੂਬਰ ਤੱਕ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਪੂਰਾ ਇੰਡੀਆ ਦੇ ਕੰਨੀ ਕੰਨੀ ਕੰਪਨੀ ਨੂੰ ਪੰਜਾਬ ਦੇ ਬਾਅਦ ਜਿਹੜੇ ਅਸੀਂ ਜ਼ਰੂਰ ਕਵਰ ਕਰਾਂਗੇ ਔਰ ਇਹਦੀ ਪੂਰੀ ਜਾਣਕਾਰੀ ਤੁਹਾਡੇ ਪ੍ਰੋਗਰਾਮ ਵਿੱਚ ਵੀ ਦਵਾਂਗੇ ਔ ਲੈਕਸਾ ਆਂਦੇ ਹੈਗੇ ਆ ਉਹਨਾਂ ਆ ਸਪੈਸ਼ਲੀ ਸਾਡੀ ਬੋਤਲ ਆ ਰਹੀ ਹੈ ਉਹ ਵੀ ਜਲਦੀ ਆਏਗੀ ਉਹਦੀ ਵੀ ਤੁਹਾਨੂੰ ਇਨਫਰਮੇਸ਼ਨ ਦਵਾਂਗੇ ਉਹ ਸਿਰਫ ਟੱਚਾਂ ਵਾਸਤੇ ਹੀ ਤਾਂ ਕਿ ਜਿਹੜੇ ਕੰਪਲੇਂਟ ਕਰਦੇ ਸੀਗੇ ਕਿ ਉਹਨਾਂ ਨੂੰ ਸੈਕੰਡ ਜਿਹੜਾ ਪੈਕਟ ਖੋਲਣਾ ਪੈਂਦਾ ਉਹਨਾਂ ਨੂੰ ਫਿਰ ਪੂਰਾ ਯੂਜ਼ ਕਰਨਾ ਪੈਂਦਾ ਕਾਫੀ ਬੇਸਤ ਹੋ ਜਾਂਦਾ ਉਹਨਾਂ ਵਾਸਤੇ ਅਸੀਂ ਬੋਤਲ ਤਿਆਰ ਕਰ ਰਹੇ ਆ ਬਹੁਤ ਜਲਦੀ ਸਾਡੇ ਤੁਸੀਂ ਇਹ ਸ਼ੋਅਰੂਮ ਤੋਂ ਵੀ ਲੈ ਸਕਦੇ ਹੋ ਡਿਸਟ੍ਰੀਬਟਰ ਤੋਂ ਵੀ ਲੈ ਸਕਦੇ ਆ ਜੀਆ ਅਗਰ ਸਾਡੇ ਪ੍ਰੋਡਕਟਸ ਬਾਰੇ ਹੋਵੇ ਹਮੇਸ਼ਾ ਤੁਸੀਂ ਮੈਨੂੰ ਕਾਲ ਕਰ ਸਕਦੇ ਆ 604 430 677 ਇਸੇ ਕਰਕੇ ਅਸੀਂ ਸਮਰਪਿਤ ਵਿੱਚ ਟਾਈਮ ਟੂ ਟਾਈਮ ਸਰੀ ਜਾਵਦਾ ਜਿੰਨੇ ਵੀ ਆਪਣੇ ਡਿਸਟ੍ਰੀਬਟਰ ਉੱਥੇ ਜਾ ਕੇ ਆਪਣੇ ਪੋਸਟ ਲਾਣੇ ਆ ਅਸੀਂ ਪਰਸਨਲੀ ਨਾ ਜਾਣਾ ਉੱਥੇ ਇਸੇ ਕਰਕੇ ਚਾਹੀਦਾ ਤਾਂ ਕਿ ਸਾਡਾ ਪਰਸਨਲ ਕੰਟੈਕਟ ਸਿੱਧਾ ਹੀ ਸੰਪਰਮ ਨਾ ਹੋਵੇ ਉਹਨਾਂ ਦੇ ਜਿਹੜੇ ਕਨਸਰਨ ਅਸੀਂ ਉਹਨਾਂ ਦਾ ਜਵਾਬ ਦੇ ਸਕੀਏ ਜੀ ਅੱਛਾ ਜਿਹੜਾ ਭੇਜਣਾ ਅੰਰੇ ਸ਼ੁਕਲਾ ਜੀ ਉਹਦਾ ਤਾਂ ਨਹੀਂ ਖਰਚਾ ਵੱਧ ਪੈਂਦਾ ਫਿਰ ਲੋਕਾਂ ਨੂੰ ਬਿਲਕੁਲ ਤੁਸੀਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕਿਸੇ ਵੀ ਟਾਊਨ ਸ਼ਹਿਰ ਦੇ ਵਿੱਚ ਆ ਗਿਆ ਤੁਹਾਨੂੰ ਅਸੀਂ ਦਿਲ ਦਾ ਬਿਲਕੁਲ ਚਾਰਜ ਨਹੀਂ ਕਰ ਬਿਲਕੁਲ ਹੀ ਚਾਰਜ ਨਹੀਂ ਕਰਦੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਤੁਸੀਂ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਦਿਲ ਦੀ ਨਹੀਂ ਦਾ ਉਹਦਾ ਕਾਸਟ ਨਹੀਂ ਚਾਰਜ ਨਹੀਂ ਕਰਦੇ ਔਰ ਸਾਡੀ ਬਾਈ ਪੋਸਟ ਆਫਰ ਜਾਂਦਾ ਹੈ ਚਾਰ ਦਿਨ ਦੇ ਵਿੱਚ ਤੁਹਾਡੇ ਘਰ ਜਿੱਡੇ ਪਹੁੰਚ ਸਕਦੇ ਹੈ ਅੱਛਾ ਤੇ ਦੂਸਰੇ ਪੌਂਚ ਛੋਟਿਆਂ ਤੋਂ ਪਹਿਲਾਂ ਬੋਲੋ ਤਿਆਰ ਹੋ ਜੀ ਹੁਣ ਦੀ ਆਪਣੇ ਮਦਰ ਇੰਡੀਆ ਤੇ ਇਹ ਹਾਂਜੀ ਬਿਲਕੁਲ ਬੋਟਲ ਜਿੱਦਾਂ ਦੱਸਿਆ ਸੀ ਕਿ ਐਂਡ ਆਫ ਫਰਬੀਤਾ ਕੇ ਸਾਡੀ ਉਹ ਪੋਸਟ ਆ ਜਾਂਦੀ ਹੈ ਐਕਚੁਅਲੀ ਉਹ ਅੱਜ ਕੁਝ ਮੈਂ ਇਸ ਵੇਲੇ ਕੋਸ਼ਿਸ਼ ਹੈਗੀ ਆ ਬੋਟਲ ਦੇ ਸੋ ਮੈਂ ਦਿਖਾ ਵੀ ਸਕਦਾ ਬਹੁਤ ਸੋਹਣੀ ਬੋਟਲ ਹੈਗੀ ਆ ਬਿਲਕੁਲ ਉਹਦੇ ਵਿੱਚ ਮਿਕਸ ਕੀਤਾ ਆ ਤੁਸੀਂ ਕੁਝ ਨਹੀਂ ਕਰਨਾ ਹੈਗਾ ਉਹਦੇ ਤੇ ਬਰਸ਼ ਲੱਗਾ ਆ ਇੱਕ ਬਟਨ ਲੱਗਾ ਆ ਫਸ ਬਟਨ ਨੂੰ ਦਬਾਓ ਜਿੰਨਾ ਕਿ ਤੁਹਾਨੂੰ ਟੱਚ ਅਪ ਚਾਹੀਦਾ ਦਾੜੀ ਮੋਛਾਂ ਜਾਂ ਤੁਸੀਂ ਕਈ ਤਰ੍ਹਾਂ ਦੇ ਵਾਲ ਦਾ ਕੰਨਾਂ ਦੇ ਕੋਲ ਮੱਥੇ ਦੇ ਕੋਲ ਆ ਆ ਤੁਹਾਨੂੰ ਪੂਰਾ ਪੈਕਟ ਖੋਲਣ ਦੀ ਲੋੜ ਨਹੀਂ ਕਾਣੀ ਚਾਚਾ ਆਪਾਂ ਵਾਸਤੇ ਤੁਸੀਂ ਉਹ ਬਿਲਕੁਲ ਪ੍ਰੋਪਰ ਯੂਜ਼ ਕਰ ਸਕਦੇ ਆ ਅੱਜ ਸਵੇਰੇ ਮੈਨੇ ਥੋੜਾ ਜਲਦੀ ਆ ਰਹੀ ਆ ਔਰ ਤੁਹਾਨੂੰ ਅਸੀਂ ਜ਼ਰੂਰ ਦਵਾਂਗੇ ਜਿੰਨੇ ਵੀ ਸਾਡੇ ਡਿਸਟ੍ਰੀਬਿਊਟਰ ਅਸੀਂ ਉਹਨਾਂ ਨੇ ਇਹ ਸਾਰਾ ਪ੍ਰੋਡਕਟ ਆਪਣਾ ਪ੍ਰਚਾਰਾ ਕਾਫੀ ਤੁਹਾਡੇ ਪ੍ਰਚਾਰ ਦੇ ਫੋਨ ਆਉਂਦੇ ਹੈਗੇ ਆ ਕਿ ਸਾਨੂੰ ਦੱਸੋ ਕਦੋਂ ਐਕਸਾਈਟਿਡ ਕਿਉਂਕਿ ਮੈਂ ਸਮਝਦਾ ਕਿ ਉਹਨਾਂ ਨੂੰ ਸੈਕੰਡ ਪੈਕਟ ਖੋਲੋਂ ਦੇ ਲੋਨਿਤੋਂ ਜਿੱਤੇ ਕਿਓ ਸਕਿੰਟ ਤੱਕ ਜਦੋਂ ਖੋਲਦੇ ਆ ਉਹਨਾਂ ਦਾ ਕਾਫੀ ਡੇਸਟ ਹੋ ਜਾਂਦਾ ਹੈਗਾ ਅੱਛਾ ਜੀ ਜਿਹੜੇ ਸਕਿਨ ਪ੍ਰੋਡਕਟਸ ਨੇ ਮਦਰ ਇੰਡੀਆ ਦੇ ਉਹਦੇ ਬਾਰੇ ਵੀ ਨਰੇਸ਼ ਕਮਰਸ਼ੀਅਲ ਆ ਬਹੁਤ ਯੂਜ਼ ਕਰਕੇ ਲੋਕਾਂ ਵੇਖ ਲਿਆ ਤੇ ਉਹਦੇ ਦੇ ਉਹਦੇ ਸਾਈਡ ਇਫੈਕਟਸ ਕਹਿੰਦੇ ਬਹੁਤ ਨੇ ਹੁਣ ਹਰਬਲ ਜਿਹੜੇ ਪ੍ਰੋਡਕਟਸ ਨੇ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਜਿਹੜੀ ਚਮੜੀ ਦੇ ਲਈ ਜਾਂ ਉਹਨੂੰ ਨਖਾਰਨ ਲਈ ਟਾਈਟ ਕਰਨ ਲਈ ਕਿਹੜਾ ਕਿਹੜਾ ਪ੍ਰੋਡਕਟ ਹੈ ਜਿਹੜਾ ਤੁਸੀਂ ਰეკਮੈਂਡ ਕਰਦੇ ਹੋ ਮੈਂ ਦੇਖੋ ਗਿਰਸਾ ਵੀ ਦਾਇਆ ਕਿ ਜੇ ਨਾਰਥ ਅਮਰੀਕਾ ਦੇ ਵਿੱਚ ਲਾਈਫ ਆਪਣੀ ਬਹੁਤ ਈਜ਼ੀ ਹੈਗੀ ਆ ਟਾਈਮ ਇਨਾ ਹੁੰਦਾ ਨਹੀਂ ਹੈਗਾ ਮੈਂ ਸਰਕਲ ਆ ਜਾਂਦੀ ਆ ਜਾਂ ਬਲੈਕ ਮਾਰਕਸ ਹੈਗੀ ਆ ਮੈਂ ਨਹੀਂ ਕਹਿੰਦਾ ਕਿ ਉਹ 100% ਬਲੈਕ ਮਾਰਕਸ ਪੂਰੇ ਹੋਣਗੇ ਲੇਕਿਨ ਕਾਫੀ ਮਾਤਰਾ ਵਿੱਚ ਆਊਟ ਹੋ ਜਾਂਦੇ ਕਾਫੀ ਆਫ ਹੋ ਜਾਂਦੇ ਹੈਗੇ ਆ ਬਹੁਤ ਹੀ ਪ੍ਰਾਈਸ ਨਹੀਂ ਹੈ ਔਰ ਬੜਾ ਰੀਜ਼ਨਬਲ ਹੈ ਸਾਡੇ ਪ੍ਰੋਡਕਟ ਦਾ ਇਹ ਫਾਇਦਾ ਤੁਹਾਨੂੰ ਹੈਗਾ ਮੈਂ ਹਮੇਸ਼ਾ ਕਹਿੰਦਾ ਅਗਰ ਮੰਨਵਾ ਦੇ ਤੁਸੀਂ ਹੋ ਔਰ ਚੀਜ਼ਾਂ ਖਾਣੀਆਂ ਦਵਾਈਆਂ ਖਾਣੀਆਂ ਆ ਸਪੋਸ਼ ਸਪੈਸ਼ਲੀ ਤੁਹਾਨੂੰ ਮਾਈਗਰੇਨ ਸਿਰ ਦਰਦ ਹੈਡੈਕ ਹੋ ਜਾਂਦੀ ਆ ਅਗਰ ਤੁਹਾਨੂੰ ਤੁਸੀਂ ਦਵਾਈ ਖਾਣੀਆਂ ਅਗਰ ਤੁਹਾਨੂੰ ਫਾਇਦਾ ਨਹੀਂ ਹੈ ਤਾਂ ਉਹਦਾ ਬੈਡ ਰਿਸਪੌਂਸ ਜਾਂ ਰੈਐਕਸ਼ਨ ਜ਼ਰੂਰ ਹੋਦੇ ਹੁੰਦੇ ਹੈਗੇ ਸਾਡੇ ਪ੍ਰੋਡਕਟ ਹੈਗੇ ਆ ਇਹਦਾ ਤੁਹਾਡੀ ਕਿੱਕਸਟਾਰਟ ਸਾਡੀ ਹੈਗੀ ਹੈ ਬਹੁਤ ਪਪੂਲਰ ਹੈਗੀ ਆ ਮਾਈਗਰੇਨ ਦਾ ਸਿਰ ਦਰਦ ਆ ਤੁਸੀਂ ਥੋੜੀ ਜਿਹੀ ਸੇਰੇ ਸ਼ਾਮ ਲਾਓ ਤੁਹਾਨੂੰ ਰਾਹ ਮਾਏਦਾ ਤੁਹਾਨੂੰ ਕਾਫੀ ਪੇਨ ਤੋਂ ਰਾਹਤ ਮਿਲਦੀ ਹੈਗੀ ਆ ਔਰ ਜਿੰਨੇ ਵੀ ਸਾਡੇ ਪ੍ਰੋਡਕਟਸ ਸਾਰੇ ਆਰਗੇਨਿਕ ਹੈਗੇ ਆ ਸਾਰੇ ਆਪਰੂਵਡ ਬਾਏ தி ਗਵਰਨਮੈਂਟ ਆਫ ਕੈਨੇਡਾ ਜਿੰਨੇ ਵੀ ਸਾਡੇ ਪ੍ਰੋਡਕਟਸ ਕੋਸਪੈਸ਼ਲੀ ਗਲੱਡ ਪਸ਼ੂ 슈ਗਰ ਡਾਇਬੀਟੀ ਵੇਟ ਲਾਸ ਅੱਖਾਂ ਸਟੈਂਪ ਲੱਗੀ ਹੈਗੀ ਆ ਔਰ ਹੈਗੇ ਆ ਜੋ ਅਸੀਂ ਤੁਹਾਨੂੰ ਇਹਦੇ ਉੱਤੇ ਗੱਲ ਦੱਸਦੇ ਹੈਗੇ ਆ ਲੱਗੂ ਸਹੀ ਹੁੰਦੀ ਆ ਪਰ ਕੁਝ ਸਪੈਸ਼ਲੀ ਜਿਹੜੇ ਹੈਅ ਡਾਈ ਯੂਜ਼ ਕਰਦੇ ਹੈਗੇ ਆ ਉਹਨਾਂ ਦੀ ਸਕਿਨ ਬਹੁਤ ਹੀ ਜ਼ਿਆਦਾ ਸेंसिटਿਵ ਹੋਵੇ ਤਾਂ ਉਹਨਾਂ ਨੂੰ ਖੂਬੀ ਬਹੁਤੀ ਪ੍ਰੋਬਲਮ ਹੋ ਜਾਂਦੀ ਹੈ ਜਿਸ ਦਾ ਸਾਹਾਂ ਦੇ ਵਿੱਚੋਂ ਇੱਕ ਦੋ ਭਾਂਤਰਾਵਾਂ ਦੀ ਆ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਨਾਂ ਵਾਸਤੇ ਹਮੇਸ਼ਾ ਕਹਿੰਦੇ ਆ ਸਾਨੂੰ ਤੁਸੀਂ ਕੰਟੈਕਟ ਕਰੋ ਉਹਦੇ ਵਾਸਤੇ ਤੁਸੀਂ ਮਦਰ ਇੰਡੀਆ ਦਾ ਗ੍ਰੀਨ ਪੈਕੇਟ ਆਕਸੀ 99 ਉਹਨੂੰ ਕਹਿੰਦੇ ਹੈਗੇ ਆ ਉਹ ਯੂਜ਼ ਕਰੋ ਉਹ ਤੁਹਾਨੂੰ ਦੂੱਕੇ ਕੁਝ ਨਹੀਂ ਹੋਏਗਾ ਲੇਕਿਨ ਅਗਰ ਤੁਹਾਨੂੰ ਕਿਸੇ ਵੀ ਭਾਂਤਰਾਵ ਨੂੰ ਕੋਈ ਸੰਸਕਰ ਜਾਂ ਕੋ ਪ੍ਰੋਬਲਮ ਜ਼ਿਆਦਾ ਹੀ ਹੈਗੀ ਆ ਫੰਡ ਜੀ ਲੋ ਦੱਸੋ ਅੱਜ ਇਹਦਾ ਅਲਾਇ ਦੱਸਾਂਗੇ ਤੁਸੀਂ ਆਹ ਪ੍ਰੋਡਕਟ ਕਰੋ ਔਰ ਬਾਕੀ ਆ অর্ਗੈਨਿਕ ਆ ਆਪਣੂ ਬਾਈ ਟੋਮੈਟੋਸ ਕੈਂਡਾ ਤੇ ਅਖੀਰ ਦੇ ਵਿੱਚ ਹੋਰ ਕੋਈ ਜਾਣਕਾਰੀ ਰਹਿੰਦੀ ਹੋਵੇ ਜੀ ਉਹ ਦੇਖ ਸਕਦੇ ਹੋ ਤੇ ਆਪਣਾ ਫੋਨ ਨੰਬਰ ਦੱਸਿਓ ਤੇ ਇੱਕ ਵੈਬਸਾਈਟ ਵੀ ਕਹਿੰਦੇ ਸੀ ਵੀ ਵੈਬਸਾਈਟ ਤੇ ਆਰਡਰ ਕਰ ਸਕਦੇ ਹੋ ਵੈਬਸਾਈਟ ਬਣੀ ਕਿ ਨਹੀਂ ਉਹ ਵੀ ਦੱਸੋ ਬਣੀ ਵੈਬਸਾਈਟ ਬਣ ਗਈ ਆ ਥੋੜੀ ਜਿਹੀ ਕਿਉਂਕਿ ਸਾਡੇ ਪ੍ਰੋਡਕਟ 375 ਆਈਟਮਾ ਸਾਡੀਆਂ ਹੋਣ ਕਰਕੇ ਬਿਕੋਜ਼ 에ਵਰੀ ਇਚ ਡੀਟੇਲਸ ਪਾ ਰਹੇ ਹੈਗੇ ਆ दैट्स ਸਾਡੀ ਇੰਡੀਆ ਲੇਕਿਨ ਬਹੁਤ ਇਚ ਡੀਟੇਲਸ ਦੇ ਰਹੇ ਆ ਉਹਦੇ ਕਰਕੇ ਥੋੜਾ ਟਾਈਮ ਲੱਗ ਰਿਹਾ ਹੈਗਾ ਲੇਕਿਨ ਬਹੁਤ ਜਲਦੀ ਤਿਆਰ ਹੋ ਜਾਏਗੀ ਲੇਕਿਨ ਤੁਸੀਂ ਸਾਡੇ ਅੱਜ ਮਦਰ ਇੰਡੀਆ ਸ਼ੋਰੂਮ ਤੇ ਜਰੂਰ ਆਓ ਐਸ ਵੀ ਅੰਜੋ 28th ਆਫ ਫਰਵਰੀ ਤੱਕ ਜਿੰਨੇ ਵੀ ਤਾਂ ਆਪਣੀ 100 ਬਤਾ ਲਈ ਜਲਦਾ ਸਮਾਨ ਖਰੀਦੋ ਕਿ ਅਸੀਂ ਚਾਰ ਜਨਵਰੀ ਨੇ ਸਪੈਸ਼ਲ ਇਹ ਆਫਰ ਦਿੱਤੀ ਸੀਗੀ ਅਨੌਸੀ ਇਸ ਸੇਮ ਆਫਰ ਦੇ ਰਹੇ ਹੈਗੇ ਆ ਅੰਟੀਲ 28 ਤੱਕ 150 ਦਲ ਦਾ ਦਸਮਾਨ ਆਪਣੀ ਮਰਚ ਦਾ ਖਰੀਦੋ ਔਨ ਦਾ ਸਪਾਰਟ ਤੁਸੀਂ 42 ਦਲ ਦੀ ਚੀਜ਼ ਆਪਣੀ ਮਰਚ ਦੀ ਕੋਈ ਵੀ ਮਦਰ ਇੰਡੀਆ ਦੀ ਲੈ ਸਕਦੇ ਹੈਗੇ ਆ ਸਾਡਾ ਐਡਰੈਸ ਹੈਗਾ 6649 ਮੇਨ ਸਟਰੀਟ ਬੈਂਕੂਵਰ ਮੇਨ ਐਂਡ ਸਿਫਟੀ ਹੈ ਟੈਲੀਫੋਨ ਹੈ 604 430 607 ਧਨਵਾਦ ਜੀ ਨਰੇਸ਼ ਸ਼ੁਕਲਾ ਜੀ ਦਾ ਫੋਨ ਨੰਬਰ ਜੇ ਕਿਸੇ ਵੀ ਹੋਰ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਹੋਵੇ ヘア ਡਾਈ ਵਾਲਾ ਕੰਮ ਸੌਖਾ ਹੈ ਬਾਲਾਂ ਵਲੇਵਾ ਨਹੀਂ ਣਾਉਣ ਵੇਲੇ ਮਾੜਾ ਜਿਹਾ ਹੱਥ ਤੇ ਪਾ ਕੇ ਉਹਨੂੰ ਸ਼ੈਂਪੂ ਕਰ ਲਓ ਤੇ ਸੌਖ ਰਹਿੰਦੀ ਹੈ ਵਧੀਆ ਉਹਦੇ ਰਿਜ਼ਲਟ ਨੇ ਵੱਧ ਛੋਟੇ ਘੱਟ ਵਾਲਾਂ ਤੇ ਲਾਉਣ ਲਈ ਹੁਣ ਬੋਟਲ ਵੀ ਫਿੱਟ ਕਰ ਦਿੱਤੀ ਯੂਰਪ ਵਾਲੇ ਪਾਸੇ ਕੁਲਾਰ ਸਾਹਿਬ ਤੁਹਾਨੂੰ ਵੀ ਭੇਜਾਂਗੇ ਮਾੜਾ ਜਿਹਾ ਕਰਿਓ ਫੋਨ ਐਡਰੈਸ ਦਿਓ ਕਹਿੰਦੇ ਅਨਰੇਸ਼ ਸ਼ੁਕਲਾ ਜੀ ਭੇਜਣਗੇ ਤੁਹਾਨੂੰ ਦੇਖੋ ਟਰਾਈ ਕਰਕੇ ਤੇ ਫਿਰ ਲੰਡਨ ਦੇ ਵਿੱਚ ਵੀ ਗੱਲ ਹੋਣੀ ਉਹਨਾਂ ਨੂੰ ਕਹੋ ਕਾਲ ਕਰਨ ਉਹਨਾਂ ਨੂੰ ਜ਼ੀਫਰੀ ਡਿਲੀਵਰੀ ਤੇ ਓਕੇ ਬਾਈ ਜੀ ਸ਼ੁਕਲਾ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸਸੀ ਗਾ ਜੀ ਸਸੀ ਆਂ ਜੀ ਅੱਬਰੇ ਕਿੱਥੇ ਕਿੱਥੇ ਵੇਖੀਏ ਕੋਈ ਨਾ ਕੋਈ ਕਹਿ ਦਿੰਦਾ ਆਸਟ੍ਰੇਲੀਆ ਵਾਲਿਆਂ ਦਾ ਤਾਂ ਪੱਕਾ ਕਰਤਾ ਹੀਲਾ ਉਹਨਾਂ ਦਾ ਜਿਗਾਰ ਬਣ ਲਿਆ ਉਹਨਾਂ ਨੇ ਆਪਣਾ ਹੀ ਸੰਦ ਲਿਆ ਹੁਣ ਕਹਿੰਦਾ ਕਿੱਥੇ ਨਿਤ ਮੰਗ ਆਊਗਾ ਕੰਮ ਸਾਨੂੰ ਪਤਾ ਪੰਜਾਬ ਦੇ ਪਿੰਡਾਂ 'ਚ ਮੰਗਮਾ ਵੀ ਇਹ ਸਮਾਨ ਲੈ ਜਾਂਦੇ ਸੀ ਉਹ ਕਹਿੰਦਾ ਛੋਟਾ ਸ਼ੀਸ਼ਾ ਤੇਰੇ ਕੋਲ ਹੈ ਇਹ ਵੀ ਦੇ ਯਾਰ ਜਾਂ ਬਾਹਰਲੇ ਵਿਹੜੇ ਲਿਆ ਆਪਣੇ ਕਹਿੰਦਾ ਵੀ ਨਾਲ ਮੰਗਮਾ ਨਹੀਂ ਲੈਣਾ ਕਹਿੰਦਾ ਬਾਹਰਲੇ ਵਿਹੜੇ ਲਿਆ ਕਿਸੇ 'ਚ ਪਾ ਕੇ ਨਾਲੇ ਦੂਜਾ ਵੀ ल्याਈ ਮੋਚੇ ਨੂੰ ਦੂਜਾ ਕਹਿੰਦੇ ਹੁੰਦੇ ਸੋ ਇਹ ਮੰਗਮੀ ਟਰਾਲੀ ਵਾਂਗੂ ਕਿਸੇ ਸਮੇਂ ਸ਼ੀਸ਼ਾ ਤੇ ਮੋਚਨਾ ਵੀ ਆਧਾਰੇ ਜਾਂਦੇ ਹੁੰਦੇ ਪੰਜਾਬ 'ਚ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨੀਆਹੁ ਮਿਲ ਰਿਹਾ ਅੱਜ ਮਿਲ ਚੁੱਕਿਆ ਜਾਂ ਬਫਦ ਉੱਥੇ ਹੈ ਵਾਸ਼ਿੰਗਟਨ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਦੋ ਸਟੇਟ ਤੇ ਇੱਕ ਸਟੇਟ ਦੀ ਗੱਲ ਟੂ ਸਟੇਟਸ ਦੀ ਗੱਲ ਜਾਣ ਬਿਲੇ ਅਵਾਮਾ ਐਡਮਿਨਿਸਟ੍ਰੇਸ਼ਨ ਕਹਿ ਗਏ ਤੇ ਹੁਣ ਰੌਲਾ ਇਸ ਗੱਲ ਦਾ ਪਿਆ ਗੱਲਾਂ ਦੋ ਦੋ ਸੁਲਫ ਦੇ ਵਿੱਚ ਤਾਂ ਹਮਾਸ ਦਾ ਕੰਟਰੋਲ ਹੈ ਪਰ ਬੈਰੀਕੇਡ ਵਾਲੇ ਦਾਲੇ ਇੱਕ ਬੱਲੇ ਮਿਸਰ ਦੇ ਨੇ ਤੇ ਇੱਕ ਬੱਲੇ ਉਹ ਇਜ਼ਰਾਇਲ ਦੇ ਨੇ ਉਹਨਾਂ ਨੂੰ ਖੰਗੜ ਨਹੀਂ ਦਿੰਦੇ ਕੁਝ ਨਹੀਂ ਹੈ ਉੱਥੇ ਬੈਸਟ ਬੈਂਕ ਦੇ ਵਿੱਚ ਸਾਰੀਆਂ ਧੜਾ ਧੜ ਚੱਲ ਰਹੀਆਂ 1976 ਦੀ ਲੜਾਈ ਦੇ ਵਿੱਚ ਜਿਹੜਾ ਇਹਦਾ ਫਲਸਤੀਨ ਦਾ ਦਬਿਆ ਸੀ ਇਜ਼ਰਾਈਲ ਨੇ ਗੱਲਾਂ ਉਹ ਚੱਲ ਰਹੀਆਂ ਨੇ ਜਾਂ ਤਾਂ ਵੀ ਖੁੱਲ੍ਹ ਦिला ਇੱਕ ਲੋਕਤੰਤਰੀ ਸਰਕਾਰ ਹੋਵੇ ਉਹਦਾ ਗਠਨ ਹੋਵੇ ਇਜ਼ਰਾਈਲ ਦੇ ਵਿੱਚ ਤੇ ਅਰਬ ਤੇ ਅਰਬ ਤੇ ਇਜ਼ਰਾਈਲ ਦੇ ਲੋਕ ਇਕੱਠੇ ਰਹਿ ਲੈਣ ਕਿਉਂਕਿ ਇਜ਼ਰਾਈਲ ਦੇ ਵਿੱਚ ਅਰਬ ਦੇ ਲੋਕਾਂ ਦੇ ਕੋਲ ਵੀ ਸਿਟੀਜ਼ਨਸ਼ਿਪ ਹੈ। ਇੱਕ ਇਹ ਗੱਲ ਚੱਲਦੀ ਹੈ ਇੱਕ ਟੂ ਸਟੇਟਸ ਦੀ ਗੱਲ ਚੱਲਦੀ ਹੈ ਕਿ ਦੋ ਸਟੇਟਾਂ ਅਲੱਗ-ਅਲੱਗ ਬਜਨ ਪਰ ਦੋ ਸਟੇਟ ਵਾਲੀ ਗੱਲ ਹੁਣ ਨਹੀਂ ਬਣਨੀ ਕਾਰਨ ਕਿ ਏਰੀਏ ਦੇ ਵਿੱਚ ਜਿਹੜੀ ਇਹ ਸਾਰੀ ਹੈ ਨਾ ਸੈਟਲਮੈਂਟ ਰਾਇਲੀ ਸੈਟਲਮੈਂਟ ਇਜ਼ਰਾਈਲੀ ਸੈਟਲਮੈਂਟ ਕਹਿ ਰਹੇ ਨੇ ਉਹ ਕੀ ਹੈ ਜਿਹੜਾ ਖਿੱਤਾ ਕੱਲ ਨੂੰ ਵਿੱਚ ਆਉਂਤ ਉਹਦੇ ਵਿੱਚ ਘਰ ਧੜਾ-ਤੜੇ ਇਜ਼ਰਾਈਲ ਦੇ ਲੋਕ ਬਣਾ ਰਹੇ ਨੇ ਵੀ ਇਹਨਾਂ ਨੂੰ ਹੁਣ ਅਸੀਂ ਕਿੱਥੇ ਨੂੰ ਭੇਜੀਏ ਆਹ ਗੱਲ ਚੱਲਣੀ ਹੈ ਜੇ ਅੱਜ ਤੋਂ ਪੰਜਾ ਚਾਰ ਸਾਲਾਂ ਨੂੰ ਕੋਈ ਗੱਲ ਬਣਦੀ ਪਈ ਹੈ ਨਹੀਂ ਹੋਣੀ ਸਿਰਫ ਗਾਜ਼ਾ ਹੀ ਰਹਿ ਜਾਣਾ ਗਾਜ਼ਾ ਦੇ ਲੋਕੋਂ ਭੁੱਖੇ ਮਰਦੇ ਆ ਚਾਰੇ ਪਾਸੋਂ ਘੇਰਿਆ ਗਾਜ਼ਾ ਵੀ ਕੀ ਹੈ ਗਾਜ਼ੇ ਦੇ ਵਿੱਚ ਵੀ ਖੁਦਮੁਖਤਿਆਰੀ ਹੈ ਨਹੀਂ ਨਾ ਕਿਤੇ ਜਾ ਸਕਦੇ ਨਾ ਕਿਤੇ ਆ ਸਕਦੇ ਆ ਰਾਕਟ ਦਾ ਅੱਧਾ ਚਲਾ ਲੈਂਦੇ ਪੰਜ ਚਾਰ ਮਹੀਨੇ ਬਾਅਦ ਜਾਂ ਥੱਲੇ ਸੁਰੰਗ ਪੱਟ ਕੇ ਦੂਜੇ ਮੰਨੇ ਆ ਕੇ ਹਮਲਾ ਕਰ ਦਿੰਦੇ ਹੋਰ ਕੱਢਣ ਪਾਉਣ ਨੂੰ ਕੱਖ ਨਹੀਂ ਹੈ ਛੋਟਾ ਜਾਈਏ ਵੈਸਟ ਬੈਂਕ ਵੱਡਾ ਏਰੀਆ ਵੈਸਟ ਬੈਂਕ ਵਾਲੇ ਮਹਿਮੂਦਵਾਸ ਵਰਗੇ ਉਹ ਨਾਲ ਹੀ ਰਲਾਈ ਹੋਏ ਆ ਅੰਦਰੋਂ ਹੀ ਗੱਲ ਸਿੱਧੀ ਹੋਈ ਹੋਈ ਆ ਉਹ ਵੱਖਰੀ ਗੱਲ ਮੰਨਦੇ ਹੀ ਇਹ සම්ਪੂਰਨ ਇਹ ਕਿਹਾ ਕਹਿੰਦਾ ਮੈਂ ਦੋ ਸਟੇਟ ਤੇ ਇੱਕ ਸਟੇਟ ਦੋਵਾਂ ਵਾਲੇ ਵੇਖ ਬਾਕੀ ਡਿਪੈਂਡ ਕਰਦਾ ਇਜ਼ਰਾਈਲ ਤੇ ਫਲਸਤੀਨ ਦੇ ਲੋਕਾਂ ਨੂੰ ਕੀ ਚਾਹੀਦਾ ਗਬਲੀ ਗੱਲ ਕਰ ਗਿਆ ਹੂੰ ਵਾਲੀ ਪੰਜਾਬੀ ਤਰੀਕਾ ਦਾ ਤੂੰ ਵੀ ਠੀਕ ਹੈ ਗੱਲ ਤੇਰੀ ਵੀ ਠੀਕ ਹੈ ਗੱਲ ਮੇਰੀ ਵੀ ਠੀਕ ਹੈ ਹੂੰ ਕਹਿ ਗਿਆ ਉਹ ਕਹਿੰਦਾ ਇੱਕ ਵੀ ਸਟੇਟ ਬਣ ਸਕਦੀ ਹੈ ਦੋ ਵੀ ਪਰ ਫਲਸਤੀਨ ਦੇ ਇਜ਼ਰਾਈਲ ਦੇ ਲੋਕਾਂ ਨੂੰ ਚਾਹੀਦਾ ਇਜ਼ਰਾਈਲ ਨੇ ਕਿੱਥੇ ਦੇਣੀ ਹੈ ਡਬਲ ਹੁਣ ਦੂਜੀ ਸਟੇਟ ਕਿੱਥੇ ਦੇਣੇ ਜੇ ਦੇ ਦੇਣਗੇ ਪੰਜਾਬੀ ਸੂਬੇ ਜਿਵੇਂ ਆਪਾਂ ਲਈ ਹੈ ਸਿਰਫ ਤੇ ਸਿਰਫ ਰਾਜ ਕਰਨ ਲਈ ਵੀ ਕਾਂਗਰਸ ਵੱਡੇ ਇਸ ਸੂਬੇ ਚ ਕਾਂਗਰਸ ਨੇ ਬਾਦ ਨਹੀਂ ਫੜਾਉਣੀ ਕੈਰੋਂ ਵੱਲ ਨੂੰ ਵੇਖੇ ਨਾਲ ਰਿਸਟਰੀ ਸੀ ਕੈਰੋਂ ਨਾਲ ਪਰ ਫੇਰ ਵੀ ਬਾਦ ਉਹਨਾਂ ਨੇ ਕਿਹਾ ਪਹਿਲੇ ਲੀਡਰਾਂ ਨੇ ਕਿਹਾ ਵੀ ਜਿਗਾੜ ਬੰਨੀਏ ਕੋਈ ਸੂਬਾ ਬਣਾ ਲਈਏ ਘੱਟੋ ਘੱਟ ਰਾਜ ਕਰਾਂਗੇ ਪਰ ਰਾਜ ਦਰਦਨਾਕ ਅੰਤ ਜਿਹਾ ਹੋਊਗਾ ਇਹ ਵੀ ਨਹੀਂ ਸੀ ਪਤਾ ਕਿ ਪੋਤਿਆਂ ਦੇ ਹਾਣ ਦੇ ਬੰਦੇ ਨੂੰ ਲੇਲੜੀਆਂ ਕੱਢਣੀਆਂ ਪਈਆਂ meri zaat da sawal meri izzat da sawal kehnde gall ikk karni payi so eh sardariyan tur bakshiyan hon malik ne ta rehndi hai wakt te taur te kise nu dabb ke jitiyan cheezan kade nahi rehndi hai israel walu pher mudda idhar li gall main pher karda ke lagda nahi kade two state wali gall falastiniyan nu kakh nahi milna jis tarah ajj di situation hoye hai tadad utthe saariyan ho ਯੂਰਪੀਅਨ ਪਾਰਲੀਮੈਂਟ ਦੇ ਵਿੱਚ ਡੀਲ ਜਿਹੜੀ ਕੈਨੇਡਾ ਤੇ ਯੂਰਪੀਅਨ ਯੂਨੀਅਨ ਦੀ ਉਹ ਫਾਈਨਲ ਹੋ ਚੁੱਕੀ ਹੈ ਹੁਣ ਅੱਗੇ ਜਿਹੜੀ ਫ੍ਰੀ ਟ੍ਰੇਡ ਸਾਡਾ ਯੂਰਪ ਨਾਲ ਹੋਣਾ ਖਿਲੂ ਸਾਡਾ ਪ੍ਰਧਾਨ ਮੰਤਰੀ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਸਮੋਦਨ ਕਰਨਾ ਉਹ ਜਾ ਰਹੇ ਨੇ ਬਹੁਤ ਵੱਡੀ ਗੱਲ ਇਸ ਨੂੰ ਮੰਨਿਆ ਜਾ ਰਿਹਾ ਨੈਫਟਾ ਹਲੇ ਸੈੱਟ ਹੋਣਾ ਪਰ ਥਾਪੜ ਕੇ ਮੋਢੇ ਤੇ ਹੱਥ ਰੱਖ ਕੇ ਗੱਲ ਜਿਹੜੀ ਕੀਤੀ ਹੈ 트럼ਪ ਨੇ ਉਹ ਕਹਿੰਦਾ ਨਾ ਕੱਕਾ ਤੂੰ ਫਿਕਰ ਨਾ ਕਰ ਤੇਰੇ ਮੇਰੇ ਦਾ ਕੋਈ ਰੌਲਾ ਨਹੀਂ ਸਾਡੇ ਸਬੰਧ ਬਹੁਤ ਵਧੀਆ ਨੇ ਗੱਲ ਤਾਂ ਮੈਕਸੀਕੋ ਦੀ ਹੈ ਮੈਕਸੀਕੋ ਵਾਲੇ ਨਿਭਾਈ ਧਾਈ ਇਹ ਗੱਲ ਉਹਨਾਂ ਨੇ ਕਹੀ ਪਰ ਯੂਰਪੀਅਨ ਯੂਨੀਅਨ ਦੇ ਨਾਲ ਇਹ ਗੱਲ ਆਪਾਂ ਨੂੰ ਸੌਖ ਹੋ ਗਈ ਫ੍ਰੀ ਟ੍ਰੇਡ ਡੀਲ ਜਿਹੜੀ ਕੈਨੇਡਾ ਚੋਂ ਜਾਏਗਾ ਅਸਮਾਨ ਆਏਗਾ ਵਧੀਆ ਹੋਏਗਾ ਖੁਸ਼ ਲਾਈਨ ਨੰਬਰ 3 ਤੁਸੀਂ ਏਰ ਤੇ ਹੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ გილ ਸਰ ਥੋੜੀ ਜੀ ਰਿਕੁਐਸਟ ਹੈ ਜੀ ਹੱਥ ਜੋੜ ਕੇ ਤੁਸੀਂ ਮੈਨੂੰ ਆਫੇਰ ਕਰ ਮਾੜੀ ਜੀ ਇੱਕ ਬੈਕ ਕਾਲ ਕਰ ਲਿਓ ਕੋਈ ਚਾਰਾ ਨਹੀਂ ਸੀਗਾ ਤੁਹਾਡੇ ਨਾਲ ਗੱਲ ਕਰਨ ਮੈਂ ਬਹੁਤ ਐਮਰਜੈਂਸੀ ਗੱਲ ਕਰਨੀ ਹੈ ਜੀ ਤੁਹਾਡੇ ਨਾਲ ਮੈਂ ਫਿਲਹਾਲ ਕਰ ਸਕਦਾ ਮੈਨੂੰ ਤੁਸੀਂ ਅਗਲੀ ਬ੍ਰੇਕ 'ਚ ਫੋਨ ਕਰਿਓ 6047291224 ਤੇ ਕਰ ਲਿਓ ਇੱਕ ਸੈਕਿੰਡ ਗਿਲ ਸਰ ਇੱਕ ਸੈਕਿੰਡ ਜੀ ਇੱਕ ਸੈਕਿੰਡ ਹਾਂਜੀ ਨੰਬਰ ਰਿਪੀਟ ਕਰੋਗੇ 7291224 7291224 ਥੈਂਕ ਯੂ ਸਰ ਬਹੁਤ ਬਹੁਤ ਜੀ ਲੇਓ ਜੀ ਮੈਂ ਗੀਤ ਰਣ ਕਰੂੰਗਾ ਫੋਨ ਕਰ ਲਓ ਲੱਲੇ ਕੋਈ ਨਹੀਂ ਉਹਦਾ ਮੇਰੇ ਕਰਨ ਵਾਲੀ ਹੋਈ ਮੈਂ ਤਾਂ ਸਰੰਗੀ ਤੇ ਗੱਜ ਹੁਣ ਫੇਰ ਦੇਣਾ ਹੈ ਫਿਕਰੇ ਕਿਸੇ ਚੀਜ਼ ਦਾ ਸੋ ਇਹ ਗੱਲਾਂ ਚੱਲ ਰਹੀਆਂ ਪਿਛਲੀ ਗੱਲ ਮੈਂ ਕਰ ਕਿ ਹੁਣ ਫੋਨ ਕਾਲ ਨਾ ਉਧਰ ਨੂੰ ਕਰ ਲਿਓ ਮੈਂ ਗੱਲੇ ਦੱਸਣੀ ਚਾਹੁੰਦਾ ਵੀ ਸੋਚ ਸਕਦੇ ਹੋ ਤੁਸੀਂ ਜਿਹੜੀ ਦਿੱਲੀ ਤੇ ਪੰਜਾਬ ਦੇ ਵਿੱਚ ਪੱਤਾ ਨਹੀਂ ਸੀ ਬਾਦਲਾਂ ਬਿਲਾ ਝੁੱਲਦਾ ਉਸ ਦਿੱਲੀ ਕਮੇਟੀ ਦੀਆਂ ਚੋਣਾਂ ਬਾਦਲਾਂ ਤੋਂ ਬਿਨਾ ਲੜੀਆਂ ਜਾ ਰਹੀਆਂ ਨੇ ਇਹ ਹੋ ਸਕਦਾ ਇਹ ਹੋ ਸਕਦਾ ਵਧਾਤੇ ਦੇ ਹੱਥ ਚ ਸਾਰਾ ਕੁਝ ਹੈ ਬਹੁਤ ਵੱਡਾ ਇੱਕ 12 ਮਿੰਟ ਦਾ ਤਫਸਰਾ ਕੀਤਾ ਬਖਤਾਲਵਰ ਸਿੰਘ ਸਿੱਧੂ ਨੇ ਦਾਨੇ ਵਾਲੀਆਂ ਨਾਲ ਉਹਨਾਂ ਨੇ 57 ਤੋਂ ਲੈ ਕੇ ਹੁਣ ਤੱਕ ਦਾ ਸਮਾ ਬਾਦਲਾ ਉਹਨਾਂ ਦਾ ਜਿਹੜਾ ਦੱਸਿਆ ਵੀ ਕਿਸ ਤਰ੍ਹਾਂ 1957 ਦੇ ਵਿੱਚ ਜਦ 1952 ਦੇ ਵਿੱਚ ਸਵਿਧਾਨ ਬਣਿਆ ਨਾਇਬ ਤਹਿਸੀਲਦਾਰ ਦੀਆਂ ਨੌਕਰੀਆਂ ਨਿਕਲੀਆਂ ਤਾਂ ਕਿਉਂਕਿ ਬਲਦੇਵ ਸਿੰਘ ਦੁੰਮੜਾ ਜਿਹੜਾ ਪਹਿਲਾ ਮੰਤਰੀ ਬਣਿਆ ਜੀਨੇ ਸਾਨੂੰ ਵੇਚਿਆ ਜਿਹਦੇ ਚਾਰ کارਖਾਨੇ ਸੀ ਪੰਜਾਬ ਤੋਂ ਬਾਹਰ ਉਹਦਾ ਪੁੱਤ ਆ ਸਰਜੀਤ ਸਿੰਘ ਸਰਜੀਤ ਸਿੰਘ ਨੂੰ ਬਾਦ ਉਹਨਾਂ ਦੀ ਕਜ਼ਨ ਵਿਆਹੀ ਹੋਈ ਹੈ ਤੇ ਰਵੀਿੰਦਰ ਸਰਜੀਤ ਉਹਨਾਂ ਦੇ ਤਾਏ ਦਾ ਪੁੱਤ ਹੈ ਭਤੀਜਾ ਬਲਦੇਵ ਸਿੰਘ ਦੁੰਮੜਾ ਦਾ ਤੇ ਬਲਦੇਵ ਸਿੰਘ ਉਹਨਾਂ ਕੋਲ ਰੱਖ ਕੇ ਉਹਨੂੰ ਪੜਾਇਆ ਹੋਇਆ ਸੀ ਤੇ ਇਹ ਜਦ ਕਹਿੰਦੇ ਬਾਦਲੂਣੀ ਆਪਣੇ ਸਿਆਸੀ ਗਰੂ ਤੇਜਾ ਸਿੰਘ ਬਾਦਲ ਜਿਹੜੇ ਉਹਨਾਂ ਦੇ ਤਾਇਆ ਜੀ ਸਨ ਜਾਂ ਚਾਚਾ ਜੀ ਉਹਨਾਂ ਨੂੰ ਮਹੇਸ਼ਿੰਦਰ ਦੇ ਫਾਦਰ ਉਹਨਾਂ ਨੂੰ ਲੈ ਕੇ ਗਏ ਕਿ ਗਿਆਨੀ ਕਰਤਾਰ ਸਿੰਘ ਕੁਲ ਜੀ ਇਹਨਾਂ ਦਾ ਖਰਚਾ ਬਲਦੇਵ ਸਿੰਘ ਦਿੰਦਾ ਸੀ ਕਿ ਮੈਨੂੰ ਮੇਰੇ ਭਤੀਜੇ ਨੂੰ ਨੈਤ ਤਸਦੀਲਦਾਰ ਲਾਓ ਤਾਂ ਗਿਆਨੀ ਕਰਤਾਰ ਸਿੰਘ ਉਹ ਕਹਿੰਦੇ ਕਿ ਨੈਤ ਤਸਦੀਲਦਾਰ ਕਾਹਨੂੰ ਲਾਉਣਾ ਨੈਤ ਤਸਦੀਲਦਾਰ ਰੱਖਣ ਵਾਲਿਆਂ ਦੇ ਵਿੱਚ ਤੈਨੂੰ ਲਾਉਂਦੇ ਆ ਉਹਨੂੰ 1957 ਦੀ ਜਿਹੜੀ ਇਲੈਕਸ਼ਨ ਪਹਿਲੀ ਜਿਹੜੀ ਲੜੀ ਕਾਲੇ ਕਾਂਗਰਸ ਦੇ ਗੱਠਜੋੜ ਚ ਦੋ ਬਲਦਾਂ ਦੇ ਚੋਣ ਨਿਸ਼ਾਨ ਤੇ ਜਿੱਥੇ ਕਾਮਨਿਸਟ ਚਰਨਜੀਤ ਲਾਲ ਧੀਰ ਨੂੰ ਹਟਾਇਆ ਉਹਦੇ ਬਾਅਦ 69 ਦੇ ਵਿੱਚ ਗਰਨਾਮ 67 ਦੇ ਵਿੱਚ ਤੇ ਗਰਨਾਮ ਸਿੰਘ ਉਹਨਾਂ ਦੀ ਸਰਕਾਰ ਚ ਬਣੇ ਤੇ ਗਰਨਾਮ ਸਿੰਘ ਉਹਨਾਂ ਨੂੰ ਚਲਦਾ ਕਰਕੇ 70 ਚ ਸੀਐਮ ਬਣੇ ਧਰਮਯੁੱਧ ਮੋਰਚਾ ਸ਼ੁਰੂ ਹੁੰਦਾ ਹੈ ਧਰਮਯੁੱਧ ਮੋਰਚੇ ਦੇ ਸਮੇਂ 70 70 ਤੋਂ ਬਾਅਦ ਨਕਸਲ ਲਹਿਰ ਨਕਸਲ ਲਹਿਰ ਨੂੰ ਦੱਬਿਆ ਝੂਠੇ ਜਿਹੜੇ ਮੁਕਾਬਲੇ ਪੰਜਾਬ ਦੇ ਵਿੱਚ ਹੋਏ 78 ਦਾ ਸਮਾਂ ਆਉਂਦਾ ਅਕਾਲ ਤਖਤ ਤੇ ਖੜ ਕੇ ਬਿਆਨ ਤੇ ਸਾਡੀਆਂ ਛਾਪੀਆਂ ਤੋਂ ਟੈਂਕ ਲੰਘਣਗੇ ਕੋਈ ਨਹੀਂ ਲੱਭਿਆ ਮੁੜ ਕੇ ਉੱਥੇ ਤੇ ਉਸ ਤੋਂ ਬਾਅਦ 91 ਦੀ ਜਿਹੜੀ ਇਲੈਕਸ਼ਨ ਹੈ ਉਹ ਲੜੀ ਨਹੀਂ 91 ਦੀ ਬਾਈਕਾਟ ਦੇ ਵਿਚਾਰ ਵੀ ਬੰਦੇ ਮਾਰੇ ਗਏ ਇਹਦੇ ਚ ਸਾਡੇ ਵੱਲੋਂ ਨਾ ਆ ਜਵੇ 95 ਦੀ ਜਿਹੜੀ ਹੈ ਜਿਹੜੀ ਬਾਈ ਇਲੈਕਸ਼ਨ ਗਿੱਦੜਵਾਏ ਉਹ ਪਤੀਜੇ ਨੂੰ ਲੜਾਈ 96 ਦੇ ਵਿੱਚ ਪੁੱਤ ਨੂੰ ਲਿਆਂਦਾ ਐਮਪੀ ਬਣਾਇਆ ਬਾਜ਼ਾਰ ਤੇ ਲੈ ਕੇ ਗਿਆ ਬਾਦਲ ਛੋਟੇ ਦੀ ਜਦ ਜਿਹੜੀ ਹੈ ਉਹ ਵਾਪਸੀ ਕਰਾਈ ਜਿੱਦਣ ਤੋਂ ਕਿਉਂਕਿ ਪਹਿਲਾ ਵਾਰਿਸ ਮਨਪ੍ਰੀਤ ਸੀ ਜਿਹੜੀਆਂ ਗੱਲਾਂ ਹੋਈਆਂ 97 ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਜਵਾਈ ਅਦੇਸ਼ ਪ੍ਰਤਾਪ ਸਿੰਘ ਕੈਰੋਂ 2002 ਦੇ ਵਿੱਚ ਮੁੰਡੇ ਦਾ ਗਾਂ ਸਾਲਾ ਮਜੀਠੀਆ ਤੋਂ ਗਾਂ ਤੋਂ ਗਾਂ ਤੋਂ ਗਾਂ ਗੱਲਾਂ ਚੱਲਦੀਆਂ ਅਖੀਰ ਇਹ ਗੱਲ ਹੋਈ ਕਿ ਆਪਣੇ ਹੀ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਗੁੱਸਾ ਗੁਰਗਾਂਢ ਸਾਹਿਬ ਦੀ ਬੇਅਦਬੀ ਦਾ ਇੰਨਾ ਸੀ ਕਿ ਇੱਕ ਸਿੱਖ ਨੇ ਜੁੱਤੀ ਬਿਮਾਰੀ ਤੇ 70 ਸਾਲ ਦੀ 8 ਸਾਲ ਦੀ ਰਾਜਨੀਤੀ ਵਿੱਚ ਜਿਹਦੇ ਵਿੱਚ ਪੰਜ ਵਾਰ ਮੁੱਖ ਮੰਤਰੀ ਬਣਿਆ ਬੰਦਾ ਤੇ ਜਿਨੇ ਵਿਰੋਧੀ ਆਪਣੇ ਚੱਬ ਕੇ ਸਿੱਟ ਤੇ ਖਿਲਾੜੀ ਥੇ ਕੜਤੇ ਚਾਹ ਤੋੜਾ ਚਾਹ ਪੁਰਾਣੇ ਲੀਡਰ ਨੇ ਉਹ ਫੇਰੀ ਤਾਂ ਜਾਂਦੇ ਆ ਜਿਹੜੇ ਸੇਮ ਲੈਵਲ ਦੇ ਉਹ ਜਿਹੜੇ ਉਸ ਦੇ ਸਮੇਂ ਦੇ ਹੀ ਲੀਡਰ ਨੇ ਜੇ ਹੁੰਦਣ ਨੂੰ ਲੈ ਕੇ ਢੀਂਡਸੇ ਨੂੰ ਵੇਖ ਲੋ ਜਾ ਬ੍ਰਹਮਪੁਰ ਨੂੰ ਵੇਖ ਲੋ ਇਹ ਸਭ ਕਾਨੂੰਨੀ ਸਭ ਇਹ ਬੋਲਣ ਨਹੀਂ ਦਿੱਤੇ ਤੋੜੇ ਵਰਗੇ ਜਿਹੜੇ ਨੇ ਅਸ਼ੀਰ ਉਹ ਵੀ ਸੁਲਾਵਾਰ ਕੇ ਗਏ ਪਰ ਇਹ 2007 ਤੋਂ ਲੈ ਕੇ 17 ਤੱਕ 10 ਸਾਲ ਦੇ ਵਿੱਚ ਇੰਨੀ ਵਧੀਆ ਲੈਗਸੀ ਨਾ ਲੋਕ ਛੱਡ ਸਕੇ ਤੇ ਲੋਕ ਗੁੱਸੇ ਹੋ ਗਏ ਹਾਕੂ ਵਾਲੇ ਪਿੰਡ ਦੇ ਵਿੱਚ ਇਹ ਲੋਕ ਜਿਹੜੇ ਗੱਲ ਹੋਈ ਪਤਨ ਹੋਇਆ ਜਿਹੜੇ ਹਲਕਾ ਇੰਚਾਰਜ ਲਾਏ ਪਤਨ ਹਲਕਾ ਇੰਚਾਰਜ ਮੰਨੇ ਨਹੀਂ ਕੀਤਾ ਪਤਨ ਪੁੱਤ ਦੀ ਬਿਜ਼ਾਰਤ ਨੇ ਕੀਤਾ ਨਹੀਂ ਬਾਦਲ ਉਹਨਾਂ ਨੇ ਸੱਪ ਵੀ ਮਾਰਿਆ ਲਾਠੀ ਵੀ ਬਚਾਈ ਪੁੱਤ ਜਦ ਵਿੱਬ ਗਿਆ ਉੱਪਰ ਦੀ ਪੈ ਗਿਆ ਹਲਕਾ ਇੰਚਾਰਜ ਦੀਆਂ ਬਦਮਾਸ਼ੀਆਂ ਵਧ ਗਈਆਂ ਐਮਐਲਏ ਨਾਲੋਂ ਹਲਕਾ ਇੰਚਾਰਜ ਦੀ ਬਦਮਾਸ਼ੀ ਜਿਹੜਾ ਕੁਛ ਮਰਜ਼ੀ ਕਰੇ ਹਕੂ ਵਾਲੇ ਦਾ ਮੁੰਡਾ ਜਿਹਦਾ ਦਾਦਾ ਨਾਲ ਜਿਹਨੇ ਜੇਲ ਕੱਟੀ ਹਰ ਇੱਕ ਉਸ ਮੁੰਡੇ ਨੇ ਜ਼ਾਰ ਹੀਰਾ ਸਿੰਘ ਉਹਦਾ ਦਾਦਾ ਸੀ ਜਿਹਨੇ ਸਾਰੀਆਂ ਜੇਲਾਂ ਬਾਦਲ ਉਹਨਾਂ ਦੇ ਨਾਲ ਕੱਟੀਆਂ ਉਹਨੂੰ ਬਣ ਵਾਲੀਏ ਨੇ ਕੋਲਾ ਵਾਲੇ ਆ ਕੋਲਿਆਂ ਵਾਲੀ ਨੇ ਮਿੱਡੂ ਖੇੜੇ ਵਾਲਿਆਂ ਨੇ ਲੱਤ ਸੇ ਨਗਾਉਣ ਦੀ ਕਹਿੰਦਾ ਕੁਛ ਚੁਕਿਤੀ ਮੁੰਡਾ ਨਾਮ ਨੇ ਆ ਦੇ ਜਗ ਜाहਰ ਕਰ ਦਿੱਤਾ ਤੇ ਉਹ ਤੋਂ ਪਲੱਸ ਹਸਤਾਲ ਦਾ ਇੱਕ ਬਜ਼ੁਰਗ ਨੀਤਾ 60 ਸਾਲ ਦੀ ਰਾਜਮਰੀਆ ਅਰਬਾਂ ਪਤੀ ਬੰਦਾ ਲੇਲੜੀਆਂ ਕੱਢਦਾ ਇੱਕ ਗੱਲ 'ਚ ਵੇਖਿਆ ਜਾਵੇ ਉਹ ਸੁਣ ਕੇ ਪਤਾ ਲੱਗਦਾ ਇਹ ਅੰਤਰਾਜਨੀਤੀ ਦਾ ਹੋਏਗਾ ਇਹ ਨਹੀਂ ਸੀ ਸੋਚਿਆ ਕਿ ਲੋਕ ਪੰਜਾਬ ਦੇ ਵਿੱਚ ਖੁੱਲ ਕੇ ਤੁਸੀਂ ਕੈਂਪੇਨ ਨਾ ਕਰ ਸਕੋ ਤੇ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਨਾ ਨਾ ਹੋਵੇ ਸਿਰਸੇ ਆਰਗੇ ਜਿਹੜੇ ਗਨਮੈਨ ਬਣੇ ਫਿਰਦੇ ਸੀ ਸੁਖਵੀਰ ਦੇ ਹੁਣ ਤੁਰੇ ਫਿਰਦੇ ਆ ਇਕੱਲੇ ਕਿਸੇ ਬੋਰਡ ਤੇ ਨਾਉ ਨਹੀਂ ਹੈ ਲੋਕ ਦੁਖੀ ਇੰਨੇ ਹੋ ਗਏ ਕਿ ਬੇਅਦਬੀ ਦੀ ਗੱਲ ਉਸ ਤੋਂ ਬਾਅਦ ਸਿਰਸੇ ਵਾਲੇ ਸਾਥ ਦੇ ਨਾਲ ਸਮਝੌਤਿਆਂ ਦੀਆਂ ਗੱਲਾਂ ਇਹ ਜਿਹੜੀਆਂ ਗੱਲਾਂ ਨੇ ਇਹੋ ਜਿਹਾ ਅੰਤ ਹੁੰਦਾ ਹੈ ਦਾ ਕਿਉਂਕਿ ਉੱਪਰ ਵਾਲੇ ਨੂੰ ਪਤਾ ਉਹਨੇ ਕੀ ਕਰ ਓਏ ਉਹਨਾਂ ਨੇ ਇੱਕ ਦਿਨ ਤਕਸਰਾ ਬਖਤਾਵਰ ਸਿੰਘ ਸਿੱਧੂ ਉਹਨਾਂ ਨੇ ਕੀਤਾ ਬਹੁਤ ਜ਼ਿਆਦਾ ਵਧੀਆ ਉਹ ਸਾਰਿਆਂ ਕੋਲ 10-12 ਮਿੰਟ ਦੀ ਵੀਡੀਓ ਆਡੀਓ ਤੁਹਾਡੇ ਕੋਲ ਆ ਦਾਨੇ ਨਾਲ ਇਹ ਉਹ ਕਿਉਂਕਿ ਏਰੀਆ ਦੇ ਨੇੜੇ ਸਾਰਾ ਕੁਝ ਵੇਖਿਆ ਪਰ ਰਾਜਨੀਤੀ ਹੈ ਜਿਹੜੀ ਉਹ ਕਿਸੇ ਦੀ ਨਹੀਂ ਰਾਜਨੀਤੀ ਘੁੰਮ ਜਾਂਦੀ ਹੈ ਰਾਜਨੀਤੀ ਕੀ ਹੋ ਸਕਦਾ ਰਾਜਨੀਤੀ ਤੇ ਤੁਹਾਡੇ ਸਾਹਮਣੇ ਇਹ ਜਿਹਾ ਸਮਾਂ ਵੀ ਆ ਸਕਦਾ ਬਖਤਾਵਰ ਸਿੰਘ ਘੱਲੋਂ ਆ ਜੀ ਸ਼ਾਇਦ ਉਹਨਾਂ ਮੈਂ ਸਿੱਧੂ ਕਹਦਾ ਤਾਂ ਉਹਨਾਂ ਦਾ ਉਹ ਤਕਸਰਾ ਜਿਹੜਾ ਲੋਕਾਂ ਨੇ ਵਟਸਐਪ ਤੇ ਸੁਣਿਆ ਵੱਲਾ ਤੇ ਬੜਾ ਹੁੰਦੇ ਜਿਹੜਾ ਬੜੀ ਜਾਨ ਹੈ ਤੇ ਸਦਾ ਹੀ ਉਹ ਬਹੁਤ ਵਧੀਆ ਗੱਲ ਕਰਦੇ ਆ ਹੁਣ ਮੈਂ 에어 ਇੰਡੀਆ ਦੇ ਉਸ ਕਾਂਡ ਦੀ ਗੱਲ ਕਰਦਾ ਹਾਂ ਜਿਸ ਦਾ ਹਾਲੇ ਤੱਕ ਸੌ ਪਤਾ ਕੋਈ ਨੀ ਲੱਗਿਆ ਤੇ ਜਿਸ ਨਾਲ 30-32 ਸਾਲ ਲੰਘ ਗਏ ਲੱਗਦਾ ਵੀ ਨਹੀਂ ਕਿ ਲੱਗ ਜਾਵੇਗਾ ਉਹਦੇ ਵਿੱਚ ਇਸ ਕਾਂਡ ਦੇ ਵਿੱਚ ਜਿਹਦੇ ਵਿੱਚ 339 ਜਣੇ ਦੇ ਕਰੀਬ ਮਾਰੇ ਗਏ ਆਇਰਲੈਂਡ ਦੇ ਕੱਟ ਤੇ ਇਹ ਜਹਾਜ਼ ਜਿਹੜਾ ਤਬਾਹ ਹੋਇਆ ਉਹਨਾਂ ਦੇ ਵਿੱਚ ਇੱਕੋ ਇੱਕ ਜਿਹੜਾ ਦੋਸ਼ੀ ਇੰਦਰਜੀਤ ਸਿੰਘ ਰਿਆਤ ਉਹਨਾਂ ਨੂੰ ਹਾਫਵੇ ਹਾਊਸ ਤੋਂ ਹੁਣ ਘਰ ਪਰਤਣ ਦੀ ਇਜਾਜ਼ਤ ਦੇ ਦਿੱਤੀ ਉਹ ਦੁਨੀਆ 'ਚ ਕਿਤੇ ਵੀ ਰਹਿ ਸਕਦੇ ਦੁਨੀਆ 'ਚ ਜਾਂ ਸੌਰੀ ਕੈਨੇਡਾ ਦੇ ਵਿੱਚ ਕਿਤੇ ਵੀ ਰਹਿ ਸਕਦੇ ਸਾਰਿਆਂ ਨੂੰ ਇਸ ਕਾਂਡ ਬਾਰੇ ਪਤਾ ਹੈ ਕਿ ਬੰਬ ਧਮਾਕੇ ਨਾਲ ਇਹ ਜਹਾਜ਼ ਉੱਡਿਆ ਡੰਕਨ ਦੇ ਵਿੱਚ ਉਸ ਸਮੇਂ ਰਹਿੰਦੇ ਸੀ ਅੰਦਰਜੀਤ ਸਿੰਘ ਰਾਏ ਡੰਕਨ ਦੇ ਆ ਜੰਗਲਾਂ ਦੇ ਵਿੱਚ ਉਹਨਾਂ ਨੇ ਧਮਾਕਾ ਕਰਕੇ ਇਹਨੂੰ ਟੈਸਟ ਕੀਤਾ ਸੀ ਮਿਸਟਰ ਐਕਸ ਉਹਨਾਂ ਦੇ ਕੋਲ ਰਿਹਾ ਮਿਸਟਰ ਐਕਸ ਦਾ ਨਾਮ ਉਹਨਾਂ ਨੂੰ ਪਤਾ ਨਹੀਂ ਇਹ ਬੰਬ ਕਿਵੇਂ ਗਿਆ ਜਹਾਜ਼ ਦੇ ਵਿੱਚ ਤੇ ਨਾਲ ਹੀ ਬਹੁਤ ਚੀਜ਼ਾਂ ਜਿਹੜੀਆਂ ਉਹ ਇਸ ਦੇ ਆਲੇ-ਦਾਲੇ ਘੁੰਮਦੀਆਂ ਲੋਕਾਂ ਦੀਆਂ ਸੀਟਾਂ ਕੈਨਸਲ ਕਰਨੀਆਂ ਜਹਾਜ਼ ਦਾ ਲੇਟ ਹੋਣਾ ਕੁੱਤੇ ਜੇ ਜਹਾਜ਼ 'ਚ ਬੰਨਣਾ ਦੇਣੇ ਪਤਾ ਹੀ ਨਹੀਂ ਕੀ ਕੁਸ਼ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਥਿਉਰੀਆਂ ਚੱਲੀਆਂ ਪਰ ਇੱਕ ਬੰਦਾ ਹੀ ਇਹਦੇ ਵਿੱਚ ਉਸ ਸਜ਼ਾ ਹੋਈ 30 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਇੰਦਰਜੀਤ ਸਿੰਘ ਰਾਏਤ ਨੇ ਕੱਟਿਆ ਪਰ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ ਉਹਨਾਂ ਨੇ ਨਹੀਂ ਦੱਸਿਆ ਕਿਸੇ ਨੂੰ ਵੀ ਮੈਂ ਕੀ ਕੀਤਾ ਕੀਨੇ ਕੀ ਕੀਤਾ ਚੁੱਪ ਐਡੀ ਵੱਡੀ ਵੀ ਚੁੱਪ ਬਹੁਤ ਔਖੀ ਉਹਨਾਂ ਨੂੰ ਪਤਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਬਚਾਇਆ ਉਹਨਾਂ ਨੇ ਕਿਹਨੂੰ ਇਹ ਰੱਬ ਜਾਣਦਾ ਮਲਕ ਤੇ ਸਦਾ ਬਾਗੜੀਏ ਦੇ ਵਿੱਚ ਫੜੇ ਗਏ ਉਹਨਾਂ ਨੂੰ ਬਾ ਇੱਜ਼ਤਵਰੀ ਕੀਤਾ ਤੇ ਬਾਦਾਂ ਬਾਸ ਗਵਾਹ ਵੀ ਬਣੇ ਇਹਨਾਂ ਨੇ ਆਪਣੇ ਆਪ ਨੂੰ ਗਿਲਟੀ ਪਲੀ ਕੀਤਾ ਮੈਂਸਲਟਰ ਦੇ ਕੇਸ ਚੋਂ ਦੀ ਸਜ਼ਾ ਹੋਈ ਤੇ ਮੁੜ ਕੇ ਫਿਰ ਸੌਂ ਚੱਕ ਕੇ ਬਿਆਨ ਦੇਣੋਂ ਉਹ ਕਹਿੰਦੇ ਵੀ ਝੂਠ ਬੋਲਿਆ ਬਾਅਦ ਚ ਮੁੱਕਰ ਕੇ ਉਹਦੇ ਵਿੱਚ ਸਜ਼ਾ ਹੋਈ ਫਿਰ ਪਿੱਛੇ ਜੇ ਕੁਝ ਦਿਨ ਉਹ ਆਏ ਤੇ ਦੁਬਾਰਾ ਫੇਰ ਫਿਹਾਬ ਹਾਊਸ ਉਹਨਾਂ ਨੂੰ ਪੂਰੀ ਜਿਹੜੀ ਹੈ ਉਹ ਮਾਫੀ ਮਿਲ ਚੁੱਕੀ ਆ ਤੇ ਕੱਲ ਦੀ ਜਾਦੀ ਇਹ ਖਬਰ ਆ ਜਿਹੜੇ ਪਰਿਵਾਰ ਨੇ ਪੀੜਤ ਨੇ ਜਿਹੜੇ ਉਹ ਦੁਖੀ ਨੇ ਬਹੁਤ ਲੰਮੀ ਲਿਸਟ ਆ ਉਹ ਕਹਿੰਦੇ ਸਾਨੂੰ ਇਨਸਾਫ ਜੇ ਧਰਤੀ ਤੇ ਨਾ ਮਿਲਿਆ ਕਿਉਂਕਿ ਸਿੱਖ ਤਾਂ ਇਸ ਪੀੜ ਨੂੰ ਜਾਣਦੇ ਜਿਵੇਂ 84 ਦਾ ਇਨਸਾਫ ਨਹੀਂ ਮਿਲਿਆ ਨਾ ਅਸੀਂ ਕੂਕਦੇ ਆ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਉਸੇ ਸੇਮ ਟੋਕਨ ਤੇ ਇੱਥੇ ਗੱਲ ਕਰੀਏ ਤਾਂ ਇੱਥੇ ਜੇ ਇਨਸਾਫ ਜਿਹੜੇ ਮੰਗਣ ਵਾਲੇ ਆ ਜਿਹੜੇ ਤਰਸਦੇ ਆ ਜੇ ਉਹਨਾਂ ਨੂੰ ਅਸੀਂ ਗਲਤ ਨਿਗਾ ਨਾਲ ਝਾਕਦੇ ਆ ਫਿਰ ਸਾਡਾ ਦੋਰਾ ਕਰਤਾਰ ਆ ਗਰਦਾਰਾ ਤੇ ਇੱਥੇ ਵੀ ਇਨਸਾਫ ਮਿਲਣਾ ਚਾਹੀਦਾ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਨੂੰ ਲੁਕੋਗੀਆਂ ਸਭ ਤੋਂ ਮਹਿੰਗੀ ਟ੍ਰਾਇਲ ਜਹਾਜ਼ ਜਿਹੜਾ ਦੁਆਰਾ ਬਣਾਇਆ ਗਿਆ ਉਹਦਾ ਬਲਾਸਟ ਵੇਖਿਆ ਗਿਆ ਕਿਹੜੀ ਜਗ੍ਹਾ ਤੋਂ ਹੋਇਆ ਉੱਥੇ ਬੰਦਾ ਕੌਣ ਬੈਠਾ ਸੀ ਕਿਹੜੀ ਜਗ੍ਹਾ ਕੱਖ ਨਹੀਂ ਪਤਾ ਲੱਗਿਆ ਬੰਦੇ ਜਾ ਕੇ ਬੁਕਿੰਗ ਕਰਾ ਕੇ ਆਏ ਨੇ ਬਰੀਫ ਕੇਸ ਕਹਿੰਦੇ ਚੜੇ ਨੇ ਬੰਦੇ ਨਹੀਂ ਚੜੇ ਅਲ ਸਿੰਘ ਇਹ ਸਿੰਘ ਦਾ ਨੌ ਅਮੰਦ ਸਿੰਘ ਲਾਲ ਸਿੰਘ ਕੀ ਕੀ ਰੌਲਾ ਪਿਆ ਲਾਲ ਸਿੰਘ ਅਕਾਲਗੜ੍ਹ ਨੂੰ ਜਾ ਕੇ 90 ਮਿਲਿਆ ਗਿਆ ਤੇ ਉਸਨੇ ਜਗਤ ਗੱਲ ਜाहिर ਕੀਤੀ ਕਿ ਮੈਨੂੰ ਕਿਹਾ ਗਿਆ ਵਾਦਾ ਮਾਫਗਵਾਹ ਬਣ ਜਾ ਪਰ ਨਹੀਂ ਬਣੇ ਪਰ ਫਿਰ ਵੀ ਕਿਤੇ ਨਾ ਕਿਤੇ ਸਿੱਖਾਂ ਦਾ ਇਹਦੇ ਨਾਲ ਕੀ ਸੰਬੰਧ ਹੈ ਤੇ ਸਿੱਖਾਂ ਨੇ ਇਹਨੂੰ ਕਿਉਂ ਕਰਨ ਸਿੱਖਾਂ ਨੂੰ ਇਹਦੇ ਵਿੱਚ ਮਿਲਣਾ ਕੀ ਜਿਹੜਾ ਸਿੱਖ ਸੈਪਰੇਟ ਸਿੱਖਾਂ ਵਾਲੇ ਮੜ ਮੜ ਕੇ ਉਂਗਲ ਕੀਤੀ ਜਾਂਦੀ ਹੈ ਸਾਰੀਆਂ ਖਾਲਾਂ ਦੇ ਵਿੱਚ ਕੀ ਕੱਢਿਆ ਇਹ ਵਿੱਚੋਂ ਕੀ ਪਾਇਆ ਕੌਮ ਦੇ ਬੰਦੇ ਆਪਣੇ ਮਰਵਾਲੇ ਤੇ ਲੋਕ ਸ਼ੱਕ ਦੀ ਨਿਗਾ ਨਾਲ ਵੇਖਣ ਚੱਲੇ ਗਏ ਇੱਕ ਬੰਦੇ ਨੂੰ ਸਜ਼ਾ ਹੋਈ ਉਹ ਬੰਦੇ ਨੇ ਅੰਦਰ ਸਮਾ ਕੱਢ ਲਿਆ ਤੇ ਉਹਨੇ ਮੂੰਹ ਨਹੀਂ ਖੋਲਿਆ ਦੱਸਿਆ ਨਹੀਂ ਉਹਨੇ ਸਾਰਾ ਕੁਝ ਖਖੜੀਆਂ ਕਰੇਲੇ ਹੋ ਗਿਆ ਪਰਿਵਾਰ ਨੇ ਉਹ ਆਪਦੇ ਤੋਂ ਬਿਨਾ ਜ਼ਿੰਦਗੀ ਕੱਢੀ 30 ਸਾਲ ਆਲਮੋਸਟ ਅੱਧੀ ਜ਼ਿੰਦਗੀ ਜਵਾਨੀ ਦੀ ਸਾਰੀ ਉਹਨੇ ਵਿੱਚ ਦੀ ਕਰਤੀ ਤੇ ਪਰ ਗੱਲ ਨਾ ਬਣੀ ਹਲੇ ਤੱਕ ਹਲੇ ਵੀ ਗੁੱਜੇ ਭੇਤ ਨੇ ਭੇਤ ਨੇ ਜਿਹੜੇ ਨਹੀਂ ਨਿਕਲੇ ਖਬਰਾਂ ਇਹਦੇ ਤੇ ਛਪੀਆਂ ਥਿਓਰੀਆਂ ਛਪੀਆਂ ਆ ਸੌਫਟ ਟਾਰਗੇਟ ਕਿਤਾਬਾਂ ਮਲੋਏ ਨੇ ਪਤਾ ਹੀ ਨਹੀਂ ਕੀ ਕੁਝ ਲਿਖਿਆ ਬਲੋਏ ਕ੍ਰਿਸ਼ਨ ਧਰਨੇ ਕੋੜੀ ਫਸਲ ਸੌਫਟ ਟਾਰਗੇਟ ਪਤਾ ਹੀ ਨਹੀਂ ਇਹਦੇ ਤੇ ਬੜੀਆਂ ਥਿਉਰੀਆਂ ਚੱਲੀਆਂ ਪਰ ਗੱਲ ਦਾ ਪਤਾ ਨਾ ਲੱਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿੰਦਰਜੀਤ ਸਿੰਘ ਰਾਏ ਦੇ ਬੜੀ ਹੋਣ ਦੇ ਬਾਰੇ ਦੋਸ਼ੀਆਂ ਦਾ ਫੜਿਆ ਨਾ ਜਾਣਾ ਇੱਕ ਐਡੇ ਵੱਡੇ ਵੱਡੀ ਕਤਰੋਗਾਰਥ ਪੰਜਾਬ ਨੂੰ ਜਾਂਦੇ ਲੋਕ ਭਾਰਤ ਨੂੰ ਜਾਂਦੇ ਆ ਦਸਮਾਨੇ ਅੜਾ ਦਿੱਤੇ ਸਰੀਰ ਸ਼ਾਰਕਾਂ ਨੇ ਖਾ ਲਏ ਤੇ ਉਸ ਪਾਣੀ ਦੀ ਜਗ੍ਹਾ ਤੇ ਜਾ ਕੇ ਲੋਕਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਬਹੁਤ ਮਹਿੰਗੀ ਟਰਾਈ ਔਰ ਭਾਈ ਚਾਦਰ ਦੇ ਵਿੱਚ ਹਫੜਾ ਦਫੜੀ ਫੈਲ ਗਈ ਕੋਈ ਵਾਦਾ ਮਾਫਗਵਾਹ ਬਣ ਗਿਆ ਕੋਈ ਕੁਛ ਕਹਿੰਦਾ ਮੈਨੂੰ ਦਿਓ ਮੈਂ ਦੱਸੂ ਕੋਈ ਕਹੋ ਮੈਂ ਦੂੰ ਬਹੁਤ ਕੁਸ਼ ਹੋਇਆ ਇੰਡੀਆ ਦੇ ਸਰਕਾਰੀ ਪ੍ਰੋਟੈਕਸ਼ਨ ਲੋਕਾਂ ਨੂੰ ਮਿਲੀ ਝੂਠੇ ਗਵਾਹ ਨਿਕਲ ਗਏ ਪਰ ਗੱਲ ਨਾ ਬਣੀ ਇੱਕ ਬੰਦੇ ਜਿਸ ਪਤਾ ਸੀ ਜਿਹਦੇ ਕੋਲ ਕੋਈ ਰਹਾ ਜਿਸ ਹੱਥੀਂ ਜਾ ਕੇ ਟੈਸਟ ਕੀਤਾ ਤੇ ਉਹ ਬੰਦਾ ਕਹਿ ਰਿਹਾ ਮੈਨੂੰ ਪਤਾ ਹੀ ਨਹੀਂ ਫਿਰ ਕਿਹਨੇ ਬੰਬ ਰੱਖਿਆ ਤੇ ਕਿਉਂ ਰੱਖਿਆ ਤੇ ਕਿਹਦੇ ਵੱਲੋਂ ਕਹਾਣੀ ਜਾਊਗੀ ਲਾਈਨ ਨੰਬਰ 3 ਕਰਮ ਉਸ ਤੇ ਹੋ ਲਾਈਨ ਨੰਬਰ 4 ਪਵਨਜੀਤ ਸਿੰਘ ਜੀ ਹਰਜੀਤ ਸਿੰਘ ਵਾਹਿਗੁਰੂ ਜੀ ਦੇ ਖਾਲਸਾ ਉਹ ਹੀ ਫਤਿਹ ਵੀਰ ਵਾਹਿਗੁਰੂ ਜੀ ਦਾ ਖਾਲਸਾ ਉਹ ਜੀ ਦੀ ਫਤਿਹ ਪਾਈ ਸਾਹਿਬ ਹਰਜੀਤ ਸਿੰਘ ਮੈਂ ਨਾ ਇਹਦੇ ਉੱਤੇ ਬਹੁਤ ਵਾਰੀ ਵਿਚਾਰ ਕਰ ਚੁੱਕਿਆ ਆ ਫਤਿਹ ਹੈ ਮੈਂ ਇੱਕ ਛੋਟੇ ਉੱਤੇ ਵਾਰ-ਵਾਰ ਜ਼ੋਰ ਦੇਣਾ ਹੁੰਦਾ ਬਈ ਜਗ੍ਹਾ ਕਿਤੇ ਗੋਲੀ ਚਲਦੀ ਆ ਕਤਲ ਹੁੰਦਾ ਕੁਛ ਵੀ ਹੁੰਦਾ ਤੇ ਗੋਲੀ ਪਿਸਤੌਲ ਨਾਲ ਚਲਦੀ ਆ ਤੇ ਪਿਸਤੌਲ ਨੂੰ ਕਦੇ ਵੀ ਸਜ਼ਾ ਨਹੀਂ ਹੁੰਦੀ। ਸਜ਼ਾ ਉਸ ਪਿਸਤੌਲ ਆ ਉਹਦੇ 'ਚ ਹੁੰਦੀ ਆ। ਮੈਂ ਇਹਦੇ ਵਿੱਚੋਂ ਜਿਹੜੇ ਵੀ ਬੰਦੇ ਸੀਗੇ ਅਕਿਊਜ਼ ਕਰ ਲੋ ਜਾਂ ਜਿਹੜੇ ਆਪਾਂ ਜਿਨ੍ਹਾਂ ਨੂੰ ਸੋ ਕਾਰਸਾ ਬਿਸਾਰੀ ਕਮਿਊਨਿਟੀ ਗਲਤੀ ਦਿੰਦੀ ਹੈ ਕੁਛ ਵੀ ਕਰਦੇ ਨੇ। ਉਹਨਾਂ ਨੂੰ ਬਰੀ ਨਹੀਂ ਕਰਾ ਕਿਸੇ ਵੀ ਚੀਜ਼ ਦੇ ਵਿੱਚੋਂ। ਫਾਰੀ ਯਾਰ ਸਾਨੂੰ ਇਹ ਤੇ ਸੋਚਣਾ ਪਊ ਵੀ ਉਹਨਾਂ ਤੋਂ ਕਿਸੇ ਨੇ ਤਾਂ ਖੇਡ ਆ ਸਾਰੇ ਨਾਲੋਂ ਵੱਡਾ ਹਾਸ ਉਸ ਟਾਈਮ ਕਿਹਨੋਂ ਹੋਇਆ ਕਮਿਊਨਿਟੀ ਆਪਣੀ ਨੂੰ ਹੋਇਆ ਸਿੱਖ ਮੀਟਿੰਗ ਨੂੰ ਹੋਇਆ ਉਸ ਤੋਂ ਪਹਿਲਾਂ ਮਤਲਬ ਜਿੱਥੇ ਤੱਕ ਮੇਰੀ ਯਾਦਾਸ਼ਤ ਕੰਮ ਕਰਦੀ ਆ ਵੀਰ ਮੇਰੇ ਆ ਰਜੀਵ ਗਾਂਧੀ ਤਾਂ ਯੂਨੈਸਕੋ ਦੇ ਵਿੱਚ ਅਨਸਰ ਮੰਗ ਲਿਆ ਸੀ ਵੀ ਸਿੱਖਾਂ ਨਾਲ ਤੱਕਾ ਕਿਉਂ ਹੋ ਰਿਹਾ ਗਿਆ ਬਸ ਅਨਸਰ ਹੂੰ ਕਮਿਊਨਿਟੀ ਦੀ ਸਾਰੇ ਆੜਾੜੇ ਦੁਨੀਆ ਦੇ ਵਿੱਚ ਸਾਡੇ ਨਾਲ ਸਿੰਥੀ ਸੀ ਤੇ ਇੱਕੋ ਰਾਤ ਦੇ ਵਿੱਚ ਉਹ ਸਿੰਥੀ ਖਤਮ ਹੋ ਗਈ ਸਭ ਖਤਮ ਹੋ ਗਿਆ ਮਤਲਬ ਹਥਿਆਰ ਕਿਹਦੇ ਹੱਥ ਦੇ ਵਿੱਚ ਚੱਲਿਆ ਉਹ ਬੰਦਾ ਗੁਨਾਹਗਰ ਹੈਗਾ ਪਰ ਜਿਹੜਾ ਚਲਾਉਣ ਵਾਲਾ ਪਿੱਛੇ ਉਹਨਾਂ ਨੂੰ ਚਲਾ ਰਿਹਾ ਚਾਹੇ ਪੈਸੇ ਦੇ ਕੇ ਚਲਾ ਰਿਹਾ ਚਾਹੇ ਕਿਵੇਂ ਵੀ ਚਲਾ ਰਿਹਾ ਕੋਈ ਖੇਡ ਖੇਡੀ ਗਈ ਸਾਨੂੰ ਸਿਰ ਜੋੜ ਕੇ ਸੋਚਣਾ ਪਊਗੀ ਪਿਛਲੇ ਹੱਥ ਵਾਲੇ ਬੰਦੇ ਨੂੰ ਲੱਭਣਾ ਜਿੰਨਾ ਚਿਰ ਨਹੀਂ ਲੱਭਦੇ ਨਾ ਉਹਦਾ ਹਥਿਆਰ ਤੇ ਅੱਜ ਕਿਸੇ ਤੋਂ ਪਿਸਤੌਲ ਖੜ ਲਵਾਂਗੇ ਕੱਲ ਹੋਰ ਖਰੀਦ ਲੂ ਕਿਉਂਕਿ ਪੈਸੇ ਵਾਲਾ ਬੰਦਾ ਸੋਨ ਨੂੰ ਸਜ਼ਾ ਦੇ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ ਧੰਨਵਾਦ ਜੀ ਸਰਦੋਪਾਲ ਸਿੰਘ ਜੀ ਪਰਫਾਈ ਵਾਹਿਗੁਰੂ ਜੀ ਖਾਲਸਾਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਦੇਖੋ ਇਹ ਦੁਕਾਨਤ ਜਿਹੜਾ ਹੈਗਾ ਇਹ ਇਹ ਤੋਂ ਅਸੀਂ ਕੰਡੈਮ ਕਰਦੇ ਆ ਬਹੁਤ ਮਾੜਾ ਹੋਇਆ ਪਰ ਗੱਲ ਇਹ ਆ ਜਿਸ ਤਰ੍ਹਾਂ ਸਵਾਲ ਕੀਤਾ ਹੋਇਆ ਕੀ ਕਾਤੇ ਹੋਇਆ ਕਿਦਾਂ ਹੋਇਆ ਹੁਣ ਦੇਖੋ ਜਦੋਂ ਭਾਈ ਸਾਹਿਬ ਦੱਸ ਕੇ ਗਏ ਹਰੀ ਦੁਨੀਆ 'ਚ ਸਿੱਖਾਂ ਲਈ ਹਮਦਰਦੀ ਸੀ ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਨੂੰ ਪੁੱਛਿਆ ਜਾ ਰਿਹਾ ਸੀ ਕਿ ਸਿੱਖਾਂ ਨਾਲ ਜਿਹੜਾ ਇਹਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਸਿੱਖਾਂ ਨਾਲ ਬੇਨਿਆਈ ਹੋ ਰਹੀ ਆ ਉਹਦਾ ਕੀ ਕਾਰਨ ਆ ਤੁਸੀਂ ਕਿਉਂ ਨਹੀਂ ਬੰਦ ਕਰਦੇ ਤੇ ਇੱਕ ਦਿਹਾੜੀ 'ਚ ਸਾਰੀ ਦੀ ਸੱਚੀ ਗੱਲ ਬਿਲ ਗਈ ਹੁਣ ਸਾਨੂੰ ਪਿੱਛੇ ਜਾ ਕੇ ਦੇਖਣਾ ਚਾਹੀਦਾ ਸਿੱਖੀ ਸਿਧਾਂਤ ਕੀ ਇਸ ਗੱਲ ਦੀ ਇਜਾਜ਼ਤ ਦਿੰਦੇ ਨਹੀਂ ਬਿਲਕੁਲ ਨਹੀਂ ਦਿੰਦੇ ਹੁਣ ਹੋਇਆ ਜਦੋਂ ਉਸ ਤੋਂ ਬਾਅਦ ਕੀ ਕਿਨੂੰ ਨੁਕਸਾਨ ਹੋਇਆ ਕੀ ਉਹ ਹਿੰਦੁਸਤਾਨ ਦੀ ਸਰਕਾਰ ਨੂੰ ਨੁਕਸਾਨ ਹੋਇਆ ਜਾਂ ਸਿੱਖਾਂ ਨੂੰ ਨੁਕਸਾਨ ਹੋਇਆ ਹੁਣ ਦੇਖੋ ਜਿਹੜੇ ਇਹਦੇ ਵਿੱਚ ਪ੍ਰੂਫ ਹੈਗੇ ਆ ਉਹਨਾਂ ਵਿੱਚ ਜਿਹੜੇ ਜੱਕੇ ਨੂੰ ਰਿਕਾਰਡਿੰਗਸ ਹੈਗੀਆਂ ਆ ਜਿਹੜੀਆਂ ਟੈਲੀਫੋਨਾਂ ਦੀਆਂ ਉਹ ਆਰਸੀਐਮਪੀ ਜੱਕੇ ਨੂੰ ਸਭ ਤੋਂ ਮਹਿੰਗਾ ਕੈਨੇਡਾ ਵਿੱਚ ਜਿਹੜਾ ਕੇਸ ਆ ਇਹੋ 에ਅਰ ਇੰਡੀਆ ਦਾ ਹੋਇਆ ਹੈਗਾ ਤੇ ਉਹਦੇ ਜਿਹੜੇ ਪ੍ਰੂਫ ਆ ਰਿਕਾਰਡਿੰਗਸ ਹੈਗੀਆਂ ਉਹ ਡਿਲੀਟ ਕੀਤੀਆਂ ਜਾਂਦੀਆਂ RCP ਦੇ ਜਿਹੜੇ ਅਧਿਕਾਰੀ ਆ کورٹ ਵਿੱਚ ਜਾ ਕੇ ਕਹਿੰਦੇ ਆ ਕਿ ਸਾਨੂੰ ਚੜਿਆ ਹਿੰਦੁਸਤਾਨ ਦੇ ਜਿਹੜੇ ਜਾ ਕੇ ਨਾ ਆਪਣੇ ਅੰਬੈਸੀਆਂ ਵਾਲੇ ਸੀ ਉਹ ਪੈਸੇ ਲੈ ਕੇ ਸਾਡੇ ਪਿੱਛੇ ਫਿਰਦੇ ਸੀ ਹੁਣ ਸਾਫ਼ ਜਾਹਰ ਹੁੰਦਾ ਵੀ ਹੋਇਆ ਕਿੱਥੋਂ ਆ ਕਿੱਦਾਂ ਹੋਇਆ ਇਹ ਤੇ ਸਿਰਫ ਸਿਰਫ ਨੁਕਸਾਨ ਸਾਡਾ ਸਿੱਖਾਂ ਦਾ ਹੋਇਆ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿ ਸਾਨੂੰ ਟਾਰਗੇਟ ਕਰਕੇ ਇਹੋ ਕੀਤਾ ਗਿਆ ਕੈਨ ਕੀਤਾ ਅੱਜ ਤਾਈਂ ਉਹਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਤਾਂ ਨਾ ਹੀ ਇਹਦਾ ਪਤਾ ਲੱਗਣਾ ਕਿਉਂਕਿ ਜਦੋਂ ਸਰਕਾਰਾਂ ਕੰਮ ਕਰਾਉਂਦੀਆਂ ਉਹਨਾਂ ਦਾ ਜਵਾਬ ਕੋਈ ਨਹੀਂ ਮਿਲਦਾ ਸੋ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਇੱਥੇ ਕੇ ਨਾ ਇਸ ਵੇਲੇ ਜਦੋਂ ਕਿ 95 ਤੇ ਆਇਆ ਸੀ ਟ੍ਰਿਬਿਊਨ 'ਚ ਮੈਂ ਆਰਟੀਕਲ ਵੀ ਪੜ੍ਹਿਆ ਸੀ ਜਦੋਂ ਜਿਹੜੀ ਇਨਫਾਰਮੇਸ਼ਨ ਹੈ ਜੀ ਉਸ ਵੇਲੇ ਸੀਸ ਜਿਹੜੀ ਨਵੀਂ-ਨਵੀਂ ਹੋਣੀ ਸੀਗੀ ਇਨਫਾਰਮੇਸ਼ਨ ਜਿਹੜੀ ਰੌਅ ਆ ਜਦੋਂ ਆਪਾਂ ਗੱਲਾਂ ਕਰਦੇ ਆ ਜਿਹੜੇ ਚਾਰ ਬੰਦੇ ਗੱਲਾਂ ਕਰਦੇ ਹੁੰਦੇ ਸੀ ਉਹ ਆਪੋ ਵਿੱਚ ਜਿਹੜੀਆਂ ਗੱਲਾਂ ਕਰਕੇ ਜਿਹੜੇ ਇੰਡੀਆ ਨੰਬੈਸੀ ਨੂੰ ਰਿਪੋਰਟ ਕਰਦੇ ਸੀ ਕਿ ਆਹ ਅਸੀਂ ਗੱਲਾਂ ਕੀਤੀਆਂ ਉਹ ਇੰਡੀਆ ਜਾਣਦੇ ਸੀ ਉੱਥੋਂ ਵਾਲੇ ਸੀ ਆਪਣੇ ਜਿਹੜੇ ਹੈਗੇ ਆ ਇੰਟੈਲੀਜੈਂਸ ਵਾਲੇ ਇੰਡੀਆ ਤੋਂ ਉਹ ਪ੍ਰੋਸੈਸ ਕਰਕੇ ਫੇ ਉਹ ਆਪਣੀ ਅੰਬੈਸੀ ਨੂੰ ਵਾਪਸ ਭੇਜਦੇ ਸੀ ਉਹ ਮੁੜ ਕੇ ਜਿਹੜੀ ਆ ਇਸਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਸੋ ਸਿੱਧਾ-ਸਿੱਧਾ ਦੋਸਤਾਂ ਦੀ ਸਰਕਾਰ ਦਾ ਇੱਕ ਸੈਟਅਪ ਜਿਹੜਾ ਸਾਡੇ ਲਈ ਕੀਤਾ ਗਿਆ ਸੀ ਉਹਦੇ ਜਾਲ ਵਿੱਚ ਅਸੀਂ ਫਸੇ ਹੈਗੇ ਹਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿੰਨਾ ਮਰਜੀ ਇਹਨੂੰ ਸੋਚ ਲਈਏ ਅੱਜ ਵੀ ਸਾਡੇ ਭਰਾਵਾਂ ਨੂੰ ਇਸ ਗੱਲ ਤੋਂ ਸੋਚਣਾ ਚਾਹੀਦਾ ਆ ਸਿੱਖਿਆ ਲੈਣੀ ਚਾਹੀਦੀ ਆ ਕਿ ਜੇ ਕੋਈ ਗਰਮੀ ਦੀ ਗੱਲ ਸਾਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਜਦੋਂ ਕੋਈ ਸਾਨੂੰ اکਸਾਉਂਦਾ ਆ ਪੁੱਠਾ ਕੰਮ ਕਰਨ ਲਈ ਕਿਸੇ ਨੂੰ ਮਾਰਨ ਲਈ ਕਿਸੇ ਨੂੰ ਨੁਕਸਾਨ ਕਰਨ ਲਈ ਤੁਹਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਾਨੂੰਨ ਦਾ ਕਿੰਨਾ ਨੁਕਸਾਨ ਕਰ ਲਵਾਂਗੇ ਉਹਨਾਂ ਦੀਆਂ ਗੱਲਾਂ ਦੇ ਅਗਾਰੇ ਦੇ ਕੇ ਲੈਣਾ ਚਾਹੀਦਾ ਹੈ ਲੈ ਕੇ ਗਾਂ ਤੋਂ ਸੰਭਲ ਕੇ ਚੱਲਣਾ ਚਾਹੀਦਾ ਸਾਨੂੰ ਧੰਨਵਾਦ ਜੀ ਗੁਰਪ੍ਰਤਿਪਾ ਜੀ ਗੁਰਪ੍ਰਤਿਪਾ ਜੀ ਪਰਮਜੀਤ ਸਿੰਘ ਜੀ ਲਾਈਨ ਬਰਥਰੀ ਹਾਂਜੀ ਗੱਲ ਸਾਰ ਸੱਚੀ ਕਾਲ ਬਾਈ ਜੀ ਸੱਚੀ ਕਾਲ ਅੱਜ ਪਹਿਲੀ ਗੱਲ ਤਾਂ ਜੀ ਕਿਸੇ ਵੀ ਜੇ ਕੋਈ ਕਿਸੇ ਨਾਲ ਧੱਕਾ ਹੁੰਦਾ ਹੈ ਕਿ ਕਿਸੇ ਤੇ ਆਪਾਂ ਉਹਦਾ ਬਦਲਾ ਲੈਣ ਕਿਸੇ ਹੋਰ ਬੇਗਨਾ ਨੂੰ ਮਾਰ ਦੇ ਪਹਿਲੀ ਗੱਲ ਤੇ ਇਨਸਾਨੀਅਤ ਵੀ ਨਹੀਂ ਲਿਖਿਆ ਕਿ ਤੇ ਸੱਤ ਧਰਮਾਂ ਬਿਲਕੁਲ ਕਿਸੇ ਹੋਰ ਨਾਲ ਬੇਕਸਾ ਵੀ ਹੋਰ ਨੂੰ ਕਤਲ ਕਰ ਦੇਣਾ ਹੋਰ ਨੂੰ ਮਾਰ ਦੇਣਾ ਹੈ ਤੇ ਜਨ ਇਹਦੇ ਵਿੱਚ ਮਤਲਬ ਸਾਡਾ ਹੀ ਅਸੀਂ ਇਹਦੇ ਵਿੱਚ ਹੈਗੇ ਆ ਸਾਡਾ ਹੀ ਇਨਸਾਨ ਹੋਇਆ ਸਾਨੂੰ ਸਾਨੂੰ ਸਾਡੇ ਦੇ ਤੋਂ ਨਹੀਂ ਸਾਡੇ ਦੇ ਦੋਸ਼ ਲੱਗਦੇ ਆਏ ਸਾਡੇ ਸਾਡੇ ਬੰਦੇ ਮਾਰੇ ਗਏ ਭਰਾ ਸੀ ਆ ਤੇ ਖਾਸ ਮੈਂ ਅੱਜ ਵੀ ਕੋ ਨੜਕੀ ਸੀ 11 ਸਾਲ ਦੀ ਮੇਰੀ ਮਿਸਲ ਦੀ ਭੁਆ ਦੀ ਕੁੜੀ ਤੇ ਉਹ ਇੱਕ ਇੱਕ ਸਾਲ ਪਹਿਲਾਂ ਆਪਦੀ ਬਾਅਦ ਚੱਲੀ ਛੜਿਓ ਉਹ ਵੀ ਉਹਦੇ ਚ ਮਤਲਬ ਅੱਜ ਨੂੰ 42 ਸਾਲ ਦੀ ਹੋਣੀ ਸੀ ਬਾਲ ਬੇਤੀ ਉਹ ਤੇ ਉਹ ਦੇਖ ਲੋ ਵੀ ਮਨ ਕਿੰਨੇ ਵੇਖਣਾ ਤੇ ਹੋਰ ਆਪਣੇ ਸੀ ਜਿਹੋ ਦੇ ਆਹੋ ਕਿਆਂ ਦੇ ਤੇ ਹੋਰ ਮੱਲ ਦੇ ਜਿਹੜੇ ਆਪਣੇ ਸਾਡੀ ਰਾਗੀ ਕਬੀਸ਼ਰ ਹੈ ਨਾ ਤੇ ਕਿੰਨੇ ਤੇ ਬਿਲਕੁਲ ਇਹ ਦੋਨੋਂ ਕੋਈ शक ਨਹੀਂ ਸਰਕਾਰਾਂ ਦੀ ਮਿਲਟ ਹੁੰਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਆਪਾਂ ਨੂੰ ਬਦਨਾਮ ਕਰਨ ਦੀ خاطر ਇਹਦੀ ਸੈਂਪਟੀ ਮੈਟਰ ਮਤਲਬ ਉਸ ਕਰਕੇ ਬਿਲਕੁਲ ਕੋਈ ਸ਼ੱਕ ਨਹੀਂ ਇਹ ਚੋ ਕੀਤਾ ਗਿਆ ਤੇ ਜੋ ਵੀ ਇਹਦੇ ਵਿੱਚ ਮਤਲਬ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਪਤਾ ਨਹੀਂ ਕਿ ਉਹਨੇ ਹਰਪਨ ਡਾਲਰ ਲਾ ਕੇ ਮਤਲਬ ਕਿਉਂ ਨਹੀਂ ਸਾਹਮਣੇ ਆਇਆ ਇਹ ਧੰਨਵਾਦ ਤੁਹਾਡਾ ਵਿਛਾਲਿਆ ਸਰ ਜੀ ਕੈਨੇਡਾ ਦੇ ਜਸਟਿਸ ਸਿਸਟਮ ਦੇ ਵਿੱਚ ਜਿੱਥੇ ਇੰਨੇ ਵਧੀਆ ਜੱਜ ਵਕੀਲ ਸਰਕਾਰੀ ਜਿਹੜੀਆਂ ਏਜੰਸੀਆਂ ਨਾਲ ਨੇ ਉੱਥੇ ਚੀਜ਼ ਲੱਭ ਸਕ ਸਰਾਨੀ ਹੈ ਭਾਰਤ ਦੇ ਸਰਕਾਰਾਂ ਦਾ ਜ਼ੋਰ ਤਾਂ ਭਾਰਤ 'ਚ ਚੱਲ ਸਕਦਾ ਇੱਥੇ ਤੇ ਸਿਸਟਮ ਦੇ ਵਿੱਚ ਕਿਵੇਂ ਚੱਲ ਗਿਆ ਉਹ ਫਿਰ ਇੱਥੇ ਤਾਂ ਕੋਈ ਕ腐ਸ਼ਨ ਨਹੀਂ ਕੋਈ ਬ੍ਰਾਈਬਰੀ ਨਹੀਂ ਕੋਈ ਅਹੁਦਿਆਂ ਦੀ ਦਰਬਾਰਤੋਂ ਨਹੀਂ ਉਹ ਤਾਂ ਹੋ ਸਕਦਾ ਸਾਡੇ ਨਾਲ ਕਮਿਸ਼ਨ 84 ਵਾਲੇ ਨਵੰਬਰ ਵਾਲੇ ਫਲਾਣਾ ਕਮਿਸ਼ਨ ਫਲਾਣਾ ਕਮਿਸ਼ਨ ਫਲਾਣਾ ਕਮਿਸ਼ਨ ਉੱਥੇ ਤਾਂ ਰੋਲਿਆ ਗਿਆ ਪਰ ਇੱਥੇ ਕਿਵੇਂ ਜਿਹੜੇ ਬੰਦਾ ਇੱਕ ਇਹਦੇ ਦੇ ਵਿੱਚ ਦੋਸ਼ੀ ਨਾਮਜ਼ਦ ਹੋਇਆ ਉਹ ਵੀ ਸਿੱਖ ਹੈ ਤੇ ਉਹਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਕੀ ਕਰ ਰਿਹਾ ਔਰ ਐਕਟਿਵ ਅਮਰਤਧਾਰੀ ਸਿੱਖ ਇਹ ਦੋ ਬੰਦੇ ਜਿਹੜੇ ਫੜੇ ਉਹ ਛੜਤ ਤੇ ਕਿਉਂਕਿ ਉਹਨਾਂ ਦੇ ਖਿਲਾਫ ਕੋਈ ਵੀ ਕਿਸੇ ਕਿਸਮ ਦਾ ਵੀ ਜਿਹੜਾ ਉਹ ਦੋਸ਼ ਨਹੀਂ ਸਿੱਧ ਹੋ ਸਕੇ ਉਹਨਾਂ ਨੇ ਬਾਹਰ ਕੱਢ ਕੇ ਵੀ ਸਾਨੂੰ ਬਸਾਇਆ ਕੋਈ ਸਰਕਾਰ ਨੂੰ ਸੂਬਾ ਵੀ ਨਹੀਂ ਕੀਤਾ ਇਹੋ ਜਿਹਾ ਕੁਝ ਨਹੀਂ ਹੋਇਆ ਪਤਾ ਨਹੀਂ ਇਹ ਇਹ ਇਸ ਗੱਲ ਦਾ ਏ ਦੀ ਦਾ ਜਿਹੜਾ ਉੱਤਰ ਹੈ ਉਹ ਸ਼ਾਇਦ ਨਾ ਹੀ ਮਿਲੇ ਕਿਉਂਕਿ ਹੁਣ ਬਹੁਤ ਸਾਲ ਹੋ ਗਏ 32 ਸਾਲ ਹੋਣ ਲੱਗੇ ਆ ਪਰ ਜਿਹਨਾਂ ਦੇ ਗਏ ਆ ਉਹ ਬਹੁਤ ਦੁਖੀ ਆ ਉੱnnet ਰਹੁੰਦੇ ਜਿੱਥੇ ਵੀ ਫੋਨ ਕਾਲ ਵੀ ਕਰਦੇ ਆਪਣੇ ਕਾਲਰ ਵੀ ਨੇ ਉਹ ਦੱਸਦੇ ਆ ਸਾਡੀਆਂ ਭੈਣਾਂ ਸੀ ਸਾਡੇ ਭਾਈ ਸੀ ਤੇ ਹੁਣ ਅਗਲੇ ਤਾਂ ਤੜਸਣਗੇ ਨਾ ਜਦ ਜਿਹੜਾ ਬੰਦਾ ਇੱਕ ਦੋਸ਼ੀ ਹੈ ਉਹਨੂੰ ਕਿਵੇਂ ਨਾ ਪਤਾ ਉਹ ਕਹਿੰਦੇ ਕੀ ਨਹੀਂ ਪਤਾ ਇਸ ਪਤਾ ਸਾਰਾ ਕੁਝ ਇਹ ਨਾਉ ਨਹੀਂ ਦੱਸਦਾ ਇਹ ਜੇ ਉਹਨਾਂ ਨੇ ਗੁਰੂ ਦੇ ਸਿੱਖ ਨੇ ਅੰਮ੍ਰਿਤ ਛਕਿਆ ਫਿਰ ਸੱਚ ਦੀ ਬਿਨਾ ਤੇ ਖੜਨਾ ਚਾਹੀਦਾ ਸੀ ਸੱਚ ਦੱਸਣਾ ਚਾਹੀਦਾ ਸੀ ਆਪਣੇ ਸੱਤੇ ਗੱਲ ਲੈਣੀ ਹੋਰ ਕੋਈ ਦੱਸਿਆ ਨਹੀਂ ਸਜ਼ਾ ਜਿਹੜੀ ਹੈ 30 ਸਾਲ ਜੇਲ੍ਹ ਚ ਬਹਿ ਕੇ ਮੂੰਹ ਬੰਦ ਕਰ ਲਿਆ ਇਹ ਤਾਂ ਐਡਾ ਹੋਰ ਵੀ ਪਾਪ ਤੋਂ ਪਾਪ ਹੈ ਕਿ ਗੱਲ ਏ ਕਲੀਅਰ ਨਹੀਂ ਹੋਈ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੇ ਉਹਨਾਂ ਦਾ ਮੂੰਹ ਬੰਦ ਕਰਾਇਆ ਪਿੱਛੋਂ ਕੁਛ ਜੇ ਤੇ ਜਾਂ ਉਹਨਾਂ ਨੂੰ ਕਿੰਨਾ ਕੁ ਪਤਾ ਸੀ ਕਿ ਜਿਸ ਪਹਿਲਾਂ ਕਹਿਆ ਨੇ ਪਉਣਜੀ ਤੋਂ ਵੀ ਪਿਸਤੌਲੇ ਬਣਿਆ ਤੇ ਗਾਹ ਪਤਾ ਹੀ ਨਹੀਂ ਕਿਹਦੇ ਹੱਥ ਚ ਪਿਸਤੌਲ ਗਿਆ ਇਹਦਾ ਵੀ ਜਾਂ ਛਲਾਵਾ ਹੋਇਆ ਉਹਦੇ ਨਾਲ ਜਾਂ ਕੋਈ ਹੋਰ ਗੱਲ ਹੋਈ ਕਿਉਂਕਿ ਇੱਥੇ ਵੀ ਉਸ ਸਮੇਂ ਗਰਮ ਕੰਮ ਬਹੁਤ ਸੀ 84 ਚ ਹਰੇਕ ਹੀ ਅੱਗ ਤੇ ਲੜਦਾ ਸੀ ਦੁਖੀ ਸੀ ਕੌਮ ਬਹੁਤ ਦੁੱਖ ਸੀ ਲੋਕਾਂ ਦੇ ਵਿੱਚ ਹਮਦਰਦੀ ਸੀ ਇੱਥੇ ਵੀ ਗੱਲਾਂ ਚੱਲਦੀਆਂ ਸੀ ਗਰਮ ਕਈ ਜਿਹੜੇ ਲੋਕ ਸੀ ਜਿਨ੍ਹਾਂ ਨੇ ਕਰਨਾ ਨਾ ਧਰਨਾ ਉਹ ਇੱਥੇ ਗੱਲਾਂ ਕਰਦੇ ਰਹੇ ਕਰ ਦਿਆਂਗੇ ਅੜਾ ਦਿਆਂਗੇ ਵੜਾ ਦਿਆਂਗੇ ਬਸ ਖਤਮ ਕਹਾਣੀ ਪਾੜਗਿਰਿਆਂ ਚ ਫੁਕਰਪਣੇ ਦੇ ਵਿੱਚ ਕੌਮ ਤਾਂ ਸੂਈ ਦੇ ਨੱਕੇ ਸੀ ਕੱਢਦੀ ਨਾ ਪਤਾ ਹੀ ਨਹੀਂ ਕੌਣ ਕਿੱਥੇ ਕਿਹੜੀ ਜਿਹੜੀ ਚੀਜ਼ ਫਿੱਟ ਹੋਈ ਹਨ ਅਲਦ ਵਾਲੇ ਫਾਇਦਾ ਜੇ ਦਿਖਦਾ ਹੋਵੇ ਕਿਸੇ ਨੂੰ ਉਹ ਲੋਕਾਂ ਨੂੰ ਅੱਖਾਂ ਨਾਲ ਹੀ ਵੇਖਣਾ ਚਾਹੀਦਾ ਵੀ ਕੋਈ ਫਾਇਦੇ ਵਾਲੀ ਚੀਜ਼ ਦਿਖਦੀ ਆ ਤੁਹਾਨੂੰ ਬਿਜ਼ੀ ਬਿਜ਼ੀਬਲ ਹੈ ਕੁਝ ਕਿਤੇ ਪੈਸਾ ਢੇਲਾ ਦਿਖਦਾ ਹੋਵੇ ਕਿਤੇ ਕਰੋੜਾਂ ਹੀ ਡਾਲਰ ਦਿਖਦੇ ਹੋਣ ਉਹ ਕੀ ਆ ਅਲਦ ਵਾਲੇ ਕੁਝ ਅਹਜਾ ਵੇਖਣ ਨੂੰ ਮਿਲਦਾ ਲੋਕਾਂ ਨੂੰ ਕਿਵੇਂ ਆਲਾਮ ਲੱਗਣ ਕਿਵੇਂ ਜਿਹੜੇ ਨੇ ਕਿਆਫੇ ਲੱਗਣ ਕਿਸੇ ਪਾਸੇ ਗੱਲ ਨਹੀਂ ਜਾਣੀ ਏ ਬਸ سزا 30 ਸਾਲ ਕੱਟ ਲਈ ਰਇਤ ਨੇ ਬਾਹਰ ਆ ਗਿਆ ਤੇ ਗੱਲਾਂ ਆਉਂਗਾ ਹੋ ਜਾਣੀਆਂ 85 ਦੇ दे ਦਿਨ 1985 ਦੇ ਉਹਨਾਂ ਦਿਨਾਂ ਦੇ ਵਿੱਚ ਜੂਨ ਦੇ ਦਿਨਾਂ ਦੇ ਵਿੱਚ ਇਹ ਗੱਲ ਚੱਲ ਗਿਆ ਘਰੂ ਬਸ ਖਤਮ ਕਰਨ ਠੰਡੇ ਬਸ ਚ ਗੱਲਾਂ ਪੈ ਜਾਣੀਆਂ ਪਰ ਜਿਨ੍ਹਾਂ ਦੇ ਗਏ ਨੇ ਜਿਵੇਂ ਸਾਨੂੰ ਭੁੱਲਦੇ ਨਹੀਂ ਪਿਛਲੇ 78 ਤੋਂ 92 ਵਾਲੇ ਸਾਡੇ ਭਾਈ ਜਾਂ 84 ਦੇ ਵਿੱਚ ਨਵੰਬਰ ਤੇ ਅਸੀਂ ਭੁੱਲ ਨਹੀਂ ਸਕਦੇ ਜੂਨ 84 ਨੂੰ ਨਹੀਂ ਭੁੱਲ ਸਕਦੇ ਇਸ ਤਰ੍ਹਾਂ ਇਹਦੇ ਵਿੱਚ ਵੀ ਇੱਕ ਤਰਾਸ ਦੀ ਈਡੀ ਵੱਡੀ ਆ ਜਿਹੜੀ ਪੁੱਲ ਵੀ ਨਹੀਂ ਜਾ ਸਕਦੀ ਪਰ ਦੋਸ਼ੀ ਵੀ ਉੱਥੇ ਦਾ ਦੋਸ਼ੀ ਘੱਟੋ ਘੱਟ ਸਾਹਮਣੇ ਨੇ ਚੜਾਈਆਂ ਫੌਜਾਂ ਉਹਦੇ ਤੋਂ ਬਦਲਾ ਲੈ ਲਿਆ ਤੇ ਬਾਕੀ ਇੱਥੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੁਝ ਤੇਜਪਾਲ ਸਿੰਘ ਜੀ ਲਾਈਨ ਨੰਬਰ 5 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਜਦੋਂ 1947 ਦਾ ਵਾਕਿਆ ਹੋਇਆ ਸੀ ਨਾ ਤੇ ਹੁਣ 2047 ਦਾ ਕੋਈ ਇੱਕ ਜੀ ਬਣ ਜਣੀ ਵੀ ਇਹ ਦੋ ਦੇਸ਼ ਹੋਏ ਸੀਗੇ ਵੱਖ ਹੋ ਗਏ ਬੰਦੇ ਉਦੋਂ ਵੀ ਲੱਖਾਂ ਬੰਦੇ ਮਰੇ ਸੀ ਇਸੇ ਤਰ੍ਹਾਂ 85 ਤੋਂ ਬਾਅਦ ਜਦੋਂ ਜੇ ਤੋਂ 85 ਹੋਣਾ ਇਹ ਵੀ ਕਹਾਣੀ ਜਿਹੜੀ ਇਦਾਂ ਆਮ ਜਿਹੜੀ ਉਦੋਂ ਦੀ ਜਨਰੇਸ਼ਨ ਹੋਣੀ ਹੈ ਸੋਚਣਾ ਵੀ ਕਦੀ ਇਦਾਂ ਵੀ ਹੋ ਸਕਦਾ ਹੈ ਵੀ ਲੋਕੀ ਕਰ ਸਕਦੇ ਆ ਤੇ ਗੱਲ ਇਹ ਆ ਵੀ ਇਸੇ ਤਰ੍ਹਾਂ 84 ਭੁੱਲਣਾ ਭੁਲਾ ਦੇਣਾ ਇਹਨਾਂ ਨੇ ਤੇ ਗੱਲ ਇਹ ਆ ਵੀ ਜਦੋਂ ਕਿ ਉਦੋਂ ਮਿਸਟਰ ਪਰਮਾਰ ਉੱਥੇ ਮਰਿਆ ਨਾ ਇੰਡੀਆ ਦੇ ਮਾਰਿਆ ਗਿਆ ਆ ਹੂੰ ਉਦੋਂ 2 ਕਿ 3 ਦਿਨ ਪਹਿਲਾਂ ਇੱਕ ਇੱਕ ਖਬਰ ਉੱઠી ਸੀ ਵੀ ਪਰਮਾਰ ਪੰਜਾਬ ਦੇ ਵਿੱਚ ਤੇ ਉਹ ਜਦੋਂ ਗੱਲਬਾਤ ਲੀਕ ਲੀਕ ਆਊਟ ਹੋਈ ਫਿਰ ਮੁਰਤੇ ਉੱਥੇ ਪੈਸੇ ਜਿੰਨੇ ਪੈਸੇ ਦੇਣੇ ਸੀ ਉਹਨਾਂ ਦੇਗਾ ਪੈਸੇ ਵੀ ਨਾ ਪਹਚਾਏ ਉਹਨੂੰ ਆਈ ਥਿੰਕ ਫਲੋਰ ਤੇ ਲਾਗੇ ਜਾ ਕਿਤੇ ਦਿਮਿਟਰੀ ਜ਼ਰੋਫੀ ਉੱਥੇ ਉਦੋਂ ਇੰਟਰੋਗੇਟ ਕੀਤਾ ਗਿਆ ਸੀ ਤੇ ਉਹਦੇ ਵਿੱਚ ਉਹ ਜੋ ਕੁਛ ਇੰਟਰੋਗੇਟਰਾਂ ਦੇ ਵਿੱਚ ਜਾਂ ਉਹਦੇ ਵਿੱਚ ਹੋਇਆ ਉਹ ਦਿੱਲੀ ਉਦੋਂ ਹੀ ਉੱਥੇ ਡਿਵਾਈਸ ਲਾਈ ਹੋਈ ਆ ਤੇ ਉਹਦੇ ਉਹਨੂੰ ਖੜਨ ਵਾਲੇ ਬੰਦੇ ਵੀ ਇੱਥੇ ਹੀ ਸੀ ਇਹਨਾਂ ਬੰਦੇ ਦੇ ਵਿੱਚ ਉਹ ਬੰਦੇ ਵੀ ਤੈਨੂੰ ਹੁਣ ਤੋਂ ਤੈਨੂੰ ਸਰਕਾਰ ਨਾਲ ਗੱਲਬਾਤ ਸਾਡੀ ਹੋ ਗਈ ਹੈ ਵਿੱਚ ਉਦੋਂ ਦੇ ਜਿਹੜੇ ਇੱਥੋਂ ਦੇ ਦੂਤ ਥੀ ਟੋਰਾਂਟੋ ਦੇ ਐਸੇ ਵੈਤੇ ਬੰਦੇ ਸਾਰੇ ਵਿੱਚ ਸੀਗੇ ਪਰ ਬਾਕੀ ਇਹ ਗੱਲੇ ਬਹਾ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆਂ ਵੀ ਕੋਈ ਆਪਾਂ ਹਲਾਮਾਂ ਨੂੰ ਦਿੰਨੇ ਵੀ ਸੇਖੋ ਕਿਨ ਚੁੱਪ ਰਿਆ ਸੇਖੋ ਕਿ ਚੁੱਪ ਰਿਆ ਚੁੱਪੋ ਕੇ ਸਾਨੂੰ ਸਭ ਕੁਝ ਕੀਤਾ ਆ ਤੇ ਕੀਤਾ ਕਿਉਂ ਨਹੀਂਗਾ ਤੇ ਇਹ ਅਖੀਰ ਵਕਤ ਹੀ ਹੋਣਾ ਵੀ ਸਾਨੂੰ 100 ਸਾਲ ਬਾਅਦ ਅਸੀਂ ਸੋਚਣਾ ਯਾਰ ਇਹੋ ਜਿਹਾ ਕੰਮ ਵੀ ਹੋ ਸਕਦਾ ਜਾਂ ਜਿਹੜੀ ਉਦੋਂ ਜਨਰੇਸ਼ਨ ਆਏਗੀ ਡੈਫੀਨੇਟ ਉਹਦੇ ਮਨ ਦੇ ਵਿੱਚ مشکوک ਹੋਏਗਾ ਪਰ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਏਜੰਸੀਆਂ ਤਾਂ ਰਾਜਾਂਦੀਆਂ ਨੇ ਇੱਥੇ ਵੀ ਰਹਦੀਆਂ ਐਸੀ ਕੋਈ ਗੱਲ ਨਹੀਂ ਵੀ ਨਹੀਂ ਰਹਦੀਆਂ ਇਹ ਤਾਂ ਕੋਈ ਗੱਲ ਨਹੀਂ ਵੀ ਚੁੱਪ ਕਰ ਹੋਵੇ ਤਾਂ ਮੰਨੀ ਜਾ ਸਕਦੀ ਗੱਲ ਜੇ ਬੋਲਦਾ ਤਾਂ ਉਹ ਦੱਸ ਸਕਦਾ ਪਰ ਕੋਈ ਪੁੱਛੇ ਹੀ ਨਹੀਂ ਜਾਂਦਾ ਇਸ ਗੱਲ ਬਾਰੇ ਥੈਂਕ ਯੂ ਜੀ ਬਿਲਕੁਲ ਜੀ ਕੁਝ ਕ ਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਆਪਣੇ ਕੋਲ ਹੈ ਨਹੀਂ ਬਿਲਕੁਲ ਪਰ ਮਾਰ ਉਹਨਾਂ ਦਾ ਜਾਣਾ ਇੱਥੋਂ ਜਦੋਂ ਗਏ ਨੇ ਪੰਜਾਬ ਨੂੰ ਕਿਹੜੇ ਦੋਸਤਾਂ ਦਾ ਉਹਨਾਂ ਦਾ ਉਹਨਾਂ ਨੂੰ ਦੱਸ ਕੇ ਗਏ ਉਹ ਪਾਕਿਸਤਾਨ ਵਾਲੇ ਪਾਸਿਓਂ ਟੱਪੇ ਨੇ ਮੁਕਾਬਲਾ ਹੋਇਆ ਮੇਨ ਤੋਂ ਦੋਸ਼ੀ ਫਿਰ ਉਹਨੂੰ ਮਾਰਿਆ ਕਾਦੇ ਲਈ ਉਹਦੇ ਤੋਂ ਪਤਾ ਕਰਦੇ ਸਰਕਾਰ ਫੜਦੀ ਲੋਕਾਂ ਨੂੰ ਦਿੰਦੇ ਇੱਥੇ ਸੌਰੀ ਕੈਨੇਡਾ ਨੂੰ ਦਿੰਦੇ ਤੇ ਬਹੁਤ ਇਹੋ ਜਿਹੇ ਸਵਾਲ ਨੇ ਜਿਨ੍ਹਾਂ ਦਾ ਪਤਾ ਤਾਂ ਸਾਰਿਆਂ ਨੂੰ ਆ ਹੁਣ ਅਨਸਰ ਸਾਰਿਆਂ ਕੋਲ ਨੇ ਪਰ ਉਹ ਅਨਸਰ ਸਿੱਧ ਨਹੀਂ ਹੋ ਸਕਣੇ ਉਹ ਕਹਿ ਨਹੀਂ ਸਕਦੇ ਲੋਕ ਗੱਲ ਆ ਇੱਥੇ ਆ ਕੇ ਖੜੀ ਆ ਬਸ ਦੂਜੇ ਲੋਕ ਕਹਿਣੋਂ ਡਰਦੇ ਨੇ ਕਿ ਕਿਹਦਾ ਨਾਂ ਲੈ ਕੇ ਵਿੱਬ ਕੇ ਕਹਿ ਦਵਾ ਨਾਂ ਲੈ ਦਵਾ ਫਿਰ ਉਹ ਇੱਥੇ ਅ ਅਦਾਲਤ ਦੇ ਜੀ ਮਾਨ ਦੇ ਮੁਕੱਦਮੇ ਜੇ ਬਹੁਤ ਲੋਕ ਉਸ ਗੱਲ ਤੋਂ ਪਿੱਛੇ ਹਟਦੇ ਆ ਸਬੂਤ ਕੋਈ ਨਹੀਂ ਪਰ ਬੰਦਿਆਂ ਨੂੰ 80% ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦਿਆਂ ਨੇ ਕੀ-ਕੀ ਕਰਾਇਆ ਤੇ ਕਿੱਥੋਂ ਹੋਇਆ ਦੁੱਖ ਆ ਬਹੁਤ ਵੱਡਾ ਦੁਸ਼ਮਣ ਦਾ ਪਤਾ ਹੋਵੇ ਤੇ ਦੁਸ਼ਮਣ ਨੂੰ ਦੁਸ਼ਮਣ ਨਾ ਕਹਿ ਸਕੀਏ ਇਹ ਉਪਰ ਵੱਡਾ ਔਖਾ ਹੈ ਇਰ ਇੰਡੀਆ ਦੀ ਗੱਲਬਾਤ ਚੱਲ ਰਹੀ ਹੈ ਕਿ ਬਹੁਤ ਕੁਝ ਇਸ ਦੇ ਵਿੱਚ ਲੋਕਾਂ ਨੂੰ ਪਤਾ ਹੈ ਪਰ ਸਿੱਧੇ ਕਈ ਵਾਰ ਚੀਜ਼ਾਂ ਕਰਨੀਆਂ ਬਹੁਤ ਜਿਵੇਂ ਪੰਜਾਬ ਦੇ ਵਿੱਚ ਬੜੀਆਂ ਗੱਲਾਂ ਚੱਲਦੀਆਂ ਫਲਾਣੇ ਨੇ ਆਹ ਕਰਤਾ ਫਲਾਣੇ ਨੇ ਉਹ ਕਰਤਾ ਇੱਥੋਂ ਆਹ ਕਰ ਲੈ ਇੱਥੋਂ ਆਹ ਬਣਾ ਲਿਆ ਪਰ ਉਹ ਗੱਲਾਂ ਨੇ ਜਦ ਤੱਕ ਉਹ ਗੱਲਾਂ ਸਿੱਧ ਨਹੀਂ ਹੋ ਸਕਦੀਆਂ ਗੱਲਾਂ ਹੀ ਨੇ ਕਲਵੰਤ ਸਿੰਘ ਜੀ ਲਾਈਨ ਨੰਬਰ 4 ਹਾਂਜੀ ਦਸਫਰੀ ਗੱਲ ਗੇਲਦਾ ਹੋਵੇ ਸਸੀਕਾਲ ਬਾਈ ਜੀ ਬਸ ਦੀ ਗੱਲ ਮਗਾ ਦੇਣੀ ਹੈ ਜਿਹੜੇ ਤੁਸੀਂ ਕਹਿੰਦੇ ਆ ਵੀ ਸਜ਼ਾ ਨਹੀਂ ਮਿਲੀ ਸਜ਼ਾ ਜਿਹੜੀ ਐ ਦੇਖੋ ਜੇ ਥੋੜਾ ਜਿਹਾ ਘੁਮਾ ਕੇ ਦੇਖੀਏ ਆਪਣੇ ਕਾਮਨ ਸੈਂਸ ਨੂੰ ਤਾਂ ਸਜ਼ਾ ਤੇ ਉਹ ਬੰਦੇ ਨੂੰ ਮਿਲ ਚੁੱਕੀ ਆ ਉਹਨੂੰ ਬੰਦਾ ਜਿਹੜਾ ਰਜੀਵ ਗਾਂਦੇ ਆ ਉਹਨੂੰ ਅਸੀਂ ਕਟਾਰੇ ਵਿੱਚ ਨਹੀਂ ਖੜਾ ਕਰ ਸਕਦੇ ਲੇਕਿਨ ਕਾਮਨ ਸੈਂਸ ਨਾਲ ਅਗਰ ਅਸੀਂ ਕੜੀ ਨਾਲ ਕੜੀ ਜੋੜ ਕੇ ਦੇਖੀਏ ਉਹ ਬੰਦਾ ਕਸੂਰਵਾਦ ਦਿੱਤੀ ਵੀ ਜਦੋਂ بڑا ਪੇੜ ਗਿਰਦਾ ਤਾਂ ਧਰਤੀ ਹਿੱਲਦੀ ਹੈ ਉਸ ਤੋਂ ਬਾਅਦ ਅਸੀਂ ਦੇਖੋ ਕਿ ਦਸੰਬਰ ਦੇ ਮਹੀਨੇ ਵਿੱਚ ਨਵੰਬਰ ਦੇ ਮਹੀਨੇ 'ਚ ਇੱਕ ਕਤਲੇਆਮ ਹੋਇਆ ਦਸੰਬਰ ਦੇ ਮਹੀਨੇ ਦੇ ਵਿੱਚ ਮੇਰੇ ਖਿਆਲ ਦੋ ਤਿੰਨ ਤਰੀਕ ਦੇ ਆਸ-ਪਾਸ ਹੀ ਉਹ ਯੂਨੀਅਨ ਕਾਰਬਾਈਡ ਜਿਹੜੀ ਉੱਥੇ ਫੋੜ-ਫੋੜ ਕਰਕੇ ਉਹਨਾਂ ਨੇ 5-6000 ਬੰਦਾ ਜਿਹੜਾ ਮਾਰ ਚੜਿਆ ਉੱਤੇ ਉਹ ਇਹ ਜਿਹੜਾ ਕਤਲੇਆਮ ਕੀਤਾ ਦਿੱਲੀ ਜਾਂ ਕਾਲਪੁਰ ਵਗੈਰਾ ਜਿਹੜੀ ਇਹ ਚ ਉਸ ਚੀਜ਼ ਨੂੰ ਟੱਕਣ ਵਾਸਤੇ ਉਹ ਕਾਰਵਾਈ ਕੀਤੀ ਗਈ ਹੁਣ ਜਦੋਂ ਲੋ ਵੀ ਰੱਗੇ ਗਏ ਚੁੱਕੇ ਆ ਵੀ ਯੂਐਨਓ ਦੇ ਅੰਦਰ ਸਵਾਲ ਉੱਠੇ ਅਮਰੀਕਾ ਵੀ ਹੋਰ ਜਿਹੜੀਆਂ ਜੱਫੇ ਬੰਦੀਆਂ ਨੇ ਆਵਾਜ਼ਾਂ ਉਠਾਈਆਂ ਤਾਂ ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਰਿਹਾ ਸੀਗਾ ਉਹ ਇਹ ਕਾਰਵਾਈ ਜਿਹੜੀ ਹੈ ਸਿੱਧੀ-ਸਿੱਧੀ ਹਿੰਦੁਸਤਾਨ ਨੇ ਖੁਦ ਕੀਤੀ ਹੈ ਪਰ ਇੱਥੋਂ ਦੇ ਲੋਕ ਕੁਝ ਉਹਨਾਂ ਦੇ ਨਾਲ ਜਿਹੜੇ ਸੀਗੇ ਮੇ ਹੋਏ ਸੀਗੇ ਉਹਨਾਂ ਦੇ ਮਿਲੀ ਭਗਤ ਦੇ ਨਾਲ ਹੀ ਜ਼ਿਆਦਾ ਕੰਮ ਹੋਇਆ ਆਦਰਵਾਇਜ਼ ਇਹ ਸਰਕਾਰ ਦਾ ਹੀ ਦੋਸ਼ ਨਹੀਂ ਮੈਂ ਮੰਨਦਾ ਇੱਥੋਂ ਦੇ ਲੋਕ ਵੀ ਕੁਝ ਮਿਲੇ ਹੋਏ ਸੀਗੇ ਉਹਨਾਂ ਨਾਲ ਸੋ ਜਿਹੜਾ ਮਾਸਟਰ ਮਾਈਂਡ ਬੰਦਾ ਸੀਗਾ ਉਹਦੀ ਤਾਂ ਤਰਜ਼ੀ ਆਪਣੇ ਹਿੱਲ ਗਈ ਉੱਥੇ ਹੀ ਹਿੱਲ ਗਈ ਆ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਆ ਬਾਕੀ ਜਿਹੜੇ ਇੱਥੋਂ ਦੇ ਲੋਕ ਮਿਲੇ ਹੋਏ ਸੀਗੇ ਉਹ ਆਈਡੈਂਟੀਫਾਈ ਨਹੀਂ ਹੋਏ ਅਗੇ ਇਹੀ ਆ ਜੀ ਥੈਂਕ ਯੂ ਜੀ ਬਿਲਕੁਲ ਇਹੀ ਇਹੀ ਗੱਲ ਬਾਤਾਂ ਕਰ ਰਹੇ ਆਂ ਕਿ ਨਹੀਂ ਪਤਾ ਲੱਗ ਰਿਹਾ ਔਰ ਨਾ ਵੀ ਹਾ ਸਜਾ ਜਿਹੜੀ ਹੈ ਉਹ ਤੁਸੀਂ ਕਹਿ ਦਿੱਤਾ ਨਹੀਂ ਤਾਂ ਦੁਨੀਆ ਦੇ ਵਿੱਚ ਸਵਾਲ ਇਹ ਪੁੱਛੇ ਜਾਣੇ ਸੀ ਹੁਣ ਵੀ ਗੱਲਾਂ ਤਾਂ ਮੁੱਕਦੀਆਂ ਨਹੀਂ ਜੂਨ 84 ਨੂੰ ਸਾਕੇ ਨੀਲੇ ਤਾਰੇ ਦਾ ਇੰਗਲੈਂਡ ਦੇ ਵਿੱਚ ਕਿੰਨਾ ਰੌਲਾ ਪਿਆ ਕਿ ਸੂਈਆਂ ਏਜੰਸੀਆਂ ਨੂੰ ਪਤਾ ਸੀ ਇਹਨਾਂ ਨੇ ਗੱਲਾਂ ਕੀਤੀਆਂ ਭਾਰਤੀ ਏਜੰਸੀਆਂ ਦੇ ਨਾਲ ਰੌਲਾ ਕਿਤੇ ਥੋੜਾ ਪਿਆ ਰੂਸ ਵਾਲਿਆਂ ਨੇ ਕੇਜੀਬੀ ਨੇ ਮਦਦ ਕੀਤੀ ਖਖੜੀਆਂ ਕਰੇਲੇ ਹੋ ਗਿਆ ਰਿਹਾ ਕੁਛ ਖਤਮ ਹੈ ਕੰਮ ਔਖ ਮਰੀ ਫੈਲਦੀ ਹੈ ਜਿਹੜਾ ਦੁਨੀਆ ਤੇ ਰਾਜ ਕਰਦਾ ਇਹ ਦੇਸ਼ ਉਹਨਾਂ ਉਸ ਦੇਸ਼ ਦੀਆਂ ਇਸਤਰੀਆਂ ਜਾ ਕੇ ਦबई ਦੇ ਵਿੱਚ ਅੱਡਿਆਂ ਤੇ ਬੈਠ ਗਈਆਂ ਜਿਹੜੇ ਕਹਿੰਦੇ ਸੀ ਅਸੀਂ ਇੱਜ਼ਤ ਤੋਂ ਥੱਲੇ ਸਾਡਾ ਕੁਝ ਹੈ ਹੀ ਨਹੀਂ ਭੁੱਖੇ ਮਰ ਪਰ ਸਾਡੇ ਅਸੂਲ ਨੇ ਅਸੂਲ ਸਾਲ ਚੱਕੇ ਟੰਗ ਤੇ ਕਈ ਵਾਰ ਕੁਦਰਤ ਵੱਲੋਂ ਮਾਰ ਹੁੰਦੀ ਹੈ ਇੱਥੇ ਵਾਲੀ ਜਿਹੜੀ ਮਿੰਦਰਜੀਤ ਸਿੰਘ ਰਾਏ ਉਹਨਾਂ ਨੇ ਵੀ 28-30 ਸਾਲ ਜ਼ਿੰਦਗੀ ਦੇ ਅੰਦਰ ਕੱਟੇ ਪਰ ਬਹੁਤ ਲੋਕ ਇਸ ਗੱਲ ਤੇ ਆ ਕੇ ਖੜਦੇ ਆ ਵੀ ਜਦ ਇੰਨਾ ਆਪ ਔਖਾ ਹੋ ਲਿਆ ਬੰਦਾ ਇਹਨੇ ਗਾਂ ਲੀਡ ਕਿਉਂ ਨਹੀਂ ਦਿੱਤੀ ਕਿਸੇ ਪਾਸੇ ਉਹ ਜੇ ਕੌਮ ਨੂੰ ਬਚਾਉਣ ਵਾਲੀ ਗੱਲ ਆ ਕੌਮ ਹੁਣ ਕਿਹੜਾ ਬਚੀ ਹੋਈ ਐ ਇੱਕ ਬੰਦਾ ਜਿਹਨੇ ਬੰਬ ਬਣਾਇਆ ਉਹ ਕਟਾਰੇ ਚ ਖੜਾ ਐ ਤੇ ਲੋਕ ਹੁਣ ਤੁਸੀਂ ਮਾਫੀ ਥੋੜਾ ਦੇ ਸਕਦੇ ਹੋ ਹਾਂ ਇੱਕ ਬੰਦੇ ਨਾਲ ਸਾਰੇ ਜ਼ਿੰਮੇਵਾਰ ਨੇ ਨਹੀਂ ਮਰਨ ਵਾਲੇ ਵੀ ਸਾਡੇ ਮਾਰਨ ਵਾਲੇ ਵੀ ਸਾਡੇ ਜੀ ਗੱਲ ਸਿੱਧ ਐ ਪਰ ਨੁਕਸਾਨ ਬਹੁਤ ਵੱਡਾ ਕੌਮ ਦਾ ਹੋਇਆ ਇੱਕ ਐਡੀ ਵੱਡੀ ਘਟਨਾ ਮੁਕੱਦਸ ਤੇ ਫੌਜਾਂ ਜਿਹੜੀਆਂ ਚਾੜੀਆਂ ਟੈਂਕ ਚਾੜੇ ਉਸ ਰੋਕਤਾ ਰੋਲਤਾ ਗਾਂ ਗੱਲ ਕੱਖ ਨਾ ਹੋਈ ਕਿਸੇ ਪਾਸੇ ਨਾ ਗੱਲ ਗਈ ਅੱਜ ਵੀ ਖਬਰਾਂ ਤੁਸੀਂ ਪੜ੍ਹ ਲਓ ਕਿਤੇ ਉਹਨੂੰ ਸਿੱਖ ਟੈਰਰਿਸਟ ਲਿਖਿਆ ਨੈਸ਼ਨਲ ਪੋਸਟ ਨੇ ਉਹਨੂੰ ਸਿੱਖ ਟੈਰਰਿਸਟ ਲਿਖਿਆ ਤੇ ਸੀਬੀਸੀ ਨੇ ਲਿਖਿਆ ਕਿ ਉਹਨੇ ਸਾਈਕੋਲੋਜਿਸਟ ਕਹਿੰਦੇ ਨੇ ਕਹਿੰਦੇ ਇਹਨੇ ਮੂੰਹ ਬੰਦ ਕੀਤਾ ਇਹਦਾ ਇਹ ਨਹੀਂ ਮਤਲਬ ਵੀ ਇਹਨੂੰ ਪਤਾ ਨਹੀਂ ਇਹਨੂੰ ਸਭ ਪਤਾ ਇੱਕ ਬਹੁਤ ਕਿਉਂਕਿ ਜੇ ਤੁਸੀਂ ਕੋਣ ਡਮ ਹੈ ਉਹ ਬੰਦਾ ਲੋ ਇੰਜੀਨੀਅਰ ਬੰਦਾ ਹੈ ਤੇ ਉਹਨੂੰ ਬੰਬ ਜਿਹੜਾ ਬਣਾਉਣਾ ਆਉਂਦਾ ਹੈ ਉਸਨੇ ਜਾ ਕੇ ਪਰ ਪੁਲਿਸ ਪਿੱਛੇ ਕਹਿੰਦੇ ਅਸੀਂ ਪੈੜ ਦੱਬ ਰਹੇ ਸੀ ਖੜਕਾ ਕੀਤੇ ਜਦ ਖੜਕਾ ਕਰਕੇ ਮੁੜਿਆ ਆਉਂਦਾ ਫੜ ਲੈਂਦੇ ਫਿਰ ਫੜਿਆ ਕਿਉਂ ਨਹੀਂ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਜਿਹੜੀਆਂ ਟੇਪਾਂ ਦੀ ਗੱਲ ਪ੍ਰਭਜੋਤ ਉਹ ਨਹੀਂ ਕਹੇ ਕਹਿੰਦੇ ਬਿਲਕੁਲ ਇਹ ਮੰਨਿਆ ਕਿ ਟੇਪਾਂ ਅਸੀਂ ਰੀਲੀਜ਼ ਜਿਹੜੀਆਂ ਰੇਜ਼ ਕੀਤੀ ਇਹ ਇੱਕ ਬਹੁਤ ਵੱਡੀ ਜਿਹੜੀ ਠੀਕ ਹੈ ਸੰਘਰਸ਼ ਤਾਂ ਲੋਕਾਂ ਲੜਿਆ ਉੱਥੇ ਪੰਜਾਬ ਦੇ ਵਿੱਚ ਰਹਿ ਕੇ ਦੁੱਖ ਸੋ ਇਕੱਠੇ ਆਪਣੇ ਤੇ ਨੰਘਾਇਆ ਪਰ ਕਈਆਂ ਨੇ ਕੀਤਾ ਕੱਖ ਨਹੀਂ ਉਈਆਂ ਪਿੱਛੇ 4 ਫੋਟਵਾਂ ਰਫਲਾਂ ਦੀਆਂ ਰੱਖ ਲੀਆਂ ਮੋਢੇ ਤੇ ਰੱਖ ਲਿਆ ਕੁਛ ਤੇ ਆਹ ਦਾਂਗੇ ਉਹ ਕਰਦੇ ਆਗੇ ਉਹ ਕਰਦੇ ਉਹਨਾਂ ਨੇ ਜਿਹੜਾ ਨੁਕਸਾਨ ਵੱਧ ਕੀਤਾ ਫਾਇਦਾ ਘੱਟ ਹੋਇਆ ਇਹਦੇ ਵਿੱਚ ਜਿਹੜਾ ਦੋਸ਼ ਲੋਕਾਂ ਨੇ ਉਸ ਸਮੇਂ ਗੁੱਸਾ ਵੀ ਬਹੁਤ ਸੀ ਪਰ ਉਹ ਗੁੱਸਾ ਜਿਹੜਾ ਕਿਸੇ ਪਾਸੇ ਵਧੀਆ ਪਾਸੇ ਨਾ ਲੱਗ ਸਕਿਆ ਉਹਨੂੰ ਐਡੇ ਵੱਡੇ ਪੱਧਰ ਤੇ ਦੁਨੀਆ ਚ ਪ੍ਰਚਾਰਿਆ ਨਾ ਜਾ ਸਕਿਆ ਉਲਟ ਗੱਲ ਜਿਹੜੀ ਹੋ ਗਈ ਉੱਥੇ ਦਾ ਦੁੱਖ ਜਿਹੜਾ ਗੁੱਸਾ ਇੱਥੇ ਇੱਕ ਤਾਂ ਤੇ ਇੱਥੇ ਵੀ ਆਪਣੇ ਬੰਦੇ ਨੁਕਸਾਨ ਕਰਲੇ ਤੇ ਸਾਰਾ ਕੁਝ ਜਿਹੜਾ ਉੱਪਰ ਥੱਲੇ ਹੋ ਗਿਆ ਪਰ ਕਿਹਨੇ ਕੀਤਾ ਉਹ ਜਿਹੜੀ ਇੱਕ ਕਿਤਾਬ ਹੈ ਸਾਈਨ ਆਫ ਇਹਦੇ ਪਿੱਛੇ ਲੱਗੇਗਾ ਤੇ ਇੱਥੋਂ ਸੱਖ ਨਹੀਂ ਪਤਾ ਲੱਗ ਸਕਦਾ ਗੱਲਬਾਤ ਕੈਨੇਡਾ ਦੀ ਮੈਂ ਕਰ ਰਿਹਾ ਸਾਂ ਸੋ ਇਹ ਇੱਕ ਜਿਹਾ ਮਸਲਾ ਹੈ ਜਿਸ ਕਦੇ ਵੀ ਹੱਲ ਆਪ ਨੂੰ ਨਹੀਂ ਮਿਲਣਾ ਪਰ ਦੁੱਖ ਦੀ ਕਹਾਣੀ ਇਹਦੇ ਵਿੱਚ ਇਹ ਹੈ ਕਿ ਇਸ ਤਰਤ ਤੇ ਐਡੀ ਵੱਡੀ ਘਟਨਾ ਹੋਈ ਹੋਵੇ ਤੇ ਉਸ ਇਲਾਜ ਜਾਂ ਉਸ ਦੋਸ਼ੀ ਨੂੰ ਸਜ਼ਾ ਮਿਲਣੀ ਇਹ ਬਹੁਤ ਵੱਡੀ ਗੱਲ ਇੱਕ ਹੋਰ ਮਾੜੀ ਆਦਤ ਜੇ ਐਡਿਕਸ਼ਨ ਦੀ ਗੱਲ ਕਰੀਏ ਭਾਈਚਾਰੇ ਦੇ ਵਿੱਚ ਇੱਕ ਲੁਕਮੀ ਬੜੀ ਮੁਸ਼ਕਲ ਚੱਲ ਰਹੀ ਅੱਜ ਕੱਲ੍ਹ ਉਹ ਹੈ ਗੈਂਬਲਿੰਗ ਦੀ ਜੂਏ ਦੀ ਮੈਨੂੰ ਯਾਦ ਹੈ ਤਿੰਨ ਸਾਲ ਪਹਿਲਾਂ ਇੱਕ ਕਾਉਂਸਲਰ ਆਪਣੇ ਪ੍ਰੋਗਰਾਮ ਤੇ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਉਹ ਸਪੈਸੀਫਿਕਲੀ ਗੈਂਬਲਿੰਗ ਤੇ ਸ਼ਰਾਬ ਦੀ ਐਡਿਕਸ਼ਨ ਮੈਂ ਸਾਹਿਬ ਕਿੰਨੀ ਇੱਕ ਜੱਦ ਦੀ ਗੱਲ ਤਿੰਨ ਸਾਲ ਵਕਾਰ ਸਾਰਾ ਦਿਨ ਸੱਤ ਤੋਂ ਅੱਠ ਘੰਟੇ ਮੈਂ ਕੰਮ ਕਰ ਸਕਦੀ ਹਾਂ ਮੈਂ ਅੱਠੇ ਘੰਟੇ ਬੁੱਕ ਹਾਂ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਹੈ ਜੇ ਤੁਸੀਂ ਨਿੱਜੀ ਤੌਰ ਤੇ ਵੇਖੋ ਇਹ ਲਲਕ ਕਿਵੇਂ ਪੈਂਦੀ ਹੈ ਛੋਟੀ ਜੀ ਜਗ੍ਹਾ ਤੇ ਕਿਸੇ ਮੇਲੇ ਤੇ ਜਾਓ ਤੁਸੀਂ ਮੰਨ ਲਓ ਰਾਈਡਾਂ ਵਾਲੇ ਮੇਲੇ ਤੇ ਜਾਂਦੇ ਹੋ ਤੁਸੀਂ ਉੱਥੇ ਛੋਟੀ ਛੋਟੀਆਂ ਚੀਜ਼ਾਂ ਜਿੱਥੇ ਲੂਨੀ ਪੈਂਦੀ ਹੈ ਵੀ ਐਨੀ ਹੋ ਜਾਂਦੇ ਹੋ ਇੱਕ ਲੂਨੀ ਨਾਲੇ ਖੇਡਦੇ ਹੋ ਤੁਸੀਂ ਅੰਦਰੋਂ ਇੱਕ ਰੌੜ ਜਿਹੀ ਇੱਕ ਕਰਾਜ ਆ ਬਾਹਰੋਂ ਆਉਂਦਾ ਤੇ ਉਹ ਨਾਲ ਫਸ ਕੇ ਲੂਨੀਆਂ ਬਾਹਰ गिरਦੀ ਉੱਥੇ ਲੂਨੀ ਸਿੱਟਦੇ ਆ ਜਾਂ ਲੂਨੀ ਪਾ ਕੇ ਆਪਾਂ ਸਟੈਡੀ ਬੀਅਰ ਜਿਹੜੇ ਆ ਉਹ ਕੱਢਦੇ ਆ ਜਾਂ ਲੂਨੀ ਪਾ ਕੇ ਕੁਛ ਨਾ ਕੁਛ ਬਾਲ ਆ ਜਿਹੜੀ ਉਹ ਸਿੱਟਦੇ ਆ ਜਾਂ ਸ਼ੂਟ ਕਰਦੇ ਆ ਪਾਣੀ ਤੇ ਇੱਕ ਇੱਕ ਲੂਨੀ ਹੋਈ ਐ ਇੱਕ ਇੱਕ ਕਰਦੇ 20 25 ਡਾਲਰ ਤੁਸੀਂ ਖੇਲ ਕੇ ਆਉਨੇ ਹੋ ਲਾਸ ਵੇਗਸ ਦੁਨੀਆ ਦਾ ਸਭ ਤੋਂ ਵੱਡਾ ਜੱਟ ਭਰ ਕੇ ਸ਼ੇਖ ਲੋਗ ਮਸਕਟ ਤੋਂ ਮੈਂ ਉੱਡਦੇ ਵੇਖੇ ਜਿਹੜੇ ਡਾਲਰਾਂ ਦੇ ਜੱਟ ਭਰ ਕੇ ਜਿਹੜੇ ਜਹਾਜ਼ ਭਰ ਕੇ ਤੇ ਚੀਜ਼ਾਂ ਚ ਲੈ ਕੇ ਆਉਂਦੇ ਨੇ ਤੇ ਖਾਲੀ ਜਾਂਦੇ ਇਸ ਤਰ੍ਹਾਂ ਇਹ ਜਿਹੜੀ అలਮਤ ਇਹ ਜਿਹੜੀ ਇੱਕ ਮੁਸ਼ਕਲ ਹੈ ਇੱਕ ਐਡਿਕਸ਼ਨ ਹੈ ਮਾੜੀ ਲਲਕਾ ਸਾਡੇ ਘਰਾਂ ਨੂੰ ਚਤੰਮ ਕਰ ਰਹੀ ਘਰ ਦਾ ਜਿਹੜਾ ਹੈੱਡ ਹੈ ਉਹਦੇ ਕੋਲ ਪੈਸਾ ਤੇ ਉਹਦੇ ਕੋਲ ਕੰਟਰੋਲ ਹੈ ਪਤਾ ਜਦ ਲੱਗਦਾ ਕਿ ਲਾਈਨ ਆਫ ਕ੍ਰੈਡਿਟ ਚੋਂ ਲੱਖ ਡਾਲਰ ਕੱਢ ਕੇ ਉਹ ਬੰਦਾ ਖਾ ਚੁੱਕਿਆ ਖਾ ਕੀ ਚੁੱਕਿਆ ਜੂਆ ਖੇਡ ਚੁੱਕਿਆ ਔਰ ਇਹ ਨੂੰ ਸ਼ੁਰੂਆਤ ਕਰਨ ਲਈ ਲੋਕ ਨੇ ਜਿਹੜੇ ਆਲੇ-ਦਾਲੇ ਤੁਰੇ ਫਿਰਦੇ ਆ ਉਹ ਲਾ ਦਿੰਦੇ ਆ ਲਲਕ ਪਹਿਲੀ ਵਾਰ ਜਿਤਾ ਦਿੰਦੇ ਆ ਉਹਦੇ ਬਾਅਦ ਹੌਲੀ-ਹੌਲੀ ਹੌਲੀ-ਹੌਲੀ ਹੌਲੀ-ਹੌਲੀ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਕੈਸ਼ ਵਾਲੀ ਜਗ੍ਹਾ ਤੋਂ ਕੈਸ਼ ਵਾਲੇ ਕੰਮ ਤੋਂ ਇਹ ਚੀਜ਼ਾਂ ਸ਼ੁਰੂ ਹੁੰਦੀ ਸ਼ਰਾਬ ਇਨਵੋਲ ਹੋ ਜਾਂਦੀ ਹੈ ਤੇ ਲੋਕ ਤੁਸੀਂ ਜਾ ਕੇ ਦੇਖਿਓ ਜਿਹੜੇ ਲੋਕ ਥੋੜੇ ਤਸੀਨ ਉਹਨੇ ਲਾਈਨਾ ਕਿਵੇਂ ਲੱਗ ਜਾਂਦੇ ਨੇ ਕਿਵੇਂ ਬੈਠੇ ਦਿਲ ਦੇ ਤਲੂਨੀਆਂ ਨਾਲ ਹੀ ਆ ਡਾਲਰਾਂ ਨਾਲ ਹੀ ਆ ਪਰ ਪਤਾ ਜਦ ਲੱਗਦਾ ਲੱਖ 2 ਲੱਖ 4 ਲੱਖ 5 ਲੱਖ ਜਿਹੜੇ ਹਾਰਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਇੱਕ ਘਰਾਂ ਦੇ ਵਿੱਚ ਸਾਡਿਆਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਹੋ ਚੁੱਕੀ ਹੈ ਜੇ ਕਿਸੇ ਨੂੰ ਇਹ ਦਾ ਪੰਗਾ ਪਿਆ ਹੋਇਆ ਐਡਿਕਸ਼ਨ ਹੋਈ ਹੈ ਇਹਦਾ ਇਲਾਜ ਕਰਾਓ ਇਹਦੇ ਕਾਉਂਸਲਰ ਨੇ ਇਹਨੂੰ ਬਦਲੋ ਜਾਂ ਆਪਣੇ ਪਰਿਵਾਰ ਨਾਲ ਸਮਾਂ ਕਰੋ ਤੇ ਪਰਿਵਾਰ ਨੂੰ ਦੱਸੋ ਤੇ ਆਪਣਾ ਇਲਾਜ ਕਰਾਓ ਨਹੀਂ ਉਜੜ ਉੱਜੜ ਜਾਏਗਾ ਸਾਰਾ ਕੁਝ ਬਿਚੀ 50 100 ਡਾਲਰ ਖਰਚਣ ਨਾਲ ਪਾਰਟੀ ਕਰੇ ਨਾਲ ਇਧਰ ਉਧਰ ਮੰਨਣ ਵਾਲਾ ਨਹੀਂ ਜਦ ਤੁਸੀਂ ਲੱਖਾਂ ਹੀ ਡਾਲਰ ਹਾਰ ਜਾਂ ਨੋਏ ਦੇਤੇ ਛੱਡ ਨਹੀਂ ਹੁੰਦਾ ਬੰਦੇ ਤੁਹਾਨੂੰ ਸੈੱਟ ਕਰ ਲੈਂਦੇ ਬਿਠਾ ਲੈਂਦੇ ਕਮਰਿਆਂ ਦੇ ਵਿੱਚ ਨਹੀਂ ਉੱਠਣ ਦਿੰਦੇ ਸੈੱਟ ਕੀਤੀਆਂ ਹੋਈਆਂ ਗੱਲਾਂ ਦੇ ਤਹਿਤ ਇਹ ਬਹੁਤ ਮੁਸ਼ਕਲ ਤਾਸ਼ ਦੇ ਵਿੱਚ ਪੱਤੇ ਲਾਉਣੇ ਬਹੁਤ ਕੁਝ ਹੈ ਇਹਦੇ ਵਿੱਚ ਜਿਹੜੇ ਇਸ ਤਰ੍ਹਾਂ ਫਸਾਉਂਦੇ ਆ ਲੋਕਾਂ ਨੂੰ ਔਰ ਇਹ ਬਹੁਤ ਜਿਹੜੀ ਨਸ਼ਿਆਂ ਦੀ ਤਾਂ ਗੱਲ ਭਾਈਚਾਰੇ ਚ ਰਹੀ ਹੈ ਇਨੇ ਸ਼ੇ ਭਾਈਚਾਰਾ ਕਰਦਾ ਸ਼ਰਾਬ ਪੀਂਦੇ ਨੇ ਜੀ ਅਫੀਮ ਦਾ ਸੇਵਨ ਕਰਦੇ ਨੇ ਡੋਡਿਆਂ ਦਾ ਸੇਵਨ ਕਰਦੇ ਨੇ ਇਹ ਗੱਲਾਂ ਬਹੁਤ ਭਾਈਚਾਰੇ ਚ ਪਰ ਗੈਂਬਲਿੰਗ ਆ ਜਿਹੜੀ ਜੂਆ ਜਿਹੜਾ ਇਹ ਬਹੁਤ ਵੱਧ ਰਿਹਾ ਭਾਈਚਾਰੇ ਚ ਆਪਣੇ ਆਲੇ-ਦਾਲੇ ਨਿਗ੍ਹਾ ਰੱਖੋ ਖਾਸ ਤੌਰ ਤੇ ਸੋਣੀਆਂ ਆਪਣੇ ਪਸੇ ਥੇਲੇ ਦਾ ਖਿਆਲ ਰੱਖੋ ਵੱਡੀਆਂ ਘਟਨਾਵਾਂ ਹੋ ਰਹੀਆਂ ਲੱਖਾਂ ਡਾਲਰਾਂ ਦੀਆਂ ਔਰ ਬੰਦੇ ਤੁਰੇ ਫਿਰਦੇ ਗੰਢ ਦਿੰਦੇ ਆ ਮਾੜੇ ਬੰਦੇ ਦਾ ਪਰਸ਼ਾਮਾ ਦਾ ਘਰ ਚ ਪੈਣ ਦੋ ਜਿਹੜਾ ਬਦਨਾਮ ਬੰਦਾ ਚਟਮ ਕਰਜੂ ਚਟਮ ਬਚੋ ਇਹ ਵੀ ਇੱਕ ਇੱਕ ਘਟਨਾ ਨਹੀਂ ਖਾਸ ਤੌਰ ਤੇ ਜਿਹੜੇ ਕੈਸ਼ ਵਾਲੇ ਨੇ ਜਿਨ੍ਹਾਂ ਦੇ ਜੇਬ 'ਚ ਕੈਸ਼ ਆ ਤੁਸੀਂ ਬੱਚੋ ਜਿਹੜੇ ਕੈਸ਼ ਕੰਮ ਕਰਨ ਵਾਲੇ ਨੇ ਟੈਕਸੀਆਂ ਵਾਲੇ ਨੇ ਜਾਂ ਹੋਰ ਜਿਨ੍ਹਾਂ ਦੇ ਜੇਬ ਦੇ ਵਿੱਚ ਮਾਇਆ ਰਹਿੰਦੀ ਆ ਖੁੱਲੀ ਜਿਹਦਾ ਕੋਈ ਚੈੱਕ ਆਉਂਦਾ ਉਹਨੂੰ ਤਾਂ ਪਤਾ ਬੈਂਕ 'ਚ ਜਮ੍ਹਾਂ ਹੋ ਗਿਆ ਐਨੇ ਪੈਸੇ ਜਮ੍ਹਾਂ ਹੋਣੇ ਚੋਂ ਖਰਚਣੇ ਨੇ ਕੈਸ਼ ਵਾਲਿਆਂ ਨੂੰ ਐ ਹੁੰਦਾ ਵੀ ਮੇਰਾ ਕਿਹੜਾ ਘਰੇ ਪਤਾ ਲੱਗਣਾ ਸ਼ੌਕ ਆ ਜਿਨ੍ਹਾਂ ਦੇ ਅਮੀਰ ਨੇ ਜਿਹੜੇ ਦੁਨੀਆ ਦੇ ਵਿੱਚ ਤੇਲਾਂ ਦੇ ਖੂਨ ਹੈ ਜਿਨ੍ਹਾਂ ਕੋਲ ਕਰੋੜਾਂ ਹੀ ਐ ਮੁੱਕਿਆ ਮੁੱਕ ਨੀ ਉਹ ਖੇਲੀ ਜਾਣ ਉਹ ਦਵੇ ਖੇਲਣ ਲੱਖ ਵੇਗਸ ਖੇਲ ਲੈਣ ਉਹ ਮਕਾਓ ਚਲੇ ਜਾਣ ਉਹ ਜਿੱਥੇ ਮਰਜ਼ੀ ਚਲੇ ਜਾ ਪਰ ਕੀੜੀ ਨੂੰ ਤਾਂ ਟੱਕਲੇ ਦਾ ਹੀ ਦਾਗ ਬਹੁਤ ਐ ਆਪਾਂ ਨਾ ਇਹ ਚੱਕਰ ਚ ਪਈਏ ਇਹ ਸਾਡੇ ਵਸ ਗੱਲਾਂ ਨਹੀਂ ਐਡਿਕਸ਼ਨ ਇਹਦੀ ਕੀ ਆ ਡਾਲਰ ਡਾਲਰ ਤੁਸੀਂ ਸ਼ੁਰੂ ਕਰਦੇ ਹੋ ਯਾਰ 50 5 ਡਾਲਰ 10 ਪੀਐਨਈ ਲੂਜ਼ ਕਰਦੇ ਹੋ ਕਹਿੰਦੇ 5 ਹੋਰ ਪਾ ਯਾਰ ਆ ਜਾਣ ਨੇ ਵਾਪਸ 5 ਹੋਰ ਪਾ ਲੈ 5 ਹੋਰ ਪਾ ਲੈ ਬੱਚਿਆਂ ਤੇ ਖਾਣ ਪੀਣ ਦਾ ਖਰਚਾ 100 ਡਾਲਰ ਹੁੰਦਾ ਤੇ 200 ਤੁਸੀਂ ਹਾਰ ਕਿਉਂਦੇ ਹੋ ਹੋਰ ਉੱਥੇ ਇਹਦੇ ਇਹਦੀ ਇਸ ਨੂੰ ਐਡਿਕਸ਼ਨ ਇੱਕ ਡਿਜ਼ੀਜ਼ ਦੇ ਤੌਰ ਤੇ ਰੋਗ ਦੇ ਤੌਰ ਤੇ ਇਸ ਕਰੋ ਜਿਵੇਂ ਕੋਈ ਨਸ਼ੇ ਦੀ ਐਡਿਕਸ਼ਨ ਇਸ ਤਰ੍ਹਾਂ ਇਹ ਐਡਿਕਸ਼ਨ ਇਸ ਤੋਂ ਔਰ ਇਸ ਇਲਾਜ ਹੈ ਮਦਦ ਮੰਗੋ ਤੱਬਰ ਨੂੰ ਕਹੋ ਲੋਕ ਮੈਨਾਂ ਕਹੋ ਪਰਿਵਾਰ ਟੁੱਟ ਰਿਹਾ ਹੈ ਜਦੋਂ ਪਤਾ ਲੱਗਾ ਡਾਲਰ ਲੱਖ ਹੈ ਨਹੀਂ ਘਰ 'ਚ ਘਰ ਦੇ ਪਰਿਵਾਰ ਦੇ ਵਿੱਚ ਪਤਾ ਨਹੀਂ ਪਰਿਵਾਰ 'ਚ ਕਲੇਸ਼ ਆ ਕਲੇਸ਼ ਤੋਂ ਬਾਅਦ ਗਲਤ ਧਾਰਨਾਵਾਂ ਜਨਮ ਲੈਦੀਆਂ ਤੇ ਪਰਿਵਾਰ ਟੁੱਟ ਰਹੇ ਨੇ ਇਸ ਗੱਲ ਤੋਂ ਕੁਝ ਘਟਨਾਵਾਂ ਲੇਟਲੀ ਮੈਨੂੰ ਪਤਾ ਲੱਗੀਆਂ ਜਿਹਦੇ ਚ ਲੱਖਾਂ ਡਾਲਰ ਕੋਈ ਬੰਦੇ ਹਾਰ ਗਏ ਲੱਖਾਂ ਹੀ ਬਚਤ ਰੱਖੋ ਆਪਣੇ ਆਪ ਮਾੜੇ ਬੰਦਿਆਂ ਤੋਂ ਪਰਹਰ ਰਹੋ ਜਿਹੜੇ ਬੰਦਿਆਂ ਦਾ ਪਤਾ ਹੈ ਭਾਈ ਚਾਰੇ ਚ ਤੁਰੇ ਫਿਰਦੇ ਆ ਉਹਨਾਂ ਤੋਂ ਉਹਨਾਂ ਨੂੰ ਕਹੋ ਨੇੜੇ ਨਿਆਂ ਲੱਗਣ ਤੋਂ ਉਹਨਾਂ ਬਹੁਤ ਉਹ ਤਾਂ ਖਾਂਦਾ ਖਾਂਦਾ 20 50 100 ਦਾ ਖਾਂਦਾ ਖਾਂਦਾ ਸਾਲਾਂ ਚ ਪਤਾ ਲੱਗੂ ਇਹ ਤਾਂ ਦਿਹਾੜੀਆਂ 'ਚ ਜਾਣਾ ਸੜਕ ਤੇ ਲਿਆ ਕੇ ਬਿਠਾ ਲੈਣਗੇ ਲੋਕ ਇਹਦਾ ਬਹੁਤ ਵੱਡਾ ਮਾੜਾ ਪ੍ਰਭਾਵ ਹੈ ਹੁਣ ਲੋਸ ਵੇਖ ਲੋਕ ਜਾਂਦੇ ਆ 5-400 ਡਾਲਰ ਦੇ ਵਿੱਚ ਤੁਹਾਨੂੰ 4 ਦਿਨ 5 ਦਿਨ ਇਹ ਫੇਰ ਰੋਟੀ ਪਾਣੀ ਵਿੱਚ ਰੂਹ ਮਗਲਾ ਕੱਲੋਂ ਉਹ ਤੁਹਾਨੂੰ ਲਿਉਂਦੇ ਆ ਉੱਥੇ ਵੀ ਆ ਜਾਓ ਉਹਨਾਂ ਨੂੰ ਪਤਾ 5-400 ਚ ਨਹੀਂ ਜਾਂਦੇ ਆ ਬਹੁਤ ਲੋਕ ਮਹੀਨੇ 2 ਮਹੀਨੇ ਵੱਧ ਪਰਿਵਾਰਾਂ ਨੂੰ ਲੈ ਕੇ ਜਾਂਦੇ ਫਿਕਸ ਕਰ ਲੈਂਦੇ ਆ ਵੀ ਸਾਡੇ ਆ 10 ਡਾਲਰ 20 ਡਾਲਰ 25 ਡਾਲਰ 40 ਵੱਧ ਜੇਬ ਚ ਪਾ ਕੇ ਨਹੀਂ ਲੈ ਜਾਂਦੇ ਕਿਉਂਕਿ ਉੱਥੋਂ ਸੀਟ ਤੋਂ ਉੱਠਣਾ ਬਹੁਤ ਔਖਾ ਜੂ ਆਜ ਤੇ ਜੂ ਖਾਨੇ ਦੇਖ ਕਿੰਨੇ ਮਹਿੰਗੇ ਹੋਟਲ ਤੇ ਬਿਲਕੁਲ ਭੂਤਾਂ ਦਾ ਸ਼ਹਿਰ ਆ ਉਹ ਦਿਨੇ ਉਹਦੇ ਚ ਦੇਖੋ ਨਿੰਗੋ ਟਰੱਕ ਲੈ ਕੇ ਨਿੰਗਦੇ ਰਹੇ ਡਰ ਲੱਗਦਾ ਪਹਾੜੀਆਂ ਜਿਹੜਾ ਰਾਤ ਨੂੰ ਚੱਕਾ ਚੌਂਦ ਤੇ ਉੱਥੋਂ ਦੁਨੀਆ ਦੀ ਇਹ ਐਸ਼ ਪ੍ਰਸਤੀ ਦੇ ਵਿੱਚ ਲੋਕ ਉੱਥੇ ਖਤਮ ਹੋ ਜਾਂਦੇ ਨੇ ਅਰਬਾਂ ਡਾਲਰ ਰਾਤੋਂ ਰਾਤ ਖਤਮ ਹੋ ਜਾਂਦਾ ਲਾਸ ਵੇ ਵਿੱਚ ਇਸ ਤਰ੍ਹਾਂ ਹੀ ਇੱਥੇ ਤੁਹਾਡੀ ਸਰੀਚੇ ਬਣ ਲੱਗਿਆ ਸੀ ਨਾ ਘਰੇ ਹੁੰਦੇ ਜੇ ਤੁਸੀਂ ਵਿੱਚੇ ਬਣ ਜਾਣਾ ਸੀ ਕਹਿੰਦੇ ਖੁੱਲੀ ਜਗ੍ਹਾ ਬਣਾਉਣਾ ਇਹ ਨਾਲ ਮਨੀ ਬਹੁਤ ਜਨਰੇਟ ਹੁੰਦੀ ਜਸਪ੍ਰੀਤ ਸਿੰਘ ਲਾਈਨ ਨੰਬਰ 3 ਹਾਂਜੀ ਮੈਂ ਜਿਹੜਾ ਤੁਹਾਡਾ ਪਹਿਲਾ ਵਿਸ਼ਣਾ ਉੱਤੇ ਆਉਂਦਾ ਇਹ ਜਿਹੜਾ ਨਾ ਬੰਬ ਧਮਾਕਾ ਕੀਤਾ ਇਹ ਖਾਲਸਤਾਨੀ ਅੱਤਵਾਦੀਆਂ ਨੇ ਕੀਤਾ ਹੁਣ ਉਹ ਇਸ ਤੋਂ ਬਚਣ ਲਈ ਹੇ ਹਾਂਜੀ ਸਾਡੀ ਬਦਨਾਮੀ ਨਾ ਹੋਵੇ ਉਹਦਾ ਦੋਸ਼ ਉਹ ਵੀ ਸਿੱੜ ਜੀ ਹੋਰ ਕਿਸੇ ਤੇ ਬਾਹਰ ਸਰਕਾਰ ਤੇ ਸਿੱੜ ਦਿਓ ਜਾਂ ਹੋਰ ਦੀ ਵੱਡੀ ਨਾਕਾਮਯਾਬੀ ਹੈ ਕਿ ਇੱਡਾ ਵੱਡਾ ਤਖ਼ਤ ਹੋ ਗਏ ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਇਸ ਦੀ ਕੋਡ ਆ ਜਿਹੜਾ ਦੋਸ਼ੀ ਫੜਿਆ ਉਹਨੂੰ ਸਿਆਣੀ ਨੀ ਦਵਾ ਸਕੀ ਨਾ ਹੀ ਬਾਕੀ ਦੋਸ਼ੀਆਂ ਤੱਕ ਪਹੁੰਚ ਸਕੀ ਆ ਸਭ ਕੁਝ ਇੱਥਾ ਕਰਾਇਆ ਖਾਲਸਥਾਨੀ ਯਤਵਾਦਿਆਂ ਦਾ ਬਸ ਹੁਣ ਇਹ ਸਾਡੇ ਤੋਂ ਦਬਾਰ ਮੇਟ ਜਾਵੇ ਇਹਦਾ ਕਿਹਦੇ ਦੋਸਤ ਦੇ ਵਾ ਇਹ ਕੀਤਾ ਇਹਨਾਂ ਨੇ ਹੱਲਸਾਨੀਅਤ ਵਧੀਆਂ ਨਹੀਂ ਕੀਤਾ ਪਹਿਲਾਂ ਵੀ ਉਸਦੀ ਬਥੇਰਾ ਗੱਲ ਸਿਸਟਮ ਕੇ ਉਹ ਦਿੱਤਾ ਗਲਤ ਇਹ ਸਿਸਟਮ ਗਲਤ ਵਾ ਇਥੋਂ ਦਾ ਉਹ ਕਿਉਂ ਨਹੀਂ ਫੜਿਆ ਫਿਰ ਦੋਸ਼ੀ ਕੌਣ ਆ ਦੋਸ਼ੀ ਕੌਣ ਆ ਦੋਸ਼ੀ ਦੋਵੇਂ ਆ ਅੱਤਵਾਦੀ ਵੀ ਦੋਸ਼ੀ ਆ ਸਿਸਟਮ ਵੀ ਦੋਸ਼ੀ ਆ ਜਿਹਨੇ ਛੱਡਿਆ ਬਿਲਕੁਲ ਯਾਰ ਇੱਕ ਬੰਦਾ ਜਿਹੜਾ ਅੰਦਰ ਫੜਿਆ ਉਹ ਉਹਨੂੰ ਵੀ ਉਹ ਕੰਫੈਸ ਕਰਾਇ ਨਹੀਂ ਸਕੇ ਉਹਨੇ ਕੁਝ ਨਹੀਂ ਦੱਸਿਆ ਤੇ ਫੇਰ ਉਹੀ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਖਾਲਸਥਾਨੀਆਂ ਨੂੰ ਬਰੀ ਕਰ ਦਈਏ ਮੈਂ ਸਿੰਘ ਦੀ ਜਦੋਂ ਦੋਸ਼ ਉਹਦੇ ਤੇ ਸਿੱਧ ਨਹੀਂ ਹੋਏ ਉਹਨੂੰ ਕਹਿ ਵੀ ਨਹੀਂ ਆਪਾਂ ਸਕਦੇ ਉਹਨੇ ਆਪ ਗਲਤੀ ਪਲੀ ਕੀਤਾ ਮੈਂ ਸਲਾਟਰਰ ਦਾ ਉਹਦੇ ਬਾਅਦ ਉਹ ਝੂਠ ਸੌ ਚੱਕ ਕੇ ਝੂਠ ਬੋਲਿਆ ਅੰਦਰ ਪਰ ਜਿਹੜੀ ਉਹਨਾਂ ਦਾ ਵਾਦਾ ਮਾਫ ਗੁਆ ਬਣਿਆ ਬੰਦੇ ਮ ਮ ਬਾਦਾਂ ਮਾਫ ਗੁਆ ਬਣ ਤੋਂ ਬਾਦੋਂ ਫੇਰ ਮੁੱਕਰ ਗਿਆ ਉਹਨੂੰ ਫੇਰ ਸਜ਼ਾ ਹੋ ਗਈ। ਯਸ ਉਸ ਸਮੇਂ 84 ਦੇ ਵਿੱਚ ਦਰਦ ਸੀ ਪਰ ਇਹਦੇ ਵਿੱਚ ਤੁਸੀਂ ਖਾਲਸਤਾਨੀ ਅਤਵਾਦੀ ਜਾਂ ਇਹ ਜਿਹੇ ਇਹ ਲਕਬ ਨੇ ਜਿਹੜੇ ਇਹ ਨਹੀਂ ਹੈ ਸਿੱਧੇ। ਕਿਉਂਕਿ ਉਹ ਉਸ ਸਮੇਂ ਇੰਦਰਜੀਤ ਸਿੰਘ ਰਿਆਦ ਦਾ ਕਿਸੇ ਮੂਵਮੈਂਟ ਦੇ ਵਿੱਚ ਕੋਈ ਹਿੱਸਾ ਨਹੀਂ ਸੀ ਠੀਕ ਹੈ ਆਮ ਲੋਕਾਂ ਦੀ ਭੀੜ ਦੇ ਵਿੱਚ ਉਹ ਹੁੰਦਾ ਸੀ। ਜਿਵੇਂ ਸਾਰੇ ਹੀ ਸੀ। ਉਸ ਸਮੇਂ ਜੇ ਹੁਣ ਦੇਖਿਆ ਜਾਈਏ ਡਾਊਨ ਟਾਊਨ ਵੈਨਕੂਵਰ ਦੇ ਸਭ ਤੋਂ ਵੱਡਾ ਮਜਾਰਾ ਹੋਇਆ ਉਹ ਮਜਾਰੇ ਦੇ ਵਿੱਚ ਕੀ ਉਹ ਸਾਰੇ ਹੀ ਖਾਲਿਸਤਾਨ ਮੰਗਣ ਵਾਲੇ ਲੋਕ ਸੀ ਨਾ ਉਹ ਦੁੱਖ ਸੀ ਉਹਨਾਂ ਨੂੰ ਵੀ 84 ਦੇ ਸਾਡੀ ਜਗ੍ਹਾ ਤੇ ਹਮਲਾ ਕੀਤਾ ਉਹਦੇ ਲਈ ਸਾਰੇ ਧਾਕੇ ਆਏ ਹੋਏ ਸੀ ਬੁਰਾ ਹਾਲ ਦੇਖਿਆ ਤੁਹਾਨੂੰ ਵੀਡੀਓ ਦੇਖਿਓ ਤੁਸੀਂ ਜੇ ਉਹਰੇ ਹੋਮੋ ਨਹੀਂ ਤਾਂ ਹੁਣ ਵੇਖ ਲਿਓ ਇੰਨੇ ਲੋਕ ਖਾਲਿਸਤਾਨ ਮੰਗਣ ਵਾਲੇ ਨਹੀਂ ਸੀ ਉਹ ਆਪਣੇ ਮੁਕੱਦਸ ਸਥਾਨ ਤੇ ਭਾਰਤੀ ਹਮਲੇ ਤੇ ਫੌਜ ਦੇ ਹਮਲੇ ਤੋਂ ਦੁੱਖ ਦੇ ਵਿੱਚ ਆਏ ਸੀ ਹੁਣ ਇੰਦਰਜੀਤ ਸਿੰਘ ਰਿਆਤ ਨੂੰ ਸਜ਼ਾ ਹੋਈ ਹੈ ਉਹਨੂੰ ਉਹਨੇ ਅੱਜ ਨੈਸ਼ਨਲ ਪੋਸਟ ਨੇ ਸਿਕਟੈਰਿਸ ਲਿਖਿਆ ਪਰ ਉਹ ਸ਼ਬਦ ਸਹੀ ਨਹੀਂ ਹੈ ਹਲ ਸਟਾਰ ਨਾਰੋਬਾ ਨਾ ਦੇਣਾ ਸੀ ਕੋਈ ਇਹਦੇ ਤੇ ਵੀ ਮੈਨੂੰ ਡਾਊਟ ਆ ਕਿਤੇ ਉਹਨੇ ਕੋਈ ਗੱਲ ਕਹੀ ਹੋਵੇ ਜਾਂ ਨਹੀਂ ਕੋਈ ਉਹ ਕੋਈ ਉਹਦਾ ਵੈਨ ਜਿਹਦੇ ਤੇ ਉਹਨੇ ਮੰਨਿਆ ਹੋਵੇ ਪਰ ਕੁਝ ਨਾ ਕੁਝ ਤਾਂ ਇਹਦੇ ਲੁਕਿਆ ਹੋਇਆ ਪਿੱਛੇ ਜਿਹੜਾ ਸਾਹਮਣੇ ਨਹੀਂ ਆ ਸਕਦਾ ਜੇ ਇਹੀ ਮੈਂ ਗੱਲ ਮੁੜ ਕੇ ਕਹਿਣਾ ਚਾਹੁੰਦਾ ਸੀ ਹਰਮਿੰਦਰ ਸਿੰਘ ਜੀ ਲਾਈਨ ਨੰਬਰ 3 ਹੀ ਹਰਮਿੰਦਰ ਸਿੰਘ ਜੀ ਲਾਈਨ 3 ਹਾਂਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਵੀਰ ਜੀ ਮੈਂ ਉਹ ਕਹਿਣਾ ਸੀ ਜਿਹੜੇ ਟਾਈਟਲ ਵਰਗੇ ਆ ਉਹ ਦੇਖੋ ਅਤਵਾਦੀ ਹੈਗੇ ਆ ਉਹਨਾਂ ਨੂੰ ਕੋਈ ਅਤਵਾਦੀ ਨਹੀਂ ਕਹਿ ਰਿਹਾ ਜਿਹੜੇ ਸੰਘਰਸ਼ ਕਰਦੇ ਉਹਨਾਂ ਨੂੰ ਅਤਵਾਦੀ ਕਹਿੰਦੇ ਆ ਸੇ ਠੀਕ ਨਹੀਂ ਹੈਗੇ ਲਵਜੇ ਵੀ ਬੋਲ ਕੇ ਗਿਆ ਲਵਜੇ ਨੂੰ ਕਹਿ ਕੇ ਦੇਖਣ ਨਾ ਜਿਹੜੇ ਬਿਲਕੁਲ ਜੀ ਉਹ ਬਹੁਤ ਬੰਬ ਤਮਾਕੇ ਦੇ ਵਿੱਚ ਕਰਨਲ ਆ ਉਹ ਕਰਨਲ ਪ੍ਰੋਹਤੇ ਕਹਿੰਦੇ ਉਹਨੂੰ ਅੱਤਵਾਦੀ ਪ੍ਰੋਹਤ ਨਹੀਂ ਕਹਿੰਦੇ ਉਹ ਸਾਧ ਹੈ ਉਹਨੂੰ ਅੱਤਵਾਦੀ ਨਹੀਂ ਕਹਿੰਦੇ ਬਿਲਕੁਲ ਇੰਡੀਆ ਬਿਲਕੁਲ ਜੀ ਬਿਲਕੁਲ ਇਹ ਇਹ ਠੀਕ ਹੈ ਗੱਲ ਜੇ ਤੁਸੀਂ ਕਿਸੇ ਨੂੰ ਮਾਰਨ ਵਾਲੇ ਨੂੰ ਅੱਤਵਾਦੀ ਕਹਿੰਦੇ ਹੋ ਫਿਰ ਤਾਂ ਟਾਈਟਲ ਰੋਣੀ ਵੀ ਅੱਤਵਾਦੀ ਭਗਤ ਵੀ ਅੱਤਵਾਦੀ ਹੈ ਫਿਰ ਤਾਂ ਜਿਨ੍ਹਾਂ ਨੇ ਸ਼੍ਰੀ ਸੱਜਣ ਕੁਮਾਰ ਲਲਿਤ ਮਾਕਾ ਨੇ ਸਾਰੇ ਆਹੀ ਸੀ ਬੰਦੇ ਕੋਹ ਕੋਹ ਕੇ ਮਾਰੇ ਤੇ ਸ਼੍ਰੀ ਸੀ ਉਹਨਾਂ ਨੂੰ ਕਿਹੜੀ ਨਿਗਾ ਚ ਖੜਾ ਕੇ ਰੱਖੋਗੇ ਅਵਤਾਰ ਸਿੰਘ ਜੀ ਲਾਈਨ ਅਪ 4 ਸਤਸ਼ਿਕਾ ਗਰਵਾਲ ਸਾਹਿਬ ਸਤਸ਼ਿਕਾ ਬਾਈ ਜੀ ਅ ਗੈਸ ਆਲਰੇਡੀ ਗੈਂਬਲਿੰਗ ਵਾਲੀ ਆ ਇਟ ਇਜ਼ ਕਾਫੀ ਇਸ਼ੂ ਆ ਮੇਰਾ ਆਪਣਾ ਇੱਕ ਬਹੁਤ ক্লোਜ਼ ਜਾ ਕੇ ਤਾਂ ਉਹਨੇ ਇੱਕ ਵਾਰੀ ਮੇਰੇ ਤੋਂ ਮੈਨੂੰ ਕਹਿੰਦਾ ਕਹਿੰਦਾ ਮੈਨੂੰ ਪੈਸੇ ਚਾਹੀਦੇ ਮੈਨੂੰ ਨਾ ਫਰੈਂਡ ਨੂੰ ਮੈਂ ਕੋਈ ਨਹੀਂ ਦੱਸ ਕਿੰਨੇ ਚਾਹੀਦੇ ਆ ਤਾਂ ਇੰਨੇ ਵੀ ਚੱਕ ਲੈ ਜਿਵੇਂ ਮੈਂ ਚੈੱਕ ਲਿਫਟ ਕੋਈ ਚੱਕਰ ਨਹੀਂ ਮੋੜ ਕੇ ਇੱਕ ਵਾਰੀ ਫੇਰ ਮੋੜ ਕੇ ਮੰਗੇ ਮੈਂ ਤੇ ਚੱਕ ਦੀਆਂ ਚ ਰੁਕੇ ਲੋਡ ਹੁੰਦੀ ਬੰਦੇ ਨੂੰ ਆਪਾਂ ਜਦੋਂ ক্লোਜ਼ ਫਰੈਂਡ ਨੂੰ ਪਹੁੰਚਦੇ ਵੀ ਨਹੀਂ ਕਿੱਥੇ ਚਾਹੀਦੇ ਬਿਲਕੁਲ ਸਾਨੂੰ ਹੋ ਗਿਆ ਸਿੰਘ ਜੀ ਤੁਹਾਡੀ ਲਾਈਨ ਕੱਟੀ ਗਈ ਪਹਿਲਾਂ ਵੀ ਗਲਤੀ ਨਾਲ ਕੱਟੀ ਗਈ ਮੈਨੂੰ ਲੱਗਦਾ ਕੁਲਵੰਤ ਸਿੰਘ ਜੀ ਲਾਈਨ ਨੰਬਰ 5 ਸਤਿਕਾਰ ਜੀ ਸਤਿਕਾਰ ਜੀ ਹਾਂ ਜੀ ਮੈਂ ਪਿੱਛੇ ਦੇ ਵਿੱਚ ਗੱਲ ਕਰਨੀ ਚਾਹਾਂ ਦਾ ਜਿਹੜੇ 에어 ਇੰਡੀਆ ਬਾਰੇ ਅੱਜ ਇਹਦਾ ਭਾਈ ਸਾਹਿਬ ਬੋਲ ਕੇ ਹੱਦਿਆ ਮੈਨੂੰ ਲੱਗਦਾ ਪਈ ਕੱਲ ਆਇਆ ਕੱਲ ਦਾ ਮਤਲਬ 20 ਸਾਲ ਦਾ ਆਇਆ ਇਹਨੂੰ ਬੜਾ ਪਤਾ ਨਹੀਂ ਹੈਗਾ ਮੈਂ 40 45 ਸਾਲ ਤੋਂ ਇੱਥੇ ਰਹਿੰਦਾ ਹਾਂ ਸਾਰਾ ਕੁਝ ਦੇਖ ਰਿਹਾ ਸੁਣ ਰਿਹਾ ਅਖਬਾਰ ਪੜ੍ਹ ਰਿਹਾ ਸਾਰਾ ਕੁਝ ਦੇਖ ਰਿਹਾ ਪਹਿਲੀ ਗੱਲ ਹੈ ਕੀਤਾ ਤੇ 2 ਮਿਲੀਅਨ ਡਾਲਰ ਮਲਕ ਸਾਹਿਬ ਨੂੰ ਸਟੇਟ ਬੈਂਕ ਆਫ ਇੰਡੀਆ ਨੇ ਕਿਉਂ ਦਿੱਤਾ ਜਦੋਂ ਇਹਨਾਂ ਨੇ ਦੰਬੋਤ ਟੈਸਟ ਕੀਤਾ ਡੰਕਾਂ ਦੇ ਵਿੱਚ ਤਲਵਿੰਦਰ ਸਿੰਘ ਦੇ ਨਾਮ ਰਿਆਪਨਾ ਤੇ ਜਿਹੜਾ ਸੀਆਈਡੀ ਦਾ ਅਫਸਰ ਮਗਰ ਲੱਗਿਆ ਸੀ ਉਹਨੇ ਉਹਦੇ ਪ੍ਰੂਫ ਲੈ ਕੇ ਉਹਨਾਂ ਦੇ ਕੇ ਤੇ ਮੈਂ ਇਹਨਾਂ ਦਾ ਕੇਸ ਦੋ ਵਾਰੀ ਛੁਣਨ ਲਿਆ ਬੈਂਕੂਵਰ ਜਦੋਂ ਇਹਨਾਂ ਦੇ ਚੱਲਿਆ ਦੋਨੇ ਵਾਰੀ ਜੰਮੀ ਵੱਖਰੇ-ਵੱਖਰੇ ਦਿਨ ਗਿਆ ਬਸ ਇੰਡੋ ਕਨੇਡਾ ਅਖਬਾਰ ਵੀ ਨਿਊਜ਼ਾਂ ਦੀ ਗੱਲ ਕਰ ਜਾਂਦੇ ਤੇ ਦੱਸੋ ਇੰਡੋ ਕਨੇਡਾ ਅਖਬਾਰ ਨੂੰ ਜੇ ਪਤਾ ਵੀ ਹੋਗਾ ਮਾਣਾ ਮੋਟਾ ਉਹਦੇ ਤੇ ਤੁਸੀਂ ਕੀ ਕਰਦੇ ਜਦੋਂ ਤੁਹਾਡੀ ਪੁਲਿਸ ਐਂਡ ਇਨਵੈਸਟੀਗੇਸ਼ਨ ਐ ਉਹ ਕਿੱਥੇ ਆ ਉਹਦਾ ਪਰੂਫ ਲਿਆ ਬਿਲਕੁਲ ਦੂਸਰੀ ਗੱਲ ਇਹ ਹੈਗੀ ਆ ਤੇ ਇਹ ਆਪਣੇ ਮਾਲਕ ਸਾਹਿਬ ਤੇ ਆਪਣੇ ਉਦਲ ਸਾਜ ਜੇ ਖਾਲਸਤਾਨੀ ਸੀਗੇ ਇਹ ਆਤਵਾਂ ਉਹ ਰੈਡੀਓ ਤੋਂ ਗੋਹ ਰਹੇ ਹੁੰਦੇ ਤੁਸੀਂ ਨੇ ਕਿ ਨਾਨ ਨੇ ਕੀਤਾ ਹਾਂ ਸਾਡੇ ਬੰਦੇ ਨੇ ਕੀਤਾ ਮੁਰਤੇ ਇਸੇ ਇਸੇ ਗਵਰਨਮੈਂਟ ਨੇ ਉਹਨੂੰ ਗ੍ਰਿਫਤਾਰ ਕੀਤਾ ਇਹ ਗੱਲ ਵੱਖਰੀ ਆ ਨਹੀਂ ਦੂਜਾ ਹੋਇਆ ਮਤਲਬ ਉਹ ਹੋਇਆ ਤੀਸਰੀ ਗੱਲ ਇਹ ਹੈ ਜੇ ਇਹ ਹੱਤਵੰਦੀਆਂ ਨੇ ਕੀਤਾ ਉਹਨਾਂ ਨੂੰ ਇੱਕ ਰਾਤ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਸਵੇਰ ਨੂੰ ਬਰੀ ਹੋ ਜਾਣਾ ਜਿਹਨਾਂ ਨੇ ਬਰੀ ਹੋਏ ਦੋ ਬੰਦੇ ਸੋਇਸ ਕਰਕੇ ਲੋਕਾਂ ਨੂੰ ਪਤਾ ਹੈ ਨਹੀਂ ਇਹ ਸਾਰੇ ਕੰਮ ਜਾਂਚੀਆਂ ਦੇ ਗਵਰਨਮੈਂਟਾਂ ਦੇ ਆ ਜਿਸ ਹਜ਼ਾਰ ਬੰਦੇ ਨੇ ਕੀਤਾ ਹੁਣ ਕਦੋਂ ਦੇ ਫੜ ਕੇ ਅੰਦਰ ਹੋਣੇ ਸੀ ਥੈਂਕ ਯੂ ਜੀ ਹਰਦੀਪ ਸਿੰਘ ਜੀ ਲਾਈਨ ਨੰਬਰ 4 ਹਾਂਜੀ ਗਿਲ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਗਿਲ ਸਾਹਿਬ ਇਹ ਜਦੋਂ ਇਹ ਘਟਨਾ ਕੈਨੇਡਾ ਦੀ ਹੋਈ ਆ ਪਲੇਨ ਕ੍ਰੈਸ਼ ਵਾਲੀ ਤੇ ਅਸੀਂ ਇੰਡੀਆ ਹੁੰਦੇ ਸੀ ਚਲੋ ਥੋੜਾ ਬਹੁਤਾ ਇਸ ਖੇਤਰ ਦੇ ਨਾਲ ਜੁੜੇ ਹੋਣ ਕਰਕੇ ਇਸ ਪੱਤਰਕਾਰੀ ਦੇ ਨਾਲ ਤੇ ਕਾਫੀ ਉੱਥੇ ਬਹਿ ਕੇ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਬਾਕੀ ਫੋਨ ਕਾਲਾਂ ਕਰਕੇ ਜਾਂ ਰੇਡੀਓ ਸੁਣ ਕੇ ਜਿੰਨਾਂ ਕੋ ਉਸ ਵੇਲੇ ਮਾਧਿਅਮ ਸੀਗਾ ਤੇ ਅਸੀਂ ਵੀ ਮਤਲਬ ਇਹਦੇ ਬਾਰੇ ਚ ਖੋਜ ਕਰਦੇ ਰਹੇ ਪਰ ਗੱਲ ਇਹ ਆ ਜੀ ਜੋ ਮਤਲਬ ਅਸੀਂ ਵੇਖਿਆ ਆ ਜਾਂ ਜਿਵੇਂ ਕਿਵੇਂ ਵੀ ਹੁਣ ਤੱਕ ਵੀ ਇਹ ਸਮਝ ਆਉਂਦੀ ਆ ਕਿ ਕਹਿੰਦੇ ਕੋਈ ਬਦ ਨਾਲੋਂ ਬਦਨਾਮ ਬੁਰਾ ਉਸ ਵੇਲੇ ਸਿੱਖ ਜਥੇਬੰਦੀਆਂ ਚਾਹੇ ਉਹ ਬਦਨਾਮ ਹੋ ਗਈਆਂ ਸੀ ਚਾਹੇ ਕਰ ਗਈਆਂ ਸੀ ਕਰ ਦਿੱਤੀਆਂ ਗਈਆਂ ਸੀ ਵੀ ਇਹ ਬੰਦਿਆਂ ਨੂੰ ਮਾਰਦੇ ਆ ਇਹ ਕਰਦੇ ਆ ਉਹ ਕਰਦੇ ਆ ਇਸ ਆੜ ਦੇ ਵਿੱਚ पता ਨਹੀਂ ਉਹ दाल आ गया ਆ नहीं एक ਨਹੀਂ ਇੱਕ ਪੱਤਰਕਾਰ ਹੁੰਦੇ ਸਾਡੇ ਕਾਫੀ ਸੀਨੀਅਰ ਹੁੰਦੇ ਵਿਚਾਰੇ ਚਲਾਣਾ ਕਰ ਗਏ ਆ ਉਹਨਾਂ ਦੀ ਇਹ ਗੱਲ ਹੁੰਦੀ ਸੀ ਵੀ ਜਿਹੜੀ ਇਹ ਟੈਕੀਕਾਂ ਸਿਰਫ ਇਸ ਗੱਲ ਤੇ ਹੀ ही ਆ ਵੀ ਇਹ ਕੰਮ ਸਿੱਖਾ ਨਹੀਂ ਕੀਤਾ ਇਸ ਨੇ ਉਹ ਉਸ ਸੋਚ ਨੂੰ ਜਾਂ ਉਸ ਇੰਟੈਰੋਗੇਸ਼ਨ वो ਕਹਿੰਦਾ ਹੈ ਵੀ ਸਿੱਖਾਂ ਦੇ ਵਿੱਚ ਜੇ ਸਿੱਖ ਦੁਖੀ ਸੀ ਅਕਾਲ ਤਖਤ ਦੇ ਟੈਗ ਤੇ ਜਾਂ ਇੰਦਰਾ ਤੋਂ ਮਰਨ ਤੋਂ ਬਾਅਦ ਜਿਹੜੇ ਸਿੱਖਾਂ ਨਾਲ ਹੋਇਆ ਸੀ ਤੇ ਕਹਿੰਦਾ ਵੀ ਫਿਰ ਕੇ ਪੀਐਸ ਗਿੱਲ ਵੀ ਸਿੱਖ ਸੀ ਮਤਲਬ ਜਿੱਦਾਂ ਹਜ਼ਾਰਾਂ ਸਿੱਖ ਪੁਲਿਸ ਪੁਲਿਸ ਅਫਸਰ ਜਿਹੜੇ ਕੈਟ ਬਣ ਕੇ ਸਿੱਖਾਂ ਨੇ ਮਤਲਬ ਸਿੱਖ ਜਿਹੜੇ ਉਸ ਵੇਲੇ ਆਈਪੀਐ ਅਫਸਰ ਸੀ ਜਿਨ੍ਹਾਂ ਨੇ ਜਿਆਦਾ ਜਵਾਨੀ ਦਾ ਕਹਾਣ ਕੀਤਾ ਸੀ ਉਹਨਾਂ ਦੇ ਵਿੱਚ 1000 ਆਲਮ ਹੀ ਸੀ ਐਸਾ ਬੰਦਾ ਜਿਹੜਾ ਗੈਰ ਸਿੱਖ ਸੀ ਬਾਕੀ ਤੇ ਤਕਰੀਬਨ 70% ਸਿੱਖ ਪੁਲਿਸ ਅਫਸਰ ਸੀ ਜਿਹੜੇ ਸਿੱਖਾਂ ਨੂੰ ਮਾਰਦੇ ਪਏ ਸੀ ਸਭ ਤੋਂ ਪਹਿਲਾਂ ਇਨਸਾਨ Hindu ਜਾਂ ਸਿੱਖ ਜਾਂ ਮੁਸਲਮਾਨ ਜਾਂ ਇਸਾਈ ਬੋਧੀ ਜੈਨੀ ਬਾਅਦ ਚ ਪਹਿਲਾਂ ਉਹ ਇਨਸਾਨ ਹੈ ਜਿਹੜਾ ਬੰਦਾ ਇਨਸਾਨੀਅਤ ਭੁੱਲ ਜਾਂਦਾ ਉਹਦੇ ਵਾਸਤੇ ਉਹਦੇ ਚ ਸਿੱਖ ਮਾਰ ਰਿਹਾ ਜਾਂ ਹਿੰਦੂ ਮਾਰ ਰਿਹਾ ਜਾਂ ਕੌਣ ਮਾਰ ਰਿਹਾ ਤੇ ਇਹ ਹੁਣ ਕਹਾਣੀ ਐਸੀ ਗੱਲ ਨਹੀਂ ਕਿ ਵੀ ਇਹ ਨਿਕਲਣੀ ਨਹੀਂ ਗੱਲ ਨਿਕਲੇਗੀ ਭਾਵੇਂ 10 ਸਾਲ ਠਹਿਰ ਕੇ ਨਿਕਲਾਵੇ ਤੁਸੀਂ ਪੁਰਾਣਾ ਇਤਿਹਾਸ ਵੇਖ ਲਓ ਵੀ ਹਿਟਲਰ ਨੂੰ ਕਿਉਂ ਇੰਨਾ ਕੁਝ ਕਰਨਾ ਪਿਆ ਜਿਹੜਾ ਉਹਨੇ ਜਿੰਨਾ ਘਾਣ ਮਨੁੱਖਤਾ ਦਾ ਇਹ ਗੱਲ ਬਾਅਦ ਚ ਨਿਕਲੀ ਸੁਭਾਸ਼ ਚੰਦਰ ਬੋਸ ਹੈਗਾ ਕਿ ਨਹੀਂ ਹੈਗਾ ਇਹ ਵੀ ਗੱਲ ਨਿਕਲ ਆਈ ਸੰਤ ਜਰਨੈਲ ਸਿੰਘ ਭਿੰਡਰਾਲੇ ही ਕਹਿੰਦੇ ਸੀ ਵੀ ਪਾਕਿਸਤਾਨ ਚਲੇ ਗਏ ਉਹਨਾਂ ਦੀ ਸ਼ਹੀਦੀ ਵੀ ਬਾਅਦ ਚ ਉਹਨਾਂ ਦੀ ਚਲੋ ਭਾਨੇ ਸ਼ਹਾਦਤ ਤੋਂ 20 ਸਾਲ ਬਾਅਦ ਚ ਕਨਫਰਮ ਹੋਈ ਹੋ ਗਈ ਗੱਲ ਨਿਕਲ ਆਏਗੀ ਪਰ ਨਿਰਪੋਰਾ ਜਿਹੜਾ ਇਹਨੂੰ ਇੱਕ ਪਾਸੇ ਜੋੜ ਕੇ ਵੇਖਣ ਵਾਲੀ ਗੱਲ ਨੇ ਇਹ ਭੀੜਤਾ ਨੂੰ ਇਨਸਾਫ ਨਹੀਂ ਬਾਜੀ ਮੇਰੇ ਖਿਆਲ ਸਮਾਂ ਘਟਾ ਮੇਰੇ ਕੋਲ ਥੋੜੀ ਸਾਫ ਪਲੀਜ਼ ਓਕੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹਰਨ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਜੀ ਸਤਿ ਨਾ ਇਹ ਚੀਜ਼ ਨਹੀਂ ਸਾਡੇ ਜਿਹੜੇ ਆਦਮੀ ਹੈ ਜਿਹਨਾਂ ਕੈਸ਼ ਉਹੀ ਇਹ ਕੰਮ ਕਰਦੇ ਆ ਇਹ ਬੁੜੀਆਂ ਬਹੁ ਕਰਦੀਆਂ अच्छा जी ये जा जाके जाके देखो फिर पता लगता आदमी ज्यादा है कि बुढ़िया ज्यादा है नहीं भी कोई बात सर धन्यवाद जी 5 नंबर 3 हेलो सची ओल्ड सची काल जी जला, जला अभी भाई मैं इतना लगे जब ਉਨੀ ਆਪਣੇ ਬਾਪੂ ਸੂਰ ਸਿੰਘ ਦੇ ਜੁਆਇਸ ਦੀ ਸਟਰਵਿੰਗ ਹੋਈ ਸੀ ਉਹਦਾ ਵੀ ਮੇਰਾ ਖਿਆਲ ਕਿਸੇ ਨੇ ਨਾ ਹੀ ਵੀ ਕਰਾ ਤੇ ਮੇਰਾ ਖਿਆਲ ਇਹ ਜਿਹੜੀ ਗਵਰਨਮੈਂਟ ਵਿੱਚ ਤੁਹਾਨੂੰ ਲੱਗਦਾ ਵੀ ਐਗਰੀਮੈਂਟ ਜਿੱਥੇ ਇਹ ਨਹੀਂ ਕਰਨ ਜੋ ਧੰਨਵਾਦ ਜੀ ਵਪਾਰਕ ਸੰਦੇਸ਼ ਉਸ ਤੋਂ ਬਾਅਦ ਕਹਾਣੀ ਦਾ ਦਿਨ ਆ ਜੀ ਮੈਂ ਤਾਂ ਭੁੱਲੇ ਗਿਆ 1:25 ਮਿੰਟ ਹੋ ਗਏ ਜੀ ਬਾਅਦ ਜੇ ਸਮਾਂ ਹੋਇਆ ਸਿਰ ਕੌਲ ਕਰ ਲਿਓ ਹਰਦਰਮਾਨ ਜੀ ਅੱਜ ਗੱਲ ਕਰਦੇ ਆਂ ਵਪਾਰਕ ਸੰਦੇਸ਼ ਕਿਰਪਾਲ ਸਿੰਘ ਕਜ਼ਾਕ ਦੀ ਕਹਾਣੀ ਉਤਾਰ ਹਰੇਕ ਸ਼ਾਂਗੇ ਜੋਤੇ ਦੀ ਦੂਜੀ ਰੌਹਲ ਮੱਲੀ ਤੇ ਜਗਰੂਪ ਤੇ ਮਾਂ ਆ ਗਏ ਹੰਡਾਲੀ ਪਹਿਲੀ ਵਿੱਚ ਹੀ ਛਾਡੋ ਬਲਦ ਛਾਵੇਂ ਬੰਨ ਲਿਆ ਤਿੰਨੇ ਖੂ ਤੇ ਆ ਬੈਠੇ ਹਰ ਬਾਰ ਮਾਂ ਜਿਸ ਤਰ੍ਹਾਂ ਲੈ ਕੇ ਆਉਂਦੀ ਸਬਜ਼ੀਆਂ ਚੌਲ ਚਾਰ ਕੜਾ ਖਾਸਾ ਕੁਝ ਜਗਰੂਪ ਪਰ ਇਹ ਗੇੜਾ ਮਾਂ ਚਲ ਗਿਆ ਮਾਂ ਨੇ ਨੇਕ ਨੂੰ ਖਵਾਈ ਤੇ ਜਗਰੂਪ ਦੇ ਆਉਣ ਤੋਂ ਪਹਿਲਾਂ ਨੇਕ ਦਾ ਕਿਹਾ ਜਦੋਂ ਜੀ ਕਰੇ ਸ਼ਹਿਰ ਮਾਰਿਆ ਕਰ ਗੇੜਾ ਸੱਤਿਆ ਉਹਦੀ ਸਕੀ ਮਾਸ ਹੀ ਜਗਰੂਪ ਮਤੇ ਆਪਰਾ ਪਰ ਸੀ ਸੱਤਿਆਂ ਤੋਂ ਬਾਅਦ ਜਗਰੂਪ ਸ਼ਹਿਰ ਨੌਕਰੀ ਕਰਦਾ ਹਨੇਕ ਆਪਣੇ ਸਿਆੜਾਂ ਦੇ ਨਾਲ ਨਾਲ ਜਗਰੂਪ ਦੇ ਦੋ ਕਿਲਿਆਂ ਦੀ ਵਾਹੀ ਕਰਦਾ ਜਗਰੂਪ ਹਨੇਕ ਨਾਲ ਕਦੇ ਕਦੇ ਨਾਲ ਕਦੇ ਹਿੱਸੇ ਠੇਕ ਦੀਆਂ ਗਿਣਤੀਆਂ ਚ ਨਹੀਂ ਪਿਆ ਜਗਰੂਪ ਨੂੰ ਨੇੜੇ ਆਉਂਦਾ ਵੇਖ ਕੇ ਸੱਤੇ ਨੇ ਜਗਰੂਪ ਦੇ ਕੁਝ ਪੈਂਟਾਂ ਕਮੀਜ਼ਾਂ ਝੋਲੇ ਚੋਂ ਕੱਢ ਨੇਕ ਵੱਲ ਸਿਕਰਾਉਂਦੇ ਸਿਕਰਾਉਂਦੇ ਕਿਹਾ ਨਮੀਆਂ ਹੀ ਨੇ ਬਸ ਕੋੜੀ ਦੇ ਰੰਗ ਹੀ ਚੜ ਗਏ ਮਨੋਂ ਜਗਰੂਪ ਨੇੜੇ ਆ ਗਿਆ ਹਰ ਬੇਰਵਾਂਗ ਬੋਲਿਆ ਬਹੁਤਾਂ ਦਾ ਖਪਿਆ ਕਰਨੇ ਇੱਕ ਜਿਆਦਾ ਕੰਮ ਹੋਵੇ ਤਾਂ ਆਵਤ ਪਾ ਲਿਆ ਕਰ ਜੱਟ ਦੀ ਜੂਨ ਐ ਬਾਈ ਮਿੱਟੀ ਤੱਕ ਕਹਿੰਦੀ ਮਿੱਟੀ ਹੋ ਮੇਰੇ ਨਾਲ ਤਾਂ ਪੱਲੇ ਪਾਉ ਕੁਛ ਕੋਈ ਨਾ ਪੁੱਤ ਬਠੇਰੇ ਸੁੱਖ ਨਾਲ ਪੱਲੇ ਤੂੰ ਕਿਉ ਸੰਸਾ ਕਰਦਾ ਐ ਦੇ ਨਾਲ ਹੀ ਨੀਖ ਨੇ ਮੱਚ ਕੇ ਜਿਹੜੀ ਭਾਬੀ ਜਿਹੜੀ ਭੱਲੇ ਚੋਂ ਕੱਢ ਕੇ ਮਾਰੀ ਇਹ ਕਹਿੰਦਾ ਕਹਿੰਦਾ ਰੁਕ ਗਿਆ ਧਰੇ ਚਲੀਏ ਇਹ ਤੈਨੂੰ ਮਿਲਣਾ ਕੀ ਕੰਧਾਂ ਨੂੰ ਦੇਖਾਂਗੇ ਮਾਂ ਨੇ ਕਿਹਾ ਜਗਰੂਪ ਨੇ ਹਾਮੀ ਭਰੀ ਨੇ ਹਰ ਬਰ ਚਾਹੁੰਦਾ ਮਾਂ ਘਰੇ ਜਾਵੇ ਉਹ ਕਦੇ ਵੀ ਨਾ ਜਾਂਦੀ ਪਿੰਡ ਤੋਂ ਪਾਸਾ ਵੱੜਦੀ ਛੁੱਟੀ ਵਾਲੇ ਦਿਨ ਆਉਂਦੇ ਜਗਰੂਪ ਤੇ ਦੋਨੇ ਆਉਂਦੇ ਤੇ ਰੋਟੀ ਖਵਾ ਕੇ ਤੇ ਕੱਪੜੇ ਚਾਰ ਪੈਸੇ ਦੇ ਕੇ ਉੱਥੇ ਹੀ ਮਰ ਜਾਂਦੇ ਚੰਗਾ ਪੁੱਤ ਖਿਆਲ ਰੱਖੀ ਆਪਣਾ ਕਹਿ ਕੇ ਪਰਤ ਜਾਂਦੀ ਹਰੇਕਪੁਰਸਿਓ ਬੈਲੀ ਤੇ ਸੱਤਿਆ ਦਾ ਪੁੱਤ ਜਗਰੂਪ ਪੁਰਸਿਓ ਦੀ ਪਹਿਲੀ ਪਤਨੀ ਦਿਆਲੋ ਸੀ ਦਿਆਲੋ ਪੁਰਸਿਓ ਦਾ ਦੀ ਕਰੇਵਾ ਵਿਆਹੰਦਰ ਸੀ ਤੇ ਦਿਆਲੋ ਜਗਰੂਪ ਨੂੰ ਕਰੇਵੇ ਸਮੇਂ ਪਿੱਛੋਂ ਹੀ ਲੈ ਕੇ ਆਈ ਸੀ ਜਿੰਨੀ ਚੇਜ਼ ਪੁਰਸਿਓ ਜੂਦਾ ਰਿਹਾ ਜਗਰੂਪ ਨੂੰ ਹੜੁੱਤੇ ਕਹਿੰਦਾ ਰਿਹਾ ਦਿਆਲੋ ਕਰੜੀ ਕਾਠੀ ਦੀ ਤੀਵੀ ਸੀ ਪੁਰਸਿਓ ਨੇ ਬੈਲ ਭੰਨ ਕੇ ਰੱਖ ਦਿੱਤੀ ਦੇ ਬੈਲ ਨੇ ਭੰਨ ਕੇ ਰੱਖ ਦਿੱਤੀ 6 ਸਾਲਾਂ ਦੇ ਜਗਰੂਪ ਨੂੰ ਮਤੇ ਮਤੇ ਪਿਓ ਦੀ ਝੋਲੀ ਸਿੱਟ ਤੁਰਦੀ ਬਣੀ ਦਿਆਲੋ ਦੇ ਪੇਕੇ ਸਹੰਦੇ ਸੀ ਉਹ ਜਗਰੂਪ ਨੂੰ ਨਾਨਕੇ ਲੈ ਗਏ ਸ਼ਰੀਕਾਂ ਦੇ ਚੱਕੇ ਚਕਾਏ ਪੂਰੂਸਿਓ ਫੇਰਾ ਨੀ ਮਤਲਬ ਦਾਰਲ ਛੋਟੀ ਸੱਤਿਆ ਵਿਆਹ ਲੈਂਦੀ ਸੱਤਿਆ ਗਰੀਬ ਕਰਦੀ ਰੂਪ ਅਤੇ ਸੁਭਾਅ ਪੱਖੋਂ ਚੱਕਵੀ ਬੈਲੀ ਪੂਰੂਸਿਓ ਦੀ ਗਹਿਣੇ ਕੋਈ ਜ਼ਮੀਨ ਤੇ ਦਰਸ਼ ਨਾਲ ਭੰਨੀ ਦੇਹ ਦੀ ਝੋਲੀ ਆ ਪਈ ਜਗਰੂਪ ਦੇ ਨੰਨ ਹੈ ਨੂੰ ਹੱਥੀ ਪੈਰਾਂ ਹੱਥਾਂ ਪੈਰਾਂ ਦੀ ਪੈ ਗਈ ਸਿਆਰ ਤਾਂ ਪਹਿਲਾਂ ਫੀਮ ਤੇ ਸ਼ਰਾਬ ਚ ਖੁਰ ਰਹੇ ਸੀ ਕੀ ਪਤਾ ਸੱਤਿਆ ਜਵਾਕ ਜੰਮ ਤੇ ਜਗਰੂਪ ਹੜੁੱਤ ਸਾਬਤ ਕਰ ਦਵੇ ਨਾਨਕੇ ਸਿਆਰੇ ਨੇ ਕੋਲੇ ਦੇ ਜਿਉਂ ਜਗਰੂਪ ਦੇ ਨੌ ਦੋ ਕਿਲੇ ਜ਼ਮੀਨ ਲਗਾ ਕੇ ਜਾਨੂ ਸਤਿਆ ਆਈ ਬਾਲੀ ਜ਼ਮੀਨ ਬੈ ਕੁਝ ਗਹਿਣੇ ਬਾਕੀ ਰਹਿੰਦੀ ਬਾਣੀਏ ਦੀ ਵਹੀ ਵਿੱਚ ਅੰਗੂਠਿਆਂ ਥੱਲੇ ਸਹਿ ਕਰੇ ਸੀ ਸਤਿਆ ਦੂਰ ਅੰਦੇਸ਼ ਸੀ ਉਹ ਅੱਜ ਕੇ ਜੂਨ ਦਾ ਸੁਪਨਾ ਲੈ ਕੇ ਆਈ ਉਹ ਚਾਹਿਆ ਪੂਨ ਸਿਓ ਜਿੰਨੀ ਛੇਤੀ ਹੋ ਸਕੇ ਤੁਰਦਾ ਬਣੇ ਇੰਜ ਹੀ ਹੋਇਆ ਨੇਕ ਹਾਲੇ ਸਾਲ ਪਰਦਾਈ ਪੂਨ ਸਿਓ ਨੂੰ ਸ਼ਰਾਬ ਲੜ ਗਈ ਫਿਰ ਤੋਂ ਬਾਅਦ ਸਤਿਆ ਪਟਵਾਰੀ ਨੂੰ ਸਿੱਧੀ ਮਿਲੀ ਪਤਾ ਲੱਗਿਆ 2 ਕਿੱਲੇ ਗਹਿਣੇ ਅੱਧਾ ਕਿੱਲਾ ਭਾਰ ਮੁਕਸੀ ਸੁਰਜਾ ਬਾਹਰੀਆਂ ਬਾਹੀ ਵਹੀ ਲੈ ਕੇ ਖੜਾ ਸੱਤਿਆ ਕੇਵਲ ਅੱਖਰ ਥਾਲਣੇ ਜਾਣਦੀ ਪਰ ਜਦੋਂ ਉਹਨੂੰ ਸੂਰਜੇ ਦੀ ਸਿੰਧੀ ਬਈ ਉਤੇ ਪੂਨਸੋਂ ਦੇ ਫੈਲੇ ਅੰਗੂਠੇ ਨੂੰ ਵੇਖਿਆ ਉਹਨੂੰ ਲੱਗਾ ਕਿ ਸੁਪਨੇ ਵਹੀ ਦੇ ਵਰਕਿਆਂ ਹੇਠ ਹੀ ਫੈਸਲਾ ਕੀਤਾ ਮਰਨਾ ਤਾਂ ਭੱਜਣਾ ਨਹੀਂ ਉਹਨੇ ਸਿਰ ਨੂੰ ਬਣਾ ਲਿਆ ਗੱਡਾ ਪੈਰ ਨੂੰ ਬਣਾ ਲਿਆ ਪਈਏ ਕੁਛੜ ਜੀ ਜਿੰਦ ਗੋਦੀ ਚੱਕ ਅੱਧ ਕਿਲੇ ਨਾਲ ਦੋ ਕਿਲੇ ਗਹਿਣੇ ਵਾਲੇ ਹਿੱਸੇ ਤੇ ਰੱਖ ਕੇ ਵਾਹੀ ਚੱਕ ਲਈ 15 ਬਾਰੇ ਲੰਘੇ ਪਰ ਕਰ ਗਿਆ ਨਾ ਮੁਰਿਆ ਛਾ ਜੀ ਲੈਣ ਵਾਲਾ ਮਰ ਗਿਆ ਰੱਬ ਜਾਮਨਾ ਮੈਂ ਨਹੀਂ ਜਾਣਦੀ ਉਹਨੇ ਕੀ ਕੀਤਾ ਤੂੰ ਕੀ ਕੀਤਾ ਪਰ ਮੈਂ ਮੰਡੀ ਚ ਹਿੱਸੇ ਦੀ ਵੰਡ ਬਣਾਈ ਤੋਂ ਗੱਲ ਨਸ਼ਰ ਹੋ ਗਈ ਇੰਜ ਤਾਂ ਵਿਧਵਾ ਤੀਮੀ ਜਮੀਨ ਛਡਾ ਸ਼ਰੀਕ ਜਗਰੂਪ ਕੋਲ ਜਾ ਖੜੇ ਜਗਰੂਪ ਨੌਪਰੀ ਨੌਕਰੀ ਤੇ ਤੁਸੀਂ ਵਿਆਹਿਆ ਵਰਿਆ ਪਿੰਡ ਨਹੀਂ ਸੀ ਆਉਂਦਾ ਨਾਨਕਾਂ ਦੇ ਸ਼ਹਿਰ ਤੇ ਮੋਢਿਆਂ ਤੋਂ ਥੁੱਕਦਾ ਸ਼ਰੀਕਾ ਉਹਨਾਂ ਨੂੰ ਸਿਖਿਆ ਕਿ ਰੰਡੀ ਧੀ ਵੀ ਵਟਾਂ ਵੱਡ-ਵੱਡ ਸਿਆੜ ਆਪਣੇ ਨਾਲ ਰਲਾਈ ਜਾਂਦੀ ਚਲ ਪਿੰਡ ਨੂੰ ਜਗਰੂਰ ਨੇ ਨਾਨਕ ਨਾਲ ਕੀਤੀ ਨਾਨਕ ਸੱਤਿਆਵਲ ਢੱਕਾ ਸਿਰਦੇ ਇੱਕ ਤਾਂ ਸੱਤਿਆਂ ਨੂੰ ਧੀ ਦੀ ਥਾਵੇਂ ਸਮਝਦੇ ਦੂਜਿਆਂ ਨੂੰ ਚ ਕੋਈ ਕੋਟਨਾਕੀ ਇੱਕ ਦਿਨ ਖੁਦ ਹੀ ਸਰਮੂਰੇ ਜਾ ਆਖੜਾ ਸੱਤਿਆ ਬਾਹਰ ਖੂਹ ਦੇ ਪੱਠੇ ਕੁੱਤਰ ਰਹੀ ਸੀ ਮੇਕ ਦਿਹਾਰੀ ਦਾ ਮੱਕੀ ਗੁੜ ਸੀ ਜਗਰੂਰ ਸੱਤਿਆਂ ਨੂੰ ਦੇਖ ਕੇ ਰਹਿ ਗਿਆ ਸਾਵਲਾ ਰੰਗ ਤਿੱਖੇ ਨਕਸ਼ ਸੂਤਵੇਂ ਤੇ ਵੈਲੀ ਦੀ ਧੀ ਕਹੇ ਜੀ ਉਹ ਮੈਂ ਪਹਿਲੀ ਵਾਰ ਜਗਰੂਪ ਉੱਠ ਗਿਆ ਜੇ ਮੈਂ ਮੈਂ ਜਗਰੂਪਾਂ ਜੀ ਸੱਤਿਆਂ ਨੂੰ ਚਾਹ ਚੜ ਗਿਆ ਉਹਨੇ ਜਗਰੂਪਤਾ ਆ ਕੇ ਗੱਲਬਾਤਰੀ ਚਲਿਆ ਮੱਥਾ ਚੁੰਮਿਆ ਮੰਜੇ ਡਾਇ ਧੰਨ ਭਾਗ ਸਾਡੇ ਸੱਤਿਆਂ ਦਾ ਚਾਹ ਠੱਲਿਆ ਨਹੀਂ ਸੀ ਜਗਰੂਪ ਲਈ ਹੋ ਗਈ ਹਰੇਕ ਵੀ ਸੱਦ ਲਿਆ ਹਨੇਕ ਜਗਰੂਪ ਨੂੰ ਦੇਖ ਤੇ ਡੰਗ ਰਹਿ ਗਿਆ ਚਿੱਟੇ ਲੀੜੇ ਰੋਪ ਰੋਪ ਦਾ ਚਿਹਰਾ ਸੱਤਿਆ ਖੁਸ਼ੀ ਚੱਖਾਂ ਭਰਿਆ ਜਗਰੂਪ ਉਹਨੀ ਪੈਰੀ ਮੁਰ ਪੈਰੀ ਮੁੜਿਆ ਆ ਮੁਰਦੇ ਜਗਰੂਪ ਦੇ ਜਹੰਸ ਇੱਕੋ ਹੀ ਗੱਲ ਉਹਨੇ ਕਹਿੋ ਜੀ ਔਰਤ ਵੇਖੀ ਪਾਕੀਆਂ ਲੀਰਾਂ ਚੰਗਿਆਰ ਜਗਰੂਪ ਕਦੇ ਪਿੰਡ ਨਹੀਂ ਸੀ ਵੜਦਾ ਹੁਣ ਹਫ਼ਤੇ ਬਾਅਦ ਢੇੜਾ ਦਿੰਦਾ ਹਮੇਕ ਦੀ ਪਿੱਛ ਥਾਪੜ ਦਾ ਗਹਿਣੇ ਭੀ ਜ਼ਮੀਨ ਛਡਾਉਣੀ ਹਾਮੀ ਭਰਦਾ ਸੱਤਿਆ ਦੀ ਰੁੱਖੀ ਮਿੱਸੀ ਖਾਂਦਾ ਪਰਤ ਜਾਂਦਾ ਸਮਾਂ ਆਇਆ ਜਗਰੂਪ ਸੱਤਿਆ ਨੂੰ ਸ਼ਹਿਰ ਲੈ ਗਿਆ ਜਗਰੂਪ ਦੀ ਪਤਨੀ ਦਾ ਜਨੇਪਾ ਸੀ ਸਿਰ ਤੇ ਉਹ ਦਿਨ ਤੇ ਆਹ ਦਿਨ ਪਿਛਲੇ 3 ਸਾਲਾਂ ਤੋਂ ਮਾਂ ਪੱਕੇ ਤੌਰ ਤੇ ਪਿੰਡ ਨਾ ਆਈ ਜਗਰੂਪ ਦੀ ਪਤਨੀ ਪ੍ਰੀਤ ਧੀ ਪੁੱਤ ਜੋੜੇ ਜੰਮ ਕੇ ਪੇਕੇ ਜਰੂਰ ਚਲ ਗਿਆ ਉਹਦੀ ਜਿੱਦ ਸੀ ਜਾਂ ਸੱਤਿਆ ਰਹੂਗੀ ਜਾਂ ਉਹ ਜਗਰੂਪ ਦੇ ਨਾਨਕੇ ਵੀ ਸੱਤਿਆ ਪਰ ਗਰੂਪ ਆਖ ਕੀ ਹੋਇਆ ਮਤੇਈ ਮਾਂ ਪਰ ਸਕੇਆਂ ਤੋਂ ਵੱਧ ਇੱਕ ਦਿਨ ਅਚਾਨਕ ਪ੍ਰੀਤ ਨੇ ਨੀਕ ਨੂੰ ਅੱਡੇ 'ਚ ਮਿਲ ਗਈ। ਹਰਨੇਕ ਪ੍ਰੀਤ ਨੇ ਪਿੱਛੇ ਵੇਖਿਆ। ਪ੍ਰੀਤ ਨੇ ਜਿਸ ਪਿਆਰ ਨਾਲ ਇੱਕ ਪਾਣੀਓ ਹੋ ਗਿਆ, ਇੰਨੇ ਤੇ ਉਹ ਨਾਲ ਤਾਂ ਕਿਸੇ ਨੇ ਸੱਦਿਆ ਨਹੀਂ ਸੀ। ਨੀਕਾ ਹੀ ਕਹਿੰਦੀ ਹਰਨੇਕ ਆਲੀ ਕੌਣ ਐ? ਜੀ, ਚਾਹ ਪਈਏ ਕਿਤੇ? ਨੀਕ ਸੰਗਿਆ ਪ੍ਰੀਤ ਨੂੰ ਲੈ ਕੇ ਕਿਸੇ ਦੁਕਾਨ ਤੇ ਜਾ ਬੈਠੀ। ਕਾਫੀ ਦੇਰ ਦੀ ਚੁੱਪ ਤੋਂ ਬਾਅਦ ਨੀਕ ਜੇ ਬੁਰਾ ਨਾ ਇੱਕ ਗੱਲ ਪੁੱਛਾ, ਤੇਰੀ ਮਾਂ ਮੇਰੇ ਘਰ ਕੀ ਕਰਦੀ ਐ? ਨੀਕ ਕੋਲ ਕੋਈ ਉੱਤਰ ਨਹੀਂ। ਨੇਕ ਤੂੰ ਇੱਕ ਵਾਰ ਵੀ ਨਹੀਂ ਕਿਹਾ ਬਈ ਵਾ ਤੇਰਾ ਉੱਥੇ ਕੀ ਕੰਮ ਜਗਰੂਪ ਉਹਦਾ ਕੀ ਲੱਗਦਾ ਜੇ ਹਾਂ ਫੇਰ ਕਹਿੰਦਾ ਭੋਰਾ ਭੋਰਾ ਜਵਾਕਾਂ ਨੂੰ ਕਿਦੇ ਹਾਲ ਛੱਡ ਕੇ ਆਵੇਂ ਓ ਕਹਿੰਦੀ ਐ ਜਵਾਕ ਮੇਰੇ ਨੇ ਮੈਂ ਪਾਲਦੀ ਹੁਣ ਉਹਦੀ ਰੋਟੀ ਪੱਕਦੀ ਐ ਜਵਾਕ ਵੀ ਪੜੀ ਜਾਂਦੇ ਤੂੰ ਦੱਸ ਮੈਨੂੰ ਕਿਉਂ ਲੈ ਕੇ ਜਾਊ ਉਹ ਪ੍ਰੀਤ ਇੱਕ ਤਨਾਰ ਹੋਈ ਇਹ ਤਾਂ ਵੀਰਾ ਦੇਖੇ ਤੇਰਾ ਕਿਧਰੋਂ ਵੀਰਾ ਹੋ ਗਿਆ ਪਹਿਲਾਂ ਐਂਉਂ ਦੱਸ ਤੇਰਾ ਉਹ ਕੀ ਲੱਗਦਾ ਬਿਆਲੋ ਦਾ ਤੇਰੇ ਪਿਓ ਨਾਲ ਕਰੇਵਾ ਹੋਇਆ ਇਹ ਬਿਆਲੋ ਦੇ ਨਾਲ ਕਿਤੇ ਪਿੱਛੋਂ ਆਇਆ ਇਹ ਤੇਰੇ ਪਿਓ ਦਾ ਕੀ ਲੱਗਿਆ ਤੇਰੇ ਪਿਓ ਦਾ ਨਾ ਕੁਝ ਲੱਗਿਆ ਤਾਂ ਅੰਦਾਜ਼ ਤੇਰੀ ਮਾਂ ਦਾ ਲੱਗਿਆ ਮੈਂ ਕੀ ਜਾਣ ਮੈਨੂੰ ਨਹੀਂ ਪੜਾ ਭਾਬੀ ਮੂੰਹੋਂ ਨੇ ਕਿਹਾ ਬਸ ਤੂੰ ਨਾ ਸਿਆਣਾ ਵਰੀ ਕਦੇ ਸਿਆਣਾ ਹੀ ਦੀ ਗੱਲ ਦੇ ਵਿੱਚ ਪ੍ਰੀਤ ਨੇ ਉਸ ਟੋਕਿਆ ਸੀ ਦੇਖ ਜਾਂ ਤਾਂ ਮਾਂ ਨੂੰ ਲੈ ਕੇ ਆ ਜਾ ਨਹੀਂ ਮੈਂ ਰੋਟੀਆਂ ਥੱਪੜ ਦੇ ਜਵਾਬ ਜੰਮਣ ਨੂੰ ਤੇਰੇ ਘਰੇ ਆ ਜਾ ਫਿਰ ਉਹ ਅਚਾਨਕ ਨੇਕ ਦੇ ਕੱਪੜਿਆਂ 'ਤੇ ਝਾਕ ਕੇ ਅਜ ਦੇ ਕੱਪੜੇ ਪਾਈ ਵਰਦਾ ਤੂੰ ਅੱਤਾ ਹੁਣ ਤੈਨੂੰ ਦੇ ਦੁੱਤਾ ਉਤਾਰ ਉਹਨੇ ਗੱਲ ਸੁਣ ਜੇ ਉਤਾਰ ਹੀ ਹੰਡਾਉਣਾ ਤਾਂ ਚੱਜ ਨਾਲ ਹੰਡਾ ਨਾਲੇ ਸੁਣ ਲਈ ਮੇਰੀ ਗੱਲ ਸਵਾਰ ਕੇ ਹੰਡਾਦਾ ਫਿਰ ਜਾਂ ਦੂਜੀ ਵਾਰ ਕਲੀ ਨੇਕ ਨੇ ਚਾਹ ਦਾ ਗਲਾਸ ਥੱਲੇ ਰੱਖਤਾ ਉਹਨੇ ਕਿਹਾ ਇਹ ਕੀ ਕਹਿੰਦੀ ਐ ਸ਼ਰੀਕ ਸ਼ੇਰੇ ਬਣ ਕੇ ਨਹੀਂ ਧੁੱਕਦਾ ਬਾਕੀ ਕਸ ਨਹੀਂ ਸ਼ਰਦਾ ਜਿੱਦਾਂ ਲੱਗੇ ਜਗਰੂਪ ਨੇ ਤੇਰੇ ਤੇ ਕੋਈ ਮੀਟੀ ਚੜ੍ਹੀ ਐ ਆ ਜੀ ਲਾ ਰਲ ਕੇ ਉਹਨੇ ਨੇਕ ਨੂੰ ਘੁੱਟਿਆ ਚਲੇ ਗਿੰਦੀ ਇਕਲੇ ਖਾਣਾ ਮੁਸ਼ਕਲ ਹੋ ਗਿਆ ਜੋਹਾਨ ਮੇਰੀ ਸ਼ੋ ਇਨੀ ਨੇਰੀਓ ਵੇਖੀ ਸਾਰੀ ਰਾਤ ਰਜਾਈ ਚ ਤੇ ਗਿਆ ਤੇ ਬਾਰਾ ਵੱਢ ਹਲੇ ਹੱਥੇ ਤੋਂ ਨਹੀਂ ਪਿੱਛੋਂ ਕਿਸ ਨੇ ਆ ਕੇ ਜੱਫੀ ਪਾ ਲਈ ਕਿਵੇਂ ਆ ਦੇਖ ਸਿਆ ਠੀਕ ਤੂੰ ਦੇ ਖਬਰਾਂ ਨੇਕ ਤੇ ਗਰਨਾਇਬ ਦੇ ਨੇਕ ਨੇ ਗਰਨਾਇਬ ਦੇ ਫਬੇ ਫਬ ਮੇ ਲੀੜੇ ਗੋਵ ਨਾਲ ਦੇਖੇ ਜਗਰੂਪ ਦਾ ਉਤਾਰ ਲੈਣਾ ਫਿਰ ਚੇਤੇ ਆਇਆ ਪਰ ਜ਼ਾਹਰ ਨਾ ਹੁੰਦਾ ਦੋਵੇਂ ਖੂ ਬਨੂ ਇਹਦਾ ਇੱਕ ਤਾਂ ਯਾਰ ਸੂਤਾ ਲਵਾ ਨਾਲੇ ਭਾਂਡਾ ਛੰਨਾ ਲਿਆ ਹੋਇ। ਨੇਕ ਸਿਗਰਟ ਨਹੀਂ ਸੀ ਪੀਂਦਾ ਘਰ ਦੀ ਕੱਢੀ ਹਲਵਲੇ ਰੱਖਦਾ। ਭਾਂਡੇ ਛੰਨੇ ਦਾ ਮਤਲਬ ਗਰਨੇਰ ਦਾਰੂ ਲੈ ਕੇ ਆਇਆ। ਨੇਕ ਨੇ ਜਦ ਤੱਕ ਖੂਚੋਂ ਪਾਣੀ ਦਾ ਡੋਲ ਕੱਢ ਕੇ ਆਪਣੀ ਮਾਂ ਵੱਲੋਂ ਲਿਆਂਦੀ achar ਦੀ ਥਾੜੀ ਕੋਲੀ ਚ ਤਰੀ ਗਰਨੇਰ ਵੱਦੀ ਸਿਗਰਟ ਪੀ ਗਿਆ। ਅਜ achar ਆਲੀ ਨੇ ਨੇਕ ਸਾਂ ਤੂੰ ਭਾਂਡਾ ਲਿਆ ਛੇਤੀ। ਗਰਨੇਰ ਅੰਗਰੇਜ਼ੀ ਦਾ ਦੀਆ ਕੱਢ ਲਿਆ। ਨਾ ਬਾਈ ਤੂੰ ਲਾ ਗੱਫੇ। ਮੈਂ ਉਹੀ ਆਨੰਦ ਚ ਇਹ ਗੱਲ ਭਾਬੀ ਤਾਂ ਨਹੀਂ ਮਾਰ ਗਈ ਕਿਹੜਾ? ਨਹੀਂ ਮਾਂ ਆਈ ਸੀ ਨਾਲ ਰੂਪ ਐ। ਤਾਂ ਆ ਫੇ ਬਾਈ ਝੂਠੀ ਕਰਨੀ ਪਊ ਨਾਏ ਬਾਈ ਅੱਜ ਨਹੀਂ ਓਏ ਹੱਦ ਹੋ ਗਈ ਯਾਰ ੱੱੱੱੱੱੱੱੱੱ ਪੀਣੀ ਹੁੰਦੀ ਲਿਆ ਗਲਾਸੀ ਵੇਖ ਸੈਂ ਜਿਹੜੀ ਜਿਹੜੀ ਮਿਹਨਤ ਕਰਦਾ ਉਹਦਾ ਦੁਆਨੀ ਵੀ ਮੁੱਲ ਪੈ ਜਾਏ ਸੋਨੇ ਦਾ ਬਣ ਜਾਏ ਸੋਨੇ ਦਾ ਤੇਰਾ ਮੁੱਲੇ ਨਹੀਂ ਪਾਇਆ ਕਿਸੇ ਨੇ ਓਏ ਮੁੱਲ ਜ਼ਮੀਨਾਂ ਜਾਇਦਾਦਾਂ ਦੇ ਐ ਬੰਦਾ ਤਾਂ ਮਿੱਟੀ ਦੀ ਢੇਰੀ ਆ ਬਾਈ ਜਾਇਦਾਦ ਬਿਨਾਂ ਕੌਣ ਪੁੱਛਦਾ ਆਹੀ ਦੋਖਾ ਨੇਕ ਵੀ ਭਰਾ ਤੇਰਾ ਤਾਂ ਵਿਸਕੀ ਨਾਲ কুরਲੀਆਂ ਕਰਦਾ ਐ ਅਰ ਤੂੰ ਵਰਦਾ ਡੰਗਰਾਂ ਦੇ ਖੁਰ ਤੇ ਪੀਣਾ ਲਾਹਣ ਜਿਹਨੂੰ ਕੁੱਤੇ ਵੀ ਨਹੀਂ ਸੁੰਘਦੇ ਕਹਿਣਾ ਦਾ ਚਹਿ ਜਿਹੜੀ ਤੂੰ ਅੰਗਰੇਜ਼ੀ ਲਾਇਆ ਅੱਜ ਲਾਹਣ ਮਾੜੀ ਹੋ ਗਈ ਕਿਸਮਤ ਆ ਬਾਈ ਉਹ ਕਿਸਮਤ ਨੂੰ ਤੂੰ ਭੁਣ ਕਿਤੇ ਆਸੇ ਸੱਤਿਆ ਮਾਫੀ ਜਿਹਨੇ ਸਾਰਾ ਕੁਝ ਜਰ ਲਿਆ ਘਰ ਦੇ ਦਲੇ ਨਹੀਂ ਖਿੰਣਨ ਤੇ ਦਾ ਮੱਥਾ ਠਣਕਿਆ ਗਰੈਵ ਜਦ ਵੀ ਆਉਂਦਾ ਬਲ ਪਾ ਕੇ ਕੁਛ ਨਾ ਕੁਛ ਕਹਿੰਦਾ ਤੇ ਮੈਂ ਸੁਣਿਆ ਭਾਬੀ ਨੂੰ ਲਿਉਂਦਾ ਹੀ ਨਹੀਂ ਹੁਣ ਜਗਰੂਪ ਇੰਨੀ ਗੱਲ ਕਹਿ ਕੇ ਉਹ ਚਲੇ ਗਿਆ ਪਰ ਸਾਰੀ ਰਾਤ ਨੇਕ ਨੂੰ ਨੀਂਦ ਨਾ ਆਈ ਉਹਨੂੰ ਵੱਡ ਟੁੱਕ ਜਿਹੜੀ ਹੁੰਦੀ ਰਹੀ ਸਵੇਰੇ ਦਿਨ ਚੜਦੇ ਉਹਨੇ ਟਾਈਮ ਦਾ ਨਾਜਾ ਲਾਇਆ ਉਹਨੇ ਕਿ ਹਵੇ ਇਉਂ ਤਾਂ ਹੁਣ ਜਿਉ ਨਹੀਂ ਹੋਣਾ ਉਹਨੇ ਸਾਈਕਲ ਕੱਢਿਆ ਮੂਹਰੇ ਝੋਟਾ ਚੰਗੇ ਵਿੱਚ ਤਾਰ ਪਾ ਲਿਆ ਸਿੱਧਾ ਹੀ ਜਾ ਕੇ ਸ਼ੀਂਤਾ ਵਾਲਿਆਂ ਗੱਡੀ ਫੜੀ ਜਾਂ ਸ਼ੀਂਤਾ ਵਾਲਿਆਂ ਗੱਡੀ ਫੜ ਕੇ ਜਾ ਕੇ ਖੂਹ ਤੇ ਗਿਆ ਤਾਂ ਰਾਹ ਦੇ ਸ਼ਹਿਰ ਨੂੰ ਗਿਆ ਤਾਂ ਰਾਹ ਦੇ ਵਿੱਚ ਗੱਲਾਂ ਝਾਤ ਆਈਆਂ ਮਾਂ ਨੇ ਦੇਖ ਪੁੱਤ ਅਪਾ ਸਾਰੀ ਉਮਰ ਖਤਾਖੂਨ ਹੋ ਕੇ ਦੋ ਕਿੱਲੇ ਨਹੀਂ ਛਾੜ ਸਕਦੇ ਜੇ ਗਰੂਪ ਦੇ ਹੋ ਕੇ ਰਹੀਏ ਦੋ ਸਾਲਾਂ ਸੁਰਖਰੂ ਸਿਆੜਾਂ ਦੇ ਜੱਟ ਦੀ ਜੂਨ ਕੀ ਤੂੰ ਏਵੇਂ ਕਿਵੇਂ ਦੰਦਾ ਥੱਲੇ ਜੀਬ ਲੈ ਕੇ ਸਿਆੜ ਕੱਪ ਜਿਹੜੇ ਕਰ ਜਿੱਦਣ ਸਿਆੜ ਮਿਲ ਗਏ ਤੇਰੇ ਕੋਲ ਪਿੰਡ ਆਉ ਉਹਨਾਂ ਚਿਰ ਕੁਛ ਨਾ ਕਹੀ ਗਵਾਂਡੀਆਂ ਨੇ ਦੇਖਿਆ ਦਰਵਾਜ਼ਾ ਬੰਦ ਗਵਾਂਡੀਆਂ ਦੀ ਪੌੜੀ ਚੜ੍ਹ ਕੇ ਕੋਠੇ ਤੇ ਜਾ ਕੇ ਬਹਿ ਗਿਆ ਨੇਕ ਜੱਾ ਦੇਖਿਆ ਵਿਹੜੇ ਦੇ ਵਿੱਚ ਦੋ ਜਿਹੜੇ ਮੰਜੀਆਂ ਡਈਆਂ ਪਈਆਂ ਜੋੜ ਕੇ ਗਵਾਂਟੀ ਨੇ ਆਕੇ ਦੱਸਿਆ ਉਹਦਾ ਭਾਈ ਸੈਰ ਤੇ ਗਏ ਹੋਇਆ ਸੈਰ ਤੇ ਗਿਆ ਪਤਾ ਨਹੀਂ ਕਾ ਦ ਹੁਣ ਮੁੜ ਕੇ ਪਿੰਡ ਨੂੰ ਲੱਗਿਆ ਕਿ ਪਿੰਡ ਆਉਂਦੇ ਆ ਫੇਰ ਬੁੜਿਆ ਨੇ ਪਿਛਰਾ ਕਰਨੀ ਐ ਉਹਨੂੰ ਯਾਦ ਆ ਗਈਆਂ ਛੜੇ ਦੀਆਂ ਕਿੰਨੇ ਅਨੇਕ ਤਾਂ ਭਾਬੀ ਦਾ ਦਗਾਣਾ ਸ਼ਹਿਰ ਚ ਤੂੰ ਵੀ ਸ਼ਹਿਰ ਹੀ ਵਗ ਤੇਰੀ ਮਾਂ ਤਾਂ ਸ਼ਹਿਰ ਵਾਲੀਆਂ ਹਰੀਆਂ ਚਰ ਸ਼ਹਿਰ ਤਾਂ ਕਹਿੰਦੇ ਗਦਾ ਗਦਾ ਛੱਟ ਛਿੱਤੇ ਵਿੱਚ ਦੂਜਿਆਂ ਜਿਹੜਾ ਜਗਰੂਪ ਨੇ ਤਾਂ ਭਾਈ ਸੰਨ ਲਾ ਰੱਖੀ ਐ ਸਰਕਾਰ ਨੂੰ ਉਹ ਨਾ ਕੋਈ ਉਹਨੂੰ ਕੁਝ ਕਹਿੰਦਾ ਉਹਦੇ ਮਨ ਨੂੰ ਬਹੁਤ ਹੋਈ ਕਿ ਹੁਣ ਘਰ ਨੂੰ ਕੀ ਮੁੜਨਾ ਤੁਰਿਆ ਆਉਂਦਾ ਉਹ ਅੱਧ ਦੇ ਵਿੱਚ ਜਦ ਆ ਰਿਹਾ ਸੀ ਸਾਈਕਲ ਤੇ ਤਾਂ ਪ੍ਰੀਤ ਦੇ ਪਿੰਡ ਨੂੰ ਉਹ ਜਾ ਪੜਿਆ ਰੋਟੀਆਂ ਪਿੰਡ ਚ ਵੜ ਕੇ ਬਾਹਰਲੀ ਪੱਤੀ ਦੇ ਨੇੜੇ ਉਹ ਧਰਮਸਾਲ ਸਕੂਲ ਚ ਪੜਾਉਂਦੀ ਸੀ ਇਹਦੇ ਗੱਲ ਬਾਰੇ ਉਹਨੂੰ ਪਤਾ ਸੀ ਨੇਕ ਨੇ ਕਿਸੇ ਤੋਂ ਪ੍ਰੀਤ ਦਾ ਘਰ ਪੁੱਛਿਆ ਪਤਾ ਲੱਗਿਆ ਸਾਹਮਣੇ ਖੰਬੇ ਕੋਲ ਨੇਕ ਨੇ ਬੂਹਾ ਖੜਕਾਇਆ ਐਸੇ ਵੇਲੇ ਸੋਖਾ ਅੱਖਾਂ ਦਾ ਸਮਾ ਸੀ ਕੌਣ ਹੈ ਪ੍ਰੀਤ ਪਿੱਛੋਂ ਆਵਾਜ਼ ਜਨਾਨਾ ਆਈ ਕੋਈ ਨਹੀਂ ਪਲੀਗ ਹੈ ਮੇਰਾ ਪ੍ਰੀਤ ਮੋੜਨ ਲਗੀ ਤੇ ਮੇਕ ਨੇ ਉਹਦੀ ਬਾਹ ਫੜੀ ਮੈਂ ਲੈਣ ਆਇਆ ਤੈਨੂੰ ਤੌਰ ਹੁਣ ਚੱਲੀਏ ਪਿੰਡ ਨੂੰ ਮੇਰਾ ਕੋਈ ਹੀਲਾ ਨਹੀਂ ਆ ਜਾ ਨਾਲੇ ਹੁਣ ਪੀੜੀ ਲਾ ਲਈਏ ਤੇ ਨਾਲੇ ਜੋ ਆਖ ਜੰਮ ਚੱਲੀਏ ਪਿੰਡ ਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਮੈਂ ਪ੍ਰੀਤ ਨੇ ਸਿਰ ਤੇ ਦੁਪੱਟਾ ਲਿਆ ਬਾਹਰ ਆ ਕੇ ਆਪ ਪਹਿਲਾਂ ਗੱਲ ਕਰਦੇ ਉਹ ਨੇੜੇ ਆਉਂਦੇ ਸ਼ੇਰਦਵਾਲੇ ਦੇ ਮੈਦਾਨ ਚ ਠੱਠੇ ਬੈਂਚਾਂ ਤੇ ਬਹਿ ਗਏ ਕੋਈ ਬਹਾਨਾ ਨਹੀਂ ਬਣਾਉਣਾ ਮੈਂ ਮਿੱਥ ਕੇ ਆਇਆ ਜਿੱਦਨ ਦੀ ਤੈਨ ਗੱਲ ਤੋਰੀ ਆ ਹੁਣ ਪੈਰ ਜੇ ਨਾ ਵੱਟੀ ਮੇਰੇ ਨਾਲ ਤੋਰ ਮੈਂ ਤਾਂ ਵੱਡਿਆ ਪਿਆ ਜਿੱਦਨ ਹੁਣ ਮੈਂ ਲੈਣ ਆਇਆ ਚੱਕ ਲਿਆ ਚਾਰ ਸੂਟ ਆਪਣੇ ਚੱਲੀਏ ਮੈਂ ਉੱਥੇ ਜਾ ਕੇ ਆਇਆ ਮਾਂ ਤਾਂ ਉੱਥੇ ਐ ਉਹ ਤਾਂ ਸੈਰ ਤੇ ਗਏ ਨੇ ਚੱਲ ਪਿੰਡ ਨੂੰ ਪਰ ਸੁਣਤਾ ਸਹੀ ਗੱਲ ਤਾਂ ਗੱਲ ਨਹੀਂ ਸੁਣਨੀ ਹੈ ਬਹੁਤ ਸੁਣ ਲਿਆ ਨਹੀਂ ਜਿਹੜੀ ਮੈਂ ਗੱਲ ਕਹਿੰਦੀ ਆ ਸੁਣਤਾ ਸਹੀ ਮੇਕ ਜਦੋਂ ਮੈਂ ਤੈਨੂੰ ਪਹਿਲੀ ਵਾਰ ਮਿਲੀ ਮੈਂ ਇਹੀ ਚਾਹੁੰਦੀ ਸੀ ਤੂੰ ਆਵੇਂ ਤੇ ਮੈਂ ਤੇਰੇ ਨਾਲ ਸੰਬੰਧ ਬਣਾ ਕੇ ਬਦਲਾ ਲਵਾਂ ਜਗਰੂਪ ਤੇ ਪੁੱਤ ਸਭ ਸਿਆੜ ਗਿਰਵੀ ਨੇ ਕਹਿਣੇ ਨੇ ਕੱਲਾ ਉਹ ਸਾਲ ਨਹੀਂ ਛੜਾ ਬਦਲਾ ਜਗਰੂਪ ਮੇਰੀ ਮਦਦ ਕਰ ਸਾ ਜਾਂਤ ਮੈਨੂੰ ਆਪਣਾ ਰਹਿਣ ਦੇ ਨਹੀਂ ਜਿੱਦ ਦੇ ਸੁੱਟ ਗਿਆ ਮੈਂ ਜਗਰੂਪ ਬਦ ਨਹੀਂ ਛੱਕ ਇਹ ਤੇਰੀ ਮਾਂ ਨੇ ਗੱਲ ਕਹੀ ਸੁਣਦਾ ਓਏ ਸੁਣਦਾ ਉਹ ਮੈਨੂੰ ਦੱਸ ਤੂੰ ਤੁਰਨਾ ਪਿੰਡ ਨੂੰ ਕੁ ਨਹੀਂ ਗੱਲ ਫੇਰ ਸੁਣ ਉਹੀ ਤਾਂ ਗੱਲ ਹਲੇ ਵੀ ਨੇਕ ਦੇ ਸਿਰ ਨੂੰ ਧੂਰੇ ਵਾਂਗੂ ਚੜੀ ਹੋਈ ਸੀ ਕਿ ਕਦ ਤੋਰ ਹੁਣ ਪਿੰਡ ਨੂੰ ਮੈਂ ਉਹਦੀ ਗੱਲ ਨਹੀਂ ਮੰਨੀ ਪਰ ਜਦੋਂ ਮੈਂ ਤੈਨੂੰ ਤੇਰੀ ਮਾਂ ਨੂੰ ਚੰਦ ਸਿਆੜਾਂ ਬਦਲੇ ਉਤਾਰ ਹੰਡਾਉਂਦੇ ਵੇਖਿਆ ਤਾਂ ਸੋਚਿਆ ਕਿ ਪਹਿਲਾਂ ਸੱਤਿਆ ਤਾਂ ਕਿਸੇ ਪੂਰਨ ਕਿਸੇ ਦਾ ਉਤਾਰ ਪੂਰ ਸਿੰਘ ਹੰਡਾਇਆ ਫਿਰ ਮੇਰਾ ਮੈਨੂੰ ਤੇਰੀ ਮਾਂ ਦੀ ਮਜਬੂਰੀ ਤਾਂ ਸਮਝ ਪੈਂਦੀ ਹੈ ਪਰ ਜਦੋਂ ਮੈਂ ਤੈਨੂੰ ਜਗਰੂਪ ਦਾ ਆਤਾਰ ਹੰਡਾਉਂਦੇ ਦੇਖਿਆ ਤਾਂ ਫੈਸਲਾ ਕੀਤਾ ਮੈਂ ਤੈਨੂੰ ਕਿਸ ਦਾ ਆਤਾਰ ਨਹੀਂ ਹੰਡਾਉਣ ਦੇਣਾ ਪੁੱਛੇਗਾ ਨਹੀਂ ਕਿਵੇਂ ਕਿ ਮੈਂ ਕਿਉਂ ਕਰ ਪ੍ਰਾਣੀਆਂ ਦੀ ਮੈਂ ਨਹੀਂ ਕਰਨੀ ਤੇਰੀ ਮਾਂ ਦੁੱਖ ਚ ਹੈ ਮੈਨੂੰ ਦੁੱਖ ਦੇ ਦਿੱਤਾ ਤੈਨੂੰ ਮੈਂ ਆਪਣੀ ਭੈਣ ਦਾ ਰਿਸ਼ਤਾ ਕਰ ਸਕਦੀ ਹਾਂ ਜੇ ਰਾਜੀ ਹੈ ਮੈਂ ਉਸ ਵਾਲੀ ਗੱਲ ਤੇ ਖੜਾ ਜਿਹੜੀ ਉਸ ਕਹੀ ਸੀ ਉਹ ਉਸ ਜਿਹੜੀ ਕਹੀ ਸੀ ਮੈਂ ਗੁੱਸੇ ਚ ਕਹੀ ਸੀ ਪਰ ਇਹਦੇ ਵਿੱਚ ਦੁੱਖ ਇਹ ਹੈ ਇਹ ਜਿਹੜਾ ਕੋ ਦਸਉਂਦਾ ਤੇਰੀ ਮਾਂ ਕੱਟ ਰਹੀ ਆ ਉਹ ਤੇਰੇ ਚਾਰ ਸਿਆੜਾਂ ਲਈ ਕੱਟ ਰਹੀ। ਉਹਦਾ ਕੁਛ ਨਹੀਂ ਲੱਗਦਾ ਨਾ ਉਹ ਪੁੱਤ ਨਾ ਉਹ ਭਾਈ ਆ। ਪਰੇ ਵਿੱਚ ਤੇਰੀ ਪਹਿਲੀ ਪਿਓ ਦੇ ਘਰ ਵਾਲੀ ਦਿਆਲੋ ਲੈ ਕੇ ਆਈ ਸੀ ਤੇਰਾ ਵੀ ਕੱਖ। ਮੈਂ ਜਗਰੂਪ ਤੋਂ ਦੁਸ਼ਮਣੀ ਉਹਦੇ ਨਾਲ ਸੀ ਉਹ ਤੋਂ ਬਦਲਾ ਲੈਣਾ ਚਾਹੁੰਦੀ ਸੀ ਪਰ ਫੇਰ ਵੀ ਮੈਂ ਰੀਤ ਬਦਲਨੀ ਚਾਹੁੰਦੀ ਮੈਂ ਹਾਲੇ ਵੀ ਜਗਰੂਪ ਦੀ ਆ ਫੇਰ ਮੈਂ ਕੀ ਕਰਾਂ? ਤੂੰ ਹੀ ਕਰ ਮੇਰੀ ਭੈਣ ਦਾ ਰਿਸ਼ਤਾ ਲੈ ਲਾ। ਮੈਂ ਉਦਾਂ ਤੂੰ ਕਹਿੰਦੀ ਸੀ ਪੜ੍ਹੀ ਲਿਖੀ ਪੜ੍ਹੀ ਲਿਖੀ ਹੋਵੇ ਚਾਹੇ ਨਾ ਪੜ੍ਹੀ ਲਿਖੀ ਤੂੰ ਹਾਂ ਕਰਦਾ। ਨੇਕ ਹਨੇਰੇ ਵਿੱਚ ਪ੍ਰੀਤਵਾਲ ਵੇਖ ਰਿਹਾ ਸੀ। ਮੈਂ ਜਾਣਦੀ ਆ ਤੇਰੀ ਮਾਂ ਨੇ ਆਪਣੀ ਦੋ ਕਨਾਲਾਂ ਭੁਇਣ ਨਿਕਲਣ ਤੱਕ ਉੱਥੋਂ ਨਹੀਂ ਆਉਣਾ ਨੇਕ। ਤੈਨੂੰ ਆਪਣੀ ਮਾਂ ਤੇ ਫਕਰ ਹੋਣਾ ਚਾਹੀਦਾ ਜਿੰਨਾ ਤੇਰੇ ਲਈ ਇੰਨਾ ਕੁ ਜਰਿਆ ਆ ਤੈਨੂੰ ਮੈਂ ਆਪਣੀ ਭੈਣ ਨੂੰ ਮਲਾਵਾ। ਉਦੋਂ ਇੱਕ ਘੰਟੇ ਬਾਅਦ ਨੇਕ ਦਾ ਸਾਈਕਲ ਡਾਕ ਬਣਿਆ ਪਿੰਡ ਨੂੰ ਆ ਰਿਹਾ ਸੀ। ਪਿੱਛੇ ਪ੍ਰੀਤ ਦੀ ਛੋਟੀ ਭੈਣ ਬੈਠੀ। ਉਹਦਾ ਆਉਂਦਾ ਇਹ ਇੱਕ ਸੋਚ ਹੀ ਰਿਹਾ ਸੀ ਗਲਤਾਂ ਠੀਕ ਹੈ ਪਰਜਾਈ ਦੀ ਮੈਂ ਕਿਉਂ ਕਿਸੇ ਦਾ ਤਾਰ ਖੰਡਾਵਾਂ ਮੈਂ ਆਪਣੀ ਘਰ ਵਾਲੀ ਨਾਲ ਲੈ ਕੇ ਆ ਰਿਹਾ ਹਾਂ ਸੋਚ ਰਿਹਾ ਸੀ ਕਿ ਪਿੰਡ ਦੀ ਫਰਨੀ ਤੇ ਸੀ ਏਸੀਆਰ ਦਾ ਪ੍ਰੋਗਰਾਮ ਕਹਾਣੀ ਥੋੜੀ ਜਿਹੀ ਲੇਟ ਹੋ ਗਈ ਛੇਤੀ ਫਿਰ ਗਰਾਰੀ ਤਿੱਖੀ ਕਰਨੀ ਪਈ ਨਹੀਂ ਮੁੱਕਣੀ ਸੀ ਭੁੱਲ ਗਿਆ ਸਾਰੀ ਗੱਲ ਪਹਿਲੀ ਦੇ ਵਿੱਚ ਉੱਪਰ ਟਾਈਮ ਚ ਗਿਆ ਇੱਕ ਤਿੰਨ ਸਾਲ ਦੀ ਰਾਣੀ ਧੀ ਭੁੱਲਰ ਮੈਂ ਨਾ ਭੁੱਲ ਗਿਆ ਪਹਿਲਾਂ ਜੀ ਮੈਸੇਜ ਡਿਲੀਟ ਕਰ ਬੈਠਾ ਉਹਦਾ ਜਨਮ ਦਿਨ ਹੈ ਬੇਟੀ ਨੂੰ ਲੱਖ ਲੱਖ ਮੁਬਾਰਕਾਂ ਤੇ ਭੁੱਲ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਰਾਣੀਆਂ ਧੀਆਂ ਦਾ ਖਿਆਲ ਰੱਖਿਆ ਕਰਦੇ ਦੀ ਜ਼ਰੂਰਤ ਹੈ ਦੇ ਵਿੱਚ ਬਹੁਤ ਇਹਨਾਂ ਨੂੰ ਸਤਿਕਾਰ ਦਿਓ ਜਿੰਨਾ ਵੱਧ ਤੋਂ ਵੱਧ ਬਣਦਾ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਾਲੋ ਪੁੱਤਾਂ ਦੇ ਬਰਾਬਰ ਸਦਾ ਰੱਖੋ ਕੱਲ ਨੂੰ 11 ਵਜੇ ਫੇਰ ਮਿਲਦਾ ਆ ਅਖੀਰ ਦੇ ਵਿੱਚ ਦیدار ਸੰਧੂ ਪਰਵਾਲੀਏ ਦਾ ਗੀਤ ਤੁਹਾਡੇ ਸੰਮੁਖ ਰੱਬ ਰੱਖ